ਏਆਰ ਪੀ ਲਈ 1550 ਏਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਜਿੱਲ 11:12 ਹੋਏ ਨੇ 20 ਨਾਨਕ ਸਹਿਬ ਅੰਮਦ 548 ਨਿਗਾਹਾਰ ਸਵਾਗਤ ਹੈ ਅੱਜ ਦੀ ਲੋਕ ਸਭਾ ਦੇ ਵਿੱਚ ਅਸੀਂ ਘਟਨਾਵਾਂ ਗੱਲਾਂ ਬਾਤਾਂ ਜੀ ਸੰਗੀਤ ਸ਼ੁਰੂ ਦੇ ਮਸਲਿਆਂ ਤੇ ਗੱਲਬਾਤ ਹੋਏਗੀ ਪਹਿਲੇ ਹਿੱਸੇ ਦੇ ਵਿੱਚ 11:20 ਮਿੰਟ ਤੇ ਸਰਦਾਰ ਅਮਰਜੀਤ ਸਿੰਘ ਸਾਡੇ ਲੋਕਲ ਇੰਡੀਅਨ ਕੌਂਸੂਲੇਟ ਤੋਂ ਗੱਲਬਾਤ ਕਰਨਗੇ ਜਿਹੜੀਆਂ ਮੁਸ਼ਕਲਾਂ ਦੇ ਬਾਰੇ 10 ਮਿੰਟ ਤੇ 11:30 ਵਜੇ ਪ੍ਰਮੇਂਦਰ ਸਿੰਘ ਥੰਦ ਆਉਣਗੇ ਇੰਸ਼ੋਰੈਂਸ ਬਾਰੇ ਤੋਂ 1 ਵਜੇ ਤੱਕ ਰਾਸ਼ਟਰਪਤੀ ਅਵਾਮਾ ਹਾਊਸ ਚ ਜਾਣਾ ਤੇ ਡੋਨਲਡ ਟਰੰਪ ਦਾ ਆਉਣਾ ਉਹਦੇ ਬਾਰੇ ਗੱਲਬਾਤ ਤੇ ਖਬਰਾਂ ਛੋਟੀ ਜਿਹੀ ਇੱਕ ਕਹਾਣੀ ਵੀ ਮੈਂ ਸੁਣਾਉਣੀ ਚਾਹੁੰਦਾ ਅੱਜ ਤੁਹਾਨੂੰ ਸ਼ਰਾਂਤੂਪ ਅਰਕੀ ਜੀ ਤੇ ਬਾਅਦ ਤੋਂ 2 ਵਜੇ ਤੱਕ ਮੇਰਾ ਪਿੰਡ ਮੇਰੇ ਖੇਤ ਦੀ ਸੈਗਮੈਂਟ ਜਿਹੜੀ ਪਿੰਡ ਦੀ ਸਾਥ ਹੈ ਉਹਦੇ ਵਿੱਚ ਖੁੱਲੀ ਲਾਈਨ ਤੁਹਾਡੇ ਲਈ ਹੋਏਗੀ ਕਿਸੇ ਵੀ ਵਿਸ਼ੇ ਤੇ ਪੰਜਾਬ ਦਾ ਸੁਣਦੇ ਤੁਸੀਂ ਗੱਲ ਕਰ ਸਕਦੇ ਹੋ ਦਿਨ ਤੁਹਾਡੇ ਲਈ ਰੱਖਿਆ ਤੇ ਸਾਰੇ ਫੋਨ ਕਾਲ ਕਰਕੇ ਆਪਣੇ ਮਨ ਦੀ ਗੱਲ ਕਹੋ ਜਿਵੇਂ ਪਿੰਡ ਦੀ ਸਾਥ ਚ ਕੋਈ ਵੀ ਗੱਲ ਕਹੀ ਜਾ ਸਕਦੀ ਇਸ ਤਰ੍ਹਾਂ ਹੀ ਤੁਸੀਂ ਪ੍ਰੋਗਰਾਮ ਤੇ ਆ ਕੇ ਕਹਿ ਸਕਦੇ ਅੱਜ 20 ਜਨਵਰੀ ਦਾ ਦਿਨ ਹੈ ਬੇਟਾ ਬਲਰਾਜ ਸਿੰਘ ਦਾ ਅੱਜ ਜਨਮ ਦਿਨ ਹੈ ਜੀ ਪਰਮਾਤਮਾ ਕਰੇ ਇਸਾਰੇ ਧੀਆਂ ਪੁੱਤ ਆਪਣੇ ਸੰਜੇ ਤੇ ਚੜ੍ਹਦੀਆਂ ਕਲਾ ਚ ਰਹਿਣ ਇਕੀ ਵਧਿਆਂ ਦਾ ਅੱਜ ਬਲਰਾਜ ਹੋ ਗਿਆ ਜੀ ਯੂਵੀਸੀ ਦੇ ਵਿੱਚ ਦਾ ਸਾਈਕੋਲੋਜੀ ਦਾ ਵਿਦਿਆਰਥੀ ਹੈ ਵਧੀਆ ਖੇਲਦਾ ਜਵਾਨ ਹੈ 6 ਫੁੱਟ 4 ਇੰਚ ਹਾਈਟ ਹੋ ਗਈ ਨਸਲ ਬਦਲ ਗਈ 5 ਫੁੱਟ 7 ਵਾਲੀ ਜਾਂ ਪਤਾ ਤੇ ਜਾ ਵੜਿਆ ਤੇ ਨਾਲ ਇੱਕਮਕੌਰ ਜੀ ਰਵਾਣਾ ਦੀ ਬੇਟੀ ਹੈ ਉਹ ਬੇਟੀ ਜੋ ਯੂਵੀਸੀ ਚ ਪੜਦੀ ਹੈ ਨਵਜੋਤ ਕੌਰ ਵਿਰਖ ਸਾਡੇ ਲਿਸਨਰ ਨੇ ਬਰੰਘੇਮ ਦੇ ਵਿੱਚ ਉਹ ਰਾਣੀ ਧੀ ਦਾ ਵੀ ਜਨਮ ਲੈਣਾ ਅਜ ਬਚੀਆ ਤੇ ਇਹ ਤੇ ਪੁੱਤਰਾਂ ਦੇ ਜਨਮ ਦਿਨ ਨੇ ਸਾਰੇ ਖੁਸ਼ ਰਹਿਣ ਤੇ ਮਾਪਿਆਂ ਨੂੰ ਲੱਖ ਲਖ ਵਧਾਈਆਂ ਸਦਾ ਰਮਾਣਾ ਨੂੰ ਸਦਾ ਨਿਰਮਾਣਾ ਨੂੰ ਤੇ ਏਕਮ ਕੌਰ ਰਮਾਣਾ ਬਹੁਤ ਵਧੀਆ ਗੁਰੂ ਮਹਾਰਾਜ ਧੀਆਂ ਨੂੰ ਤੇ ਪੁੱਤਰਾਂ ਨੂੰ ਚੜ੍ਹਦੀ ਕਲਾ ਦਾ ਚਿਰਖੇ ਕੈਮ ਰਹੀ ਬਵਰਾਸਿਆਂ HRPA radio.com ਸੁਣਦੇ ਹੋ ਤੇ ਉੱਥੇ ਤੁਸੀਂ ਐਪ ਡਾਊਨਲੋਡ ਕਰ ਸਕਦੇ ਲੋਕਸ ਖਸਾ ਲੋਕੇ ਐਸੇ ਡਬਲ ਟੀ ਐਚ ਲੋਕਸਖਸ ਦਾ YouTube ਦਾ ਚੈਨਲ ਹੈ ਜਿੱਥੇ ਤੁਸੀਂ ਪ੍ਰੋਗਰਾਮ ਸਾਰੇ ਸੁਣਦੇ ਹੋ ਹਰਜੀਤ ਸਿੰਘ ਗਿੱਲ ਦਾ Facebook ਦਾ ਪੇਜ ਤੇ ਅਕਾਊਂਟ ਤੇ harjeet.gskrpradio.com ਤੇ ਤੁਸੀਂ ਈਮੇਲ ਹੈ ਜੀ ਇਸ ਦਿਨ 16 ਜਨਵਰੀ 20 ਜਨਵਰੀ ਜਨਵਰੀ ਦੇ ਵਿੱਚ ਹੀ ਕੰਮ ਖਾਸਾ ਹੋਇਆ ਜ਼ਿੰਦਗੀ ਦੇ ਵਿੱਚ ਬਲਰਾਜ ਸਿੰਘ ਦੀ ਗੱਲ ਕਰਦੇ ਆ ਉਸ ਦਾ ਪੰਜਾਬੀ ਵਧੀਆ ਬੋਲਣਾ ਜਿਹੜਾ ਮੈਨੂੰ ਸਭ ਤੋਂ ਵਧੀਆ ਲੱਗਦਾ ਜਵਾਕ ਤਕੜੇ ਇੱਥੇ ਹੋ ਜਾਂਦੇ ਆ ਪੜ ਲੈਂਦੇ ਆ ਪਰ ਮਾਪਿਆਂ ਨਾਲ ਜਵਾਕ ਜਦ ਪੰਜਾਬੀ ਦੇ ਵਿੱਚ ਗੱਲ ਕਰੇ ਦਾਦੇ ਦਾਦੀ ਨਾਲ ਨਾਨੇ ਨਾਨੀਆਂ ਨਾਲ ਸਵਾਦ ਦੀ ਗੱਲ ਉਹਦਾ ਸਾਰਾ ਸਿਹਰਾ ਉਸ ਮਾਤਾ ਨੂੰ ਜਾਂਦਾ ਸਰਦਾਰਨੀ ਕੋਲ ਬਿਠਾ ਕੇ ਕੰਨ ਖਿੱਚ-ਖਿੱਚ ਕੇ ਪੰਜਾਬੀ ਸਿਖਾਈ ਖਬਰਦਾਰ ਜੀ ਅੰਗਰੇਜ਼ੀ ਸੇ ਬੋਲਿਆ ਇਉਂ ਕਹਿੰਦੀ ਹੁੰਦੀ ਸੀ ਇਓ ਫੁੱਟਕਣ ਲੱਗਦੀ ਜਿੰਦ ਸਾਡੀ ਤੇਰੀ ਸ਼ੀਸ਼ ਮਹਿਲ ਮਸਕਾਨ ਉਤੇ ਉੱਡੇ ਕਾਗ ਜੋ ਤੂਤਾ ਕੋਹਨਿਆਂ ਤੋਂ ਚਿੜੀ ਜ਼ਾਤ ਖੇਡੇ ਸਾਗਵਾਨ ਉੱਤੇ ਮੋਰ ਪੰਖ ਦਾ ਬੂਕੜਾ ਸ਼ਿਕਾਰੀ ਦਸਤੇ ਨੇ ਬੋਸਾ ਰੱਖਿਆ ਧੀਰ ਕਮਾਨ ਉੱਤੇ ਹੈ ਮਹਿਕ ਜਿਉ ਪੈਂਦਾ ਰੇਤੜ ਬੇਸ਼ੌਕ ਕਣੀਆਂ ਦੇ ਫੁਲਸਾਨ ਉੱਤੇ ਜਾਨੀਆਂ ਉੱਗੜ ਜਾਂਦੀਆਂ ਜੋ ਹੁੰਗੜ ਦੇ ਸਰਕਾਨ ਉੱਤੇ ਜੋ ਨੀਹਾਂ ਉਗੜ ਜਾਂਦੀਆਂ ਨੇ ਜਿਉਂ ਹੂੰਗਟ ਦੇ ਸਰਕਾਣ ਉੱਤੇ ਜਿਉਂ ਸਹੇ ਨਿਸ਼ਾਲ ਲਗਾ ਦਿੱਤੀ ਜੰਗਲ ਦੀ ਕਿਸੇ ਟਲਾਣ ਉੱਤੇ ਜਾਂ ਬੂਟੀਆਂ ਪਾਉਂਦਾ ਖੂਨ ਜਿਵੇਂ ਯੋਧੇ ਦੀ ਕਿਰਪਾਨ ਉੱਤੇ ਅਮੰਗੀ ਤਰਾਣੀ ਸਤ ਜਿਸ ਤਰ੍ਹਾਂ ਪਿਛਲੇ ਦਿਨੀ ਗੱਲਬਾਤ ਚੱਲੀ ਸੀ ਬੀਐਲਐਸ ਦੇ ਸਬੰਧ ਦੇ ਵਿੱਚ ਤਾਂ ਸ੍ਰੀ ਅਮਰਜੀਤ ਸਿੰਘ ਉਹਨਾ ਤੋਂ ਸਮਾਂ ਕੁਝ ਮੰਗਿਆ ਸੀ ਜਿਨ੍ਹਾਂ ਨੇ ਜੱਦੀ ਇੱਥੇ ਨੌਕਰੀ ਸ਼ੁਰੂ ਕੀਤੀ ਹੈ ਤੇ ਲੋਕ ਖੁਸ਼ ਨੇ ਅਕਸਰ ਜਦ ਸਾਡੇ ਆਪਣੇ ਪੰਜਾਬ ਤੋਂ ਪੰਜਾਬੀ ਬੋਲਦਾ ਕੋਈ ਵੱਡਾ ਅਫਸਰ ਸਾਡੀ ਐਮਬੈਸੀ ਦੇ ਵਿੱਚ ਭਾਰਤ ਦੀ ਲੋਕ ਖੁਸ਼ ਹੋ ਜਾਂਦੇ ਨੇ ਤੇ ਉਸ ਸਮੇਂ ਪ੍ਰਾਂਤ ਵਰਵਾ ਇਹੋ ਜਿਹਾ ਵੀ ਰਿਹਾ ਵੀ ਕਈ ਵਾਰ ਕੁਝ ਲਗਦੀ ਵਾਲੇ ਬੰਦੇ ਇੱਕ ਦੂਜੇ ਦੀ ਖਿੱਚ ਤਾਣ ਕਰਦੇ ਕਈ ਵਾਰ ਉਹਨਾਂ ਨੂੰ ਜ਼ਿੰਦਗੀ 'ਚ ਵੀਜ਼ਿਆਂ ਦੀਆਂ ਮੁਸ਼ਕਲਾਂ ਆਈਆਂ ਸਾਮਰਜੀਤ ਸਿੰਘ ਉਹਨਾਂ ਨੇ ਜਦੋਂ ਇੱਥੇ ਆਏ ਆ ਬਹੁਤ ਕੋਸ਼ਿਸ਼ ਕਰਕੇ ਬਹੁਤ ਤਾਕ ਦੇ ਵਿੱਚ ਰੁਕਿਓ ਇਹ ਕੰਮ ਸਾਰੇ ਕਰਵਾਏ ਨੇ ਅੱਜ ਮੇਰੇ ਨਾਲ ਉਹ ਗੱਲਬਾਤ ਕਰਨਗੇ ਤੇ ਨਵੇਂ ਕੁਝ ਅਨਾਉਂਸਮੈਂਟਸ ਨੇ ਕੁਝ ਵੀਜ਼ਾ ਦੇ ਸਬੰਧੀ ਤੇ ਆਰ ਜਿਹੜੀਆਂ ਕੁਝ ਆ ਰਹੀਆਂ ਬੀਐਲਐਸ ਦੇ ਵਿੱਚ ਉਹਦੇ ਲਈ ਬੀਐਲਐਸ ਦੀ ਕਹਾਣੀ ਕੀ ਹੈ ਸੋਰੀ ਬੀਐਲਐਸ ਦੇ ਵਿੱਚ ਮੁਸ਼ਕਲ ਕੀ ਹੈ ਉਸਦੇ ਬਾਰੇ ਗੱਲ ਕਰਾਂਗੇ ਸਾਮਰਜੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਆ ਬਹੁਤ ਬਹੁਤ ਪਿਆਰੀ ਨਿੱਗੀ ਸੱਸੀ ਕਲ ਜੀ ਸਾਫ ਆਪ ਦੇ ਸਾਰੇ ਸਰੋਪਿਆਂ ਨੂੰ ਵੀ ਬਹੁਤ ਬਹੁਤ ਪਿਆਰੀ ਨਿੱਗੀ ਸੱਸੀ ਤੇ ਸੱਸੀ ਕਲ ਜੀ ਮੈਨੂੰ ਮੌਕਾ ਦਿੱਤਾ ਮੈਨੂੰ ਰੂਬਰੂ ਹੋਣ ਦਾ ਮੈਂ ਉਮੀਦ ਕਰਨਾ ਹੈ ਵੀ ਮਹੱਤਵਪੂਰਨ ਗੱਲਾਂ ਨੇ ਜਿਹੜੀਆਂ ਜਦੂਦੀ ਗੱਲਾਂ ਨੇ ਉਹ ਮੈਂ ਜਰੂਰ ਆਪ ਜੀ ਨਾਲ ਸਾਂਝਾ ਕਰਵਾਵਾਂਗਾ ਜੀ ਜੀ ਤੁਹਾਡਾ ਪਹਿਲੀ ਵਾਰ ਆਪਾਂ ਗੱਲਬਾਤ ਕਰ ਰਹੇ ਹਾਂ ਤੁਹਾਡੇ ਇਸ ਸਟੈਨੋਅਰ ਦੇ ਵਿੱਚ ਲੋਕਾਂ ਨੇ ਤੁਹਾਨੂੰ ਬੜਾ ਪਿਆਰ ਦਿੱਤਾ ਤੇ ਲੋਕ ਖੁਸ਼ ਨੇ ਤੁਸੀਂ ਬਹੁਤ ਮੁਸ਼ਕਲਾਂ ਲੋਕਾਂ ਦੀ ਹੱਲ ਕੀਤੀਆਂ ਭਾਈਚਾਰੇ ਦੇ ਵਿੱਚ ਐਕਸਰ ਗੱਲ ਹੁੰਦੀ ਹੈ ਧੰਨਵਾਦ ਹੈ ਤੁਹਾਡਾ ਅੱਛਾ ਜੀ ਕੁਝ ਖਾਸ ਅਨਾਉਂਸਮੈਂਟਸ ਨੇ ਵੀਜ਼ੇ ਬਾਰੇ ਜੀ ਵੀਜ਼ਾ ਬੰਦੀਆਂ ਦਾ ਕੋਈ ਰੁਕਿਆ ਹੋਇਆ ਸੀ ਉਸ ਦੇ ਬਾਰੇ ਕੋਈ ਗੱਲਬਾਤ ਹੈ ਹਾਂ ਭਾਰਤ ਸਰਕਾਰ ਨੇ ਪਿਛਲੇ ਕੁਝ ਦਿਨ ਪਹਿਲਾਂ ਹੀ ਬਹੁਤ ਵੱਡਾ ਨਿਰਦੇਸ਼ ਲੈਂਦੇ ਹੋયા ਜਿਸ ਨਾਲ ਆਪ ਜੀ ਨੂੰ ਵੀ ਆ ਜੇ ਬਾਰੇ ਪਤਾ ਹੋਵੇਗਾ ਪਹਿਲਾਂ ਜਿਹੜੇ ਇੱਥੇ ਵਿਅਕਤੀ ਐਜ਼ ਅ ਰਿਫਿਊਜੀ ਐਜ਼ ਅ ਕੇ ਜਿਹੜੇ ਇੱਥੇ ਸੈਟਲ ਹੋਏ ਸੀਗੇ ਭਾਵੇਂ ਇਸ ਮੁਲਕ ਦੇ ਵਿੱਚ ਜਾਂ ਕਿਸੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਉਹਨਾਂ ਸੀਗਾ ਉਹਨਾਂ ਨੂੰ ਇੰਡੀਆ ਦਾ ਵੀਜ਼ਾ ਨਹੀਂ ਸੀ ਇਸ਼ੂ ਹੁੰਦਾ ਤੇ ਇੱਕ ਬਹੁਤ ਵੱਡਾ ਤਬਕਾ ਆਪਣੇ ਜਿਹੜਾ ਉਹਨਾਂ ਦੀ ਜਨਮ ਭੂਮੀ ਸੀ ਉਹਦੇ ਤੋਂ ਜਾਣ ਤੋਂ ਉਹ ਇੱਕ ਕੋਈ ਆਸ ਨਹੀਂ ਸੀ ਕਿ ਨਾਉ ਸਮਾ ਉਹਨੂੰ ਵੀਜ਼ਾ ਮਿਲਦਾ ਸੀ ਇਸ ਕਰਕੇ ਜਾਣ ਨਹੀਂ ਸੀ ਪਾਉਂਦਾ ਲੇਕਿਨ ਇੱਕ ਬਹੁਤ ਵੱਡਾ ਨਿਰਣੇ ਲੈਂਦੇ ਹੋਏ ਹੈ ਭਾਰਤ ਸਰਕਾਰ ਨੇ ਹੁਣੇ ਫੈਸਲਾ ਕੀਤਾ ਹੈ ਜਿਹੜਾ ਅਸੀਂ ਆਲਰੇਡੀ ਇੰਪਲੀਮੈਂਟ ਵੀ ਕਰ ਦਿੱਤਾ ਲਾਗੂ ਵੀ ਕਰ ਦਿੱਤਾ ਕਿ ਜਿਨਨੇ ਵੀ ਰਿਫਿਊਜੀ ਸੈਟਲ ਹੋਏ ਨੇ ਤੇ ਉਹਨਾਂ ਕੋਲ ਕੈਨੇਡੀਅਨ ਪਾਸਪੋਰਟਸ ਨੇ ਉਹ ਸਾਰੇ ਗੁਣ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਸਾਰਿਆਂ ਲਈ ਵੀਜ਼ਾ ਅਪਲਾਈ ਕਰਕੇ ਜਿਸ ਤਰ੍ਹਾਂ ਆਮ ਇੱਕ ਕੈਨੇਡੀਅਨ ਨਾਗਰਿਕ ਜਿਹੜਾ ਰਿਫਿਊਜੀ ਨਹੀਂ ਹੈ ਉਹਨੂੰ ਜਿਸ ਤਰ੍ਹਾਂ तरीके ਨਾਲ वीजा ਮਿਲਦਾ ਉਸੇ ਤਰੀਕੇ ਨਾਲ ਹੁਣ ਸਾਰਿਆਂ ਨੂੰ ਵੀ ਅਸੀਂ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ ਤੇ ਲੋਕਾਂ ਨੇ ਉਹਨੂੰ ਅਪਲਾਈ ਵੀ ਕਰਨਾ ਸ਼ੁਰੂ ਕਰ ਦਿੱ ਦਿੱਤਾ ਹੂੰ ਅੱਛਾ ਜੀ ਕੋਈ ਕੁ ਪ੍ਰਾਣੇ ਬੰਦੇ ਨੂੰ ਵੀਜ਼ੇ ਰਿਫਿਊਜ਼ ਹੋਏ ਹੋਏ ਸੀ ਚਿਰਾਂ ਦੇ ਉਹਨਾਂ ਉਹ ਵੀ ਅਪਲਾਈ ਕਰ ਸਕਦੇ ਕੋਸ਼ਿਸ਼ ਕਰ ਸਕਦੇ ਨੇ ਉਹ ਇਟ ਡਿਪੈਂਡ ਕਰੇਗਾ ਕਿ ਕਿਸ ਕਾਰਨ ਹੋਏ ਸੀਗੇ ਦੇਖੋ ਜੇ ਜੇਤੇ ਉਹਨਾਂ ਨੂੰ ਵੀਜ਼ਾ ਇਸ ਕਰਕੇ ਨਹੀਂ ਸੀ ਮਿਲਦਾ ਪਿਆ ਕਿ ਉਹਨਾਂ ਦਾ ਇੱਥੇ ਸਟੇਟਸ ਐਜ਼ ਅ ਸ਼ਰਨਾਰਥੀ ਸੀ ਇਸ ਕਰਕੇ ਨਿਸ਼ਚਿਤ ਤੌਰ ਤੇ ਉਹ ਸਾਰੇ ਅਪਲਾਈ ਕਰ ਸਕਦੇ ਨੇ ਜਿੱਥੋਂ ਤੱਕ ਦੂਸਰੀ ਗੱਲ ਹੈ ਕਿ ਕਿਸੇ ਹੋਰ ਕਾਰਨ ਨਾਲ ਜੇ ਕਿਸੇ ਨੂੰ ਵੀਜ਼ਾ ਰਿਫਿਊਜ਼ ਹੋ ਰਿਹਾ ਸੀਗਾ ਉਹਦੇ ਵਿੱਚ ਮੈਂ ਜ਼ਰੂਰ ਇਹ ਗੱਲ ਸਾਂਝੀ ਕਰਨਾ ਚਾਹਾਂਗਾ ਜਿਸ ਨਾਲ ਤੁਸੀਂ ਵੀ ਆ ਇਹ ਜਿਹੜੇ ਇਨੀਸ਼ੀਅਲ ਕਮੈਂਟ ਸੀ ਉਹਦੇ ਵਿੱਚ ਕਿਹਾ ਹੈਗਾ ਕਿ ਮੈਕਸਿਮਮ ਲੋਕਾਂ ਨੂੰ ਹੁਣ ਦੇ ਦਿੱਤਾ ਆਲਰੇਡੀ ਮੈਕਸਿਮਮ ਲੋਕਾਂ ਦੇ ਨਾਮ ਉਹਦੇ ਚੋ ਕਲੀਅਰ ਹੋ ਗਏ ਨੇ ਲੇਕਿਨ ਉਸੇ ਬਾਜ਼ੂਦ ਜੇ ਕੁਝ ਕਰਾਂਗਾ ਆਪ ਜੀ ਦੇ ਰਾਈ ਉਨਿਸ਼ਚਿਤ ਤੌਰ ਤੇ ਸਾਨੂੰ ਆਪਣੀ ਈਮੇਲ ਭੇਜ ਸਕਦੇ ਨੇ ਲਿਖ ਕੇ ਭੇਜ ਸਕਦੇ ਨੇ ਐਂਡ ਨਿਸ਼ਚਿਤ ਤੌਰ ਤੇ ਅਸੀਂ ਉਹਨਾਂ ਦੇ ਕੇਸ ਨੂੰ ਪੂਰੇ ਉਹਦੇ ਨਾਲ ਸ਼ਿੱਦਤ ਦੇ ਨਾਲ ਰਿਵਿਊ ਕਰਾਂਗੇ ਦੇਖਾਂਗੇ ਤੇ ਜੋ ਵੀ ਬਣ ਸਕੇਗਾ ਉਹਦੇ ਚ ਕੀਤਾ ਜਾਏਗਾ ਇਹ ਮੈਂ ਤੁਹਾਡੇ ਥਰੂ ਸਾਰਿਆਂ ਨੂੰ ਮੈਂ ਵਿਸ਼ਵਾਸ ਦਿਲਾਣਾ ਹੈਗਾ ਇੱਕ ਜਿਹੜੀ ਹੋਰ ਅਨੁਵਾਦ ਹੁੰਨ ਗੱਲ ਹਾਂਜੀ ਇੱਕ ਹੋਰ ਜਿਹੜਾ ਇੱਕ ਡਿਸੀਜਨ ਲਿਆ ਗਿਆ ਇੱਕ ਪੀਆਈਓ ਕਾਰਡ ਹੁੰਦਾ ਹੈ ਕੋਸੀਆਈ ਲਾਈਫ ਲੌਂਗ ਵੀਜ਼ਾ ਹੈਗਾ ਜਿਹਨੂੰ ਕੋਈ ਵੀ ਵਿਅਕਤੀ ਆਪਣੀ ਪੈਹ ਜਿੰਦਗੀ ਇੰਡੀਆ ਦਾ ਵੀਜ਼ਾ ਨਹੀਂ ਲੈਣਾ ਪੈਂਦਾ ਇਹ ਉਸ ਤੋਂ ਪਹਿਲਾਂ ਕਾਰਡ ਹੁੰਦਾ ਸੀਗਾ ਪੀਆਈਓ ਕਾਰਡ ਪੈਟਰਨਸ ਆਫ ਇੰਡੀਅਨ ਓਰੀਜਿਨ ਉਹ ਸੀਗਾ ਇੱਕ ਕਿਸਮ ਦਾ ਦਾ ਵੀਜ਼ਾ ਹੁੰਦਾ ਸੀਗਾ ਉਹ ਤੇ ਉਹ ਜਦੋਂ OCI ਦੇ ਕੋਈ ਸਵਾ ਦੋ ਸਾਲ ਪਹਿਲਾਂ ਉਹਨੂੰ ਮਰਜ ਕਰ ਦਿੱਤਾ ਗਿਆ ਸੀ ਉਹਨੂੰ ਮਿਲਾ ਦਿੱਤਾ ਗਿਆ ਸੀਗਾ ਤੇ ਅਸੀਂ ਕਾਫੀ ਇਨਫੋਰਮੇਸ਼ਨ ਲੋਕਾਂ ਨਾਲ ਸਾਂਝੀ ਵੀ ਕੀਤੀ ਹਰ ਤਰੀਕੇ ਨਾਲ ਕਿ ਭਈ ਹੁਣ ਕਿਉਂਕਿ ਮਿਲਾ ਦਿੱਤਾ ਗਿਆ ਤੇ ਹਰ ਵਿਅਕਤੀ ਆਪਣਾ PIO ਕਾਰਡ OCI ਦੇ ਵਿੱਚ ਕਨਵਰਟ ਕਰਾ ਲਵੇ ਉਹਨੂੰ ਤਬਦੀਲ ਕਰਵਾ ਲਵੇ ਉਹਦੇ 6-6 ਮਹੀਨਿਆਂ ਦਾ ਟਾਈਮ ਦਿੱਤਾ ਗਿਆ ਅਾਕੀਦ ਵੀ ਜਿਹੜੀ ਡੇਡ ਸੀਗੀ ਉਹ 31 ਦਸੰਬਰ 2016 ਤੱਕ ਕਿਹਾ ਗਿਆ ਸੀਗਾ ਉਸ ਤੋਂ ਪਹਿਲਾਂ ਪਹਿਲਾਂ ਉਹ ਆਪਣੇ PIO ਕਾਰਡ OCI ਦੇ ਵਿੱਚ ਕਨਵਰਟ ਕਰਾ ਲੈਣ ਤਬਦੀਲ ਕਰਵਾ ਲੈਣ ਟਰੈਵਲ ਨਹੀਂ ਕਰ ਸਕਦੇ ਲੇਕਿਨ ਇੱਕ ਹੋਰ ਨਿਰਣੈ ਲੈਂਦੇ ਆ ਕਿਉਂਕਿ ਕਾਫੀ ਲੋਕਾਂ ਨੇ ਤੇ ਕਰਾ ਲਿਆ ਹੋ ਲੇਕਿਨ ਹਜੇ ਵੀ ਲੱਗਦਾ ਸੀਗਾ ਕਿ ਇੱਕ ਤਬਕਾ ਬਚ ਗਿਆ ਹੈ ਜਿਨ੍ਹਾਂ ਕੋਲ PIO ਕਾਰਡਸ ਹੈਗੇ ਹੈਗੇ ਸੀਗੇ ਤੇ ਕਨਵਰਟ ਨਹੀਂ ਕਰਾਇਆ ਉਸ ਨੂੰ ਮੁੱਖ ਰੱਖਦੇ ਹੋਏ ਉਸ ਡੈਡਲਾਈਨ ਨੂੰ 31 डिसेंबर 2016 तो के हुन 30 जून दो हजार 2017 कर दी गई है आ, लेकिन मैं सारेनु रिक्वेस्ट करांगा सारेनु अपील करांगा के अकेली डेट दी वेट ना करण ओस तो पहला ही अपने पीआईओ कार्ड ओसीआई कार्ड्स कन्वर्ट करवा कर लें एदे विच फीस भी नहीं है केवल जो सर्विस चार्जेस ने मामूली जे ओदे च अच्छा जी एक बस्ते थोड़ा जे ਉਹ ਕੀ ਹੈ ਉਹਨੂੰ ਲੋਕ ਡੁਅਲ ਸਿਟੀਜ਼ਨ ਸਮਝੀ ਜਾਂ ਮੈਂ ਇਹ ਗੱਲ ਬਹੁਤ ਵਾਰੀ ਸਾਂਝੀ ਕਰ ਚੁੱਕਿਆ ਕਿਉਂਕਿ ਲੋਕਾਂ ਦੇ ਵਿੱਚ ਆਮ ਇਹ ਸੋਚਦੇ ਨੇ ਕਿ ਡੁਅਲ ਸਿਟੀਜ਼ਨਸ਼ਿਪ ਇਪਾਰਤ ਖਰੀ ਤੱਕ ਐਜ਼ ਆਫ ਨਾਓ ਡੁਅਲ ਸਿਟੀਜ਼ਨਸ਼ਿਪ ਜਾਂ ਜਿਨੂੰ ਅਸੀਂ ਦੋਹਰੀ ਨਾਗਰਿਕਤਾ ਕਹਿੰਦੇ ਆ ਉਹ ਨਹੀਂ ਦਿੱਤਾ ਭਰਤ ਦੇ ਵਿੱਚ ਜਾਤੇ ਤੁਸੀਂ ਇੰਡੀਆ ਦਾ ਪਾਸਪੋਰਟ ਰੱਖ ਸਕਦੇ ਹੋ ਜਾਂ ਬਾਹਰਲਾ ਰੱਖ ਸਕਦੇ ਹੋ ਤੁਸੀਂ ਨਾਗਰਿਕ ਹੋ ਸਕਦੇ ਹੈ ਜਿਹਦੇ ਨਾਲ ਤੁਹਾਨੂੰ ਕੁਝ ਹੋਰ ਅਧਿਕਾਰ ਮਿਲ ਜਾਂਦੇ ਨੇ ਉੱਤੇ ਇੰਡੀਆ ਦੇ ਵਿੱਚ ਫॉर ਐਗਜ਼ਾਮਪਲ ਜੇ ਤੁਹਾਡੇ ਕੋਲ ਇਵਨ ਲੌਂਗ ਟਰਮ ਵੀਜ਼ਾ 10 ਸਾਲ ਦਾ ਵੀ ਹੈ ਤੇ ਤੁਸੀਂ ਇੱਕ ਵਾਰੀ ਚ ਮਹੀਨੇ ਤੋਂ ਜ਼ਿਆਦਾ ਇੰਡੀਆ 'ਚ ਨਹੀਂ ਰਹਿ ਸਕਦੇ ਤੁਹਾਨੂੰ 6 ਮਹੀਨੇ ਤੋਂ ਬਾਅਦ ਐਗਜ਼ਿਟ ਵੀ ਪੂਰੀ ਕਰਨਾ ਪੈਂਦਾ ਹੈ ਲੇਕਿਨ ਉਹਨਾਂ ਹੀ ਕਾਰਡ ਜਿੰਨਾਂ ਦੇ ਕੋਲ ਹੈਗੇ ਨੇ ਉਹ ਰਹਿ ਸਕਦੇ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਨੇ ਉਹ ਵੈਬਸਾਈਟ ਤੇ ਜਾ ਕੇ ਉਹਦੀ ਸਾਰੀਆਂ ਜਿਹੜੇ ਉਹਦੇ ਇੰਪੋਰਟੈਂਟ ਉਹਦੇ ਆਧਾਰੇ ਨੇ ਉਹਨਾਂ ਨੂੰ ਦੇਖ ਸਕਦੇ ਨੇ ਉਹਨਾਂ ਨੂੰ ਸਮਝ ਸਕਦੇ ਨੇ ਇੱਕ ਗੱਲ ਹੋਰ ਅਜੀਤ ਜੀ ਜਿਹੜੀ ਮੈਂ ਇੱਥੇ ਸਾਂਝੀ ਕਰਨਾ ਚਾਹਾਂਗਾ ਕਿ ਜਿਸ ਦਾ ਕਿਉਂਕਿ ਮੈਂ ਕਹਾਂ ਕਿ ਦੋਹਰੀ ਨਾਗਰਿਕਤਾ ਭਾਰਤ ਨਹੀਂ ਦਿੰਦਾ ਇਸੇ ਕਰਕੇ ਜਿਸ ਟਾਈਮ ਕੋਈ ਵੀ ਵਿਅਕਤੀ ਕਿਸੇ ਹੋਰ ਦੇਸ਼ ਲੈ ਲੈਂਦਾ ਹੈ ਅਸੀਂ ਆਪਣੇ ਪਾਸਪੋਰਟ ਦੇ ਵਿੱਚ ਸਟੈਂਪ ਲਗਾਈ ਹੁੰਦੀ ਹੈ ਕਿ ਤੁਸੀਂ ਇਮੀਡੀਏਟਲੀ ਜਿਸ ਵਾਂ ਤੁਸੀਂ ਕਿਸੇ ਦੂਸਰੇ ਮੁਲਕ ਦੀ ਨਾਗਰਿਕਤਾ ਲੈਂਦੇ ਹੋ ਆਪਣਾ ਇੰਡੀਅਨ ਪਾਸਪੋਰਟ ਨਜ਼ਦੀਕੀ ਦੂਤਾਵਾਸ ਦੇ ਵਿੱਚ ਜਾ ਕੇ indians سفارت خانے ت جا کے اونوں جمع کرا دو اونوں سرنڈر کرو لیکن بہت سارے لوکاں نے اونوں نہیں کیتا ہویا اس کرکے گل میں ایک ایوی کلیری فائی کرنا چاہوں گا کہ ریفیوزي ਇੱਕ BLS ਕੰਪਨੀ ਹੈ ਸਾਡੀਆਂ ਜਿਹਦੇ ਦਫ਼ਤਰ ਨੇ ਸਾਰੇ ਲੋਕ ਜੀ ਖੱਜੇ ਖਵਾਰ ਸਰਦ ਜੀ ਬਹੁਤ ਹੁੰਦੇ ਆ ਇੱਕ ਤਾਂ ਉਹਨਾਂ ਦੇ ਰੂਲ ਪਰ ਲੋਕ ਉਹਨਾਂ ਦੀ ਬਾਬੂਗਰੀ ਉਹਨਾਂ ਦੇ ਸਟਾਈਲ ਤੋਂ ਦੁਖੀ ਨੇ ਜੀ ਇਹਦੇ ਬਾਰੇ ਪਲੀਜ਼ ਦੱਸੋ ਲੋਕਾਂ ਆਪ ਇਹ ਬਹੁਤ ਇੱਕ ਇੰਪੋਰਟੈਂਟ ਗੱਲ ਕਿਉਂਕਿ ਕਈ ਮੇਰੇ ਨਾਲ ਗੱਲ ਕਰਦੇ ਨੇ ਮੈਂ ਹਰਜੀਤ ਜੀ ਮੈਂ ਨਿਸ਼ਚਿਤ ਤੌਰ ਤੇ ਇੱਕ ਓਨੈਸਟਲੀ ਇਹ ਦਲਕੈਣਾ ਚਾਹਾਂਗਾ ਲਾਲੇ ਮੈਂ ਸਭ ਤੋਂ ਪਹਿਲਾਂ ਅਪੀਲ ਕਰਾਂਗਾ ਕਿ ਜਦੋਂ ਵੀ ਤੁਹਾਨੂੰ ਕਿਸੇ ਇੰਡੀਅਨ ਕੌਂਸੂਲੇਟ ਤੋਂ ਸਰਵਿਸ ਲੈਣੀ ਹੈ ਕਿਉਂਕਿ ਇਹ ਸਾਡੀ ਆਊਟਸੋਰਸ ਏਜੰਸੀ ਏ ਪਹਿਲਾਂ ਕੇਵਲ ਇੰਡੀਅਨ ਕੌਂਸੂਲੇਟ ਦੇ ਵਿੱਚ ਹੀ ਹੁੰਦੀ ਸੀ ਇੱਥੇ ਆ ਕੇ ਅਪਲੀਕੇਸ਼ਨ ਜਮਾ ਕਰਨੀ ਪੈਂਦੀ ਸੀ ਲੇਕਿਨ ਕਿਉਂਕਿ ਐਪਲੀਕੈਂਟਸ ਦੀ ਤਾਰਾਦਵਰਨ ਦੇ ਨਾਲ ਸਰਕਾਰ ਨੇ ਮੁਨਾਸਿਬ ਸਮਝਿਆ ਕਿ ਇੱਕ ਆਊਟਸੋਰਸ ਦੇ ਚਾਰ ਸੈਂਟਰ ਹੈਗੇ ਨੇ ਇਹ ਕਿੱਥੇ ਡਾਊਨਟਾਊਨ ਵੈਨਕੂਵਰ 'ਚ ਹੈ ਸਰੀ ਹੈ ਤੇ ਕੈਲਕਰੀ 'ਚ ਆਈ ਕੈਨ ਅੰਡਰਸਟੈਂਡ ਇਹ ਦਿੱਕਤ ਉਦੋਂ ਆਂਦੀ ਹੈ ਜਦੋਂ ਮੇਨਲੀ ਮੈਂ ਇਹਦੇ ਬਹੁਤ ਸਾਰੇ ਦੇ ਵਿੱਚ ਗਿਆ ਐਂਡ ਟੂ ਦ ਪੀਪਲ ਉਹਨਾਂ ਦੀ ਜੋ ਇਮੋਸ਼ਨਸ ਨਹੀਂ ਉਹਨਾਂ ਦੀ ਜੋ ਅਸੈਸਮੈਂਟਸ ਨੇ ਮੈਂ ਆ ਪੂਰੇ ਤੌਰ ਤੇ ਇਸ ਗੱਲ ਨੂੰ ਨਹੀਂ ਨਕਾਰਾਂਗਾ ਕਿ ਕਦੀ ਕਦੀ ਕੋਈ ਨਾ ਕੋਈ ਐਸੇ ਹਾਲਾਤ ਹੋ ਸਕਦੇ ਨੇ ਕਿ ਜਿੱਥੇ ਲੋਕਾਂ ਦੀ ਸ਼ਿਕਾਇਤ ਵੀ ਜੈਨੂਅਲ ਹੋਈ ਗਈ। ਆ ਇਸ ਦੇ ਬਾਰੇ ਦੱਸਾਂ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜੇ ਸਾਨੂੰ ਕੋਈ ਵੀ ਸਪੈਸੀਫਿਕ ਸ਼ਿਕਾਇਤ ਮਿਲਦੀ ਹੈ, ਇੱਕ ਜਨਰਲ ਸ਼ਿਕਾਇਤ ਕਰਨਾ ਉੱਥੇ ਕੋਈ ਸੁਣਦਾ ਨਹੀਂ। ਮੈਂ ਹਮੇਸ਼ਾ ਇਹ ਕਹਿਣਾ ਹੈ ਕਿ ਜੇ ਕਿਸੇ ਵਿਅਕਤੀ ਦਾ ਉੱਥੇ ਐਕਸਪੀਰੀਅੰਸ ਸਹੀ ਨਹੀਂ ਰਿਹਾ, ਉੱਥੋਂ ਦਾ ਤਜਰਬਾ ਉਹਦਾ ਮਾੜਾ ਸੀਗਾ ਤੇ ਉਹਦਾ ਵੀ ਇਹ ਫਰਜ਼ ਮੰਨਦਾ ਹੈ। ਕਿ ਉਹ ਸਾਨੂੰ ਇੱਕ ਈਮੇਲ ਭੇਜੇ ਪੂਰੀ ਡਿਟੇਲ ਨਾਲ ਭੇਜੇ ਉਹਦੀ ਅਸੀਂ ਜਦੋਂ ਵੀ ਮੈਨੂੰ ਕੋਈ ਇਸ ਪ੍ਰਕਾਰ ਦੀ ਈਮੇਲ ਮਿਲਦੀ ਹੈ ਮੈਂ ਵਿਸ਼ਵਾਸ ਈਲਾਣਾ ਪੂਰੀ ਗਹਿਰਾਈ ਚ ਤੇ ਜੋ ਕੋਰਸ ਕਰੈਕਸ਼ਨ ਹੁੰਦੀ ਜੋ ਵੀ ਉਹਦੇ ਚ ਐਕਸ਼ਨ ਬੰਦਾ ਏ ਉਸੇ ਲੈਨੇ ਆ ਹੁਣ ਦੂਸਰੀ ਗੱਲ ਮੈਂ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਬੀਐਲਐਸ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਫਰਜ਼ੇ ਬੰਦਾ ਏ ਕਿ ਅਸੀਂ ਕੌਂਸੂਲੇਟ ਦੀ ਵੈਬਸਾਈਟ ਜਾਂ ਬੀਐਲਐਸ ਦੀ ਵੈਬਸਾਈਟ ਤੇ ਜਾ ਕੇ ਜਿਹੜੀ ਅਸੀਂ ਸਰਵਿਸ ਲੈਣੀ ਹੈ ਉਹਦੀ ਰਿਕੁਆਇਰਮੈਂਟਸ ਕੀ ਨੇ ਉਹਦੇ ਕਾਗਜ਼ ਨੇ ਨੇ ਹੈ ਕਿ ਉਹ ਪਾਸਪੋਰਟ ਜਾਂ ਪੇਪਰ ਲੈ ਕੇ ਚਲੇ ਜਾਂਦੇ ਨੇ ਨਾ ਉਹਨਾਂ ਦੇ ਕਾਗਜ਼ ਪੂਰੇ ਹੁੰਦੇ ਨੇ ਨਾ ਉਹਨਾਂ ਨੇ ਫਾਰਮ ਭਰੇ ਹੁੰਦੇ ਨੇ ਸਾਡਾ ਜਿਹੜਾ ਐਪਲੀਕੇਸ਼ਨ ਫਾਰਮ ਹੈ ਖਾਸ ਕਰਕੇ ਵੀਜ਼ਾ ਦਾ ਜੇ ਤੁਸੀਂ ਵੀ ਉਹਦੇ ਤੇ ਧਿਆਨਵਰ ਹੋਗੇ ਤੇ ਬੜੀ ਮਾਮੂਲੀ ਜੀ ਜਾਣਕਾਰੀ ਬੜੀ ਬੁਨਿਆਦੀ ਜੀ ਜਾਣਕਾਰੀ ਉਹਦੇ ਵਿੱਚ ਮੰਗੀ ਜਾਂਦੀ ਹੈ ਸਰ ਉਹ ਜਾਂ ਤਿੰਨ ਪੇਜ ਦਾ ਫਾਰਮ ਹੈਗਾ ਜੇ ਹਰ ਵਿਅਕਤੀ ਜੇ ਆਪ ਮੰਨ ਕੋਈ ਕਿਸੇ ਕਾਰਨ ਪੜਿਆ ਲਿਖਿਆ ਨਹੀਂ ਸਮਝ ਆਂਦੀ ਪੜਵਾਇਆ ਜਾ ਸਕਦਾ ਹੈ ਪਹਿਲਾਂ ਉਹਨੂੰ ਆਨਲਾਈਨ ਭਰ ਪ੍ਰਿੰਟ ਆਊਟ ਲੈ ਕੇ ਫਿਰ ਉਹ ਲੈ ਕੇ ਜਾਣ ਉਹਦੀ ਰਿਕੁਆਇਰਮੈਂਟ ਪੜ ਲੈਣ ਕਿ ਕਾਗਜ਼ ਕਿਹੜੇ-ਕਿਹੜੇ ਲੱਗਣੇ ਨੇ ਤੇ ਮੈਂ ਵਿਸ਼ਵਾਸ ਦਿਲਾਣਾ ਜਿਸ ਦਿਨ ਇਹ ਕਰਨ ਲੱਗ ਜਾਵਾਂਗੇ ਤੇ ਤੇ ਲੋਕਾਂ ਨੂੰ ਬਹੁਤ ਘੱਟ ਪ੍ਰੋਬਲਮਸ ਆਨੀਆਂ ਉਸ ਦੇ ਬਾਵਜੂਦ ਨਿਪਟਾਰਾ ਕੀਤਾ ਜਾਏਗਾ ਸਖਤ ਤੋਂ ਸਖਤ ਕਾਰਵਾਈ ਦੇ ਵਿੱਚ ਕਿਉਂਕਿ ਇਹ ਜਿਹੜਾ ਪੀਕ ਸੀਜ਼ਨ ਹੁੰਦਾ ਹੈ ਸਟਾਰਟਿੰਗ ਫਰੋਮ ਅਕਤੂਬਰ ਤੋਂ ਮਾਰਚ ਤੱਕ ਬਹੁਤ ਜ਼ਿਆਦਾ ਰਸ਼ ਪੈਂਦਾ ਹੈਗਾ ਇਸ ਟਾਈਮ ਮੈਂ ਜਿਹੜਾ ਹੁਣੇ ਲੇਟੈਸਟ ਚੈੱਕ ਕੀਤਾ ਮੈਂ ਪਰਸਨਲੀ ਵੀ ਬੀ ਐਲ ਐਸ ਸੈਂਟਰਸ ਬਗੈਰ ਰਸੇ ਜਾ ਕੇ ਉੱਥੇ ਮੈਂ ਲੋਕਾਂ ਨਾਲ ਮਿਲਣਾ ਉੱਥੇ ਮੈਂ ਉਹਨਾਂ ਨਾਲ ਗੱਲ ਵੀ ਕਰਨਾ ਹੈ ਅੱਜ ਦੇ ਦਿਨ ਦੇ ਵਿੱਚ ਮਿਨੀਮਮ ਚਾਰ ਜ਼ਰੂਰਤ ਪੈਨ ਉੱਤੇ ਪੰਜ ਕਾਊਂਟਰ ਸਰੀ ਦੇ ਵਿੱਚ ਚੱਲਦੇ ਪਏ ਨੇ ਇਸ ਟਾਈਮ ਜਿਹੜੇ ਉਤੇ ਟੋਟਲ ਸਟਾਫ ਦੀ ਤਾਦਾਦ ਹੈਗੀ ਹੈ ਉਹ 11 ਬੰਦਿਆਂ ਦੀ ਤੇ ਤੇ ਜਿੰਨਿਆਂ ਨੂੰ 8 ਤੋਂ 2 ਵਜੇ ਦੇ ਵਿੱਚ ਟੋਕਨ ਦੇ ਦਿੱਤੇ ਜਾਂਦੇ ਨੇ ਉਹਨਾਂ ਸਾਰਿਆਂ ਦੀ ਐਪਲੀਕੇਸ਼ਨ ਚਾਹੇ ਉਹ 5 ਵਜਣ 6 ਵਜਣ ਮੈਂ ਖੁਦ ਨੋਟ ਕੀਤਾ ਕਿ ਕਈ ਵੀ ਉਹਨਾਂ ਨੇ 7-7 ਵਜੇ ਤੱਕ ਆਪਣਾ ਆਫਿਸ ਖੋਲ ਕੇ ਉਹਨਾਂ ਦੀ ਐਪਲੀਕੇਸ਼ਨ ਸਵੀਕਾਰ ਕੀਤੀ ਹੈ لیکن اک چیز یہ ہوندا ہے کہ جس ٹائم وہ ریسپشن تے پوز دے نے اوناں دی ایپلیکیشن کمپلیٹ نہیں ہوندی اوناں نوں پھر دسیا جانا کافس پڑ کے لے آؤ کیونکہ لائن پیچھے لمبی ہوندی بڑی او پھر لوکی پیچھےوں بھی نیچورلی ایمپیشینٹ ہو جاندے نے انہی چیزاں نوں بنیادی گلاں دا دھیان رکھنا ਆਉਣ ਵਾਲੇ ਹਫਤੇ ਕਿਸੇ ਦਿਨ ਖੁੱਲਾ ਸਮਾਂ ਮੈਨੂੰ ਦਿਓ ਤੇ ਫਿਰ ਆਪਾਂ ਗੱਲਬਾਤ ਲੋਕਾਂ ਨਾਲ ਵੀ ਕਰਾਂਗੇ ਤੇ ਉਹਨਾਂ ਦੇ ਸਵਾਲ ਤੁਹਾਡੇ ਸਾਹਮਣੇ ਕਰਾਂਗਾ ਮੈਂ ਧੰਨਵਾਦ ਤੁਹਾਡੇ ਸਮੇਂ ਲਈ ਇਸ ਅਮਰਜੀਤ ਸਿੰਘ ਜਿਹੜੇ ਆਪਣੇ ਵੈਨਕੂਵਰ ਦੇ ਵਿੱਚ ਸਾਡੀ ਜਿਹੜੀ ਐਮਬੈਸੀ ਆ ਵੀਜ਼ਾ ਜਿਹੜਾ ਕਾਉਂਸਲ ਹੈ ਹਾਈ ਕਮਿਸ਼ਨ ਆਪਣਾ ਆਟਵਾ ਹੈ ਵੀਜ਼ਾ ਜਿਹੜਾ ਕਾਉਂਸਲਰ ਇੱਥੇ ਵਹਿੰਦੇ ਆ ਉਹਦੇ ਵਿੱਚ ਸਾ ਅਮਰਜੀਤ ਸਿੰਘ ਸੀਨੀਅਰ ਪੋਸਟ ਨੇ ਤੇ ਉਹਨਾਂ ਨਾਲ ਕੋਈ ਵੀ ਮੁਸ਼ਕਲ ਜੇ ਹੋਵੇ ਤੁਸੀਂ ਗੱਲਬਾਤ ਕਰ ਸਕਦੇ ਹੋ ਹੁਣ ਸਮਾਂ ਹੈ ਪਰਮਿੰਦਰ ਸਿੰਘ ਉਹਨਾਂ ਗੱਲ ਕਰਦੇ ਥੋੜਾ ਜਿਹਾ ਡਾਕੂਮੈਂਟ ਲੇਟ ਹੋ ਗਿਆ ਆਪਾਂ ਖਾਸ ਗੱਲਬਾਤ ਕਰ ਰਹੇ ਸੀ ਥੈਂਕ ਯੂ ਤੇ ਧੰਨਵਾਦ ਤੁਹਾਡਾ ਆਉਣ ਥੈਂਕ ਯੂ ਸਾਹਿਬ ਤੇ ਸਾਰੇ ਸਰੋਤਨਾਂ ਪਿਆਰ ਭਰੀ ਸ਼াশਤ੍ਰੀ ਗਾਉ ਤੇ ਤੁਹਾਨੂੰ ਸਾਰੇ ਪਰਿਵਾਰ ਨੂੰ ਆਏ ਆਪਣੇ ਜੂਨੀਅਰ ਗੈਸ ਆਬ ਬਰਾ ਗੈਲ ਜਿਹਨਾਂ ਨੇ ਬਾਬਾ ਵਦਿਆ ਤੁਹਾਨੂੰ ਬਾਈ ਜੀ ਥੈਂਕ ਯੂ ਸੋ ਮਚ ਅੱਛਾ ਤੁਸੀਂ ਇੱਕ ਈ ਵੀਜ਼ਾ ਟਰਾਈ ਬਾਰੇ ਤਜਰਬਾ ਦੱਸੋ ਮਾੜਾ ਜਾਂ ਠੀਕ ਸੈਟਲ ਮੈਂ ਤਾਂ ਜੀ ਬਹੁਤ ਜਦੋਂ ਯੂਜ਼ ਕੀਤਾ ਮੈਂ ਸਾਰਿਆਂ ਨੂੰ ਇਹ ਕਹਣਾ ਬਹੁਤ ਵਧੀਆ ਪਿਛਲੇ ਦਿਨੇ ਮੇਰੇ ਹੋਰ ਦੋਸਤ ਗਏ ਸੀ ਉਹਨਾਂ ਨੇ ਅਪਲਾਈ ਕੀਤਾ ਤੁਸੀਂ ਹੈਰਾਨ ਹੋਵੋਗੇ 18 ਘੰਟਿਆਂ ਜੀ ਉਹਨਾਂ ਦਾ ਈ ਵੀਜ਼ਾ ਆ ਗਿਆ ਘਰੇ ਬੈਠੇ ਵੀਜ਼ਾ ਮਿਲ ਗਿਆ ਕਿਤੇ ਜਾਣ ਦੀ ਲੋੜ ਨਹੀਂ ਪਰ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਪਤਾ ਕਰਦੇ ਹਾਂ ਉਹ ਬਹੁਤ ਹੀ ਵਧੀਆ ਫੀਚਰ ਹੈਗਾ ਮੈਂ ਆਪ ਪਰਸਨਲੀ ਆ ਜਾਂਦੀ ਹੈ ਤੁਸੀਂ ਪ੍ਰਿੰਟ ਕਰਕੇ ਲੈ ਜਾਓ ਉਹ ਦਿਨਾਂ ਵਾਸਤੇ ਵੈਲਿਡ ਕਰੋਗੇ ਏਅਰਪੋਰਟ ਤੇ ਖੱਜਲ ਖਵਾਰੀ ਤਾਂ ਨਹੀਂ ਹੁੰਦੀ ਬਾਜੀ ਲਾਈਨ ਹੀ ਅੱਡਾ ਉਹਨਾਂ ਦੀ ਅੱਛਾ ਸਭ ਨਾਲ ਵਧੀਆ ਗੱਲ ਇਹ ਹੈ ਲਾਈਨ ਹੀ ਅੱਡਾ ਤੁਸੀਂ ਉੱਥੇ ਉਤਰਨਾ ਹੈ ਸਭ ਜਾ ਕੇ ਦਿੱਲੀ ਏਅਰਪੋਰਟ ਤੇ ਉਤਰਨਾ ਹੈ ਐਂਡ ਤੇ ਉਹਨਾਂ ਦੇ ਕਾਊਂਟਰ ਬਣੇ ਹੋਏ ਲਿਖਿਆ ਈ ਵੀਜ਼ਾ ਹੈ ਲਾਈਨ ਵੀ ਬਹੁਤ ਕੱਟ ਹੈ ਜਾਂਦੇ ਅੱਗੇ ਮੂਰੇ ਤੁਹਾਨੂੰ ਐ ਲਾਈਨ ਹੁੰਦੀ ਬਿਕਾਜ਼ ਬਹੁਤ ਘੱਟ ਲੋਕ ਵੀਜ਼ਾ ਟਰਾਈ ਕਰ ਰਹੇ ਤੇ ਨੰਬਰ 2 ਪਰ ਮੁਰਨਾ ਮਹੀਨੇ ਚ ਪਹਿਣਾ ਹਾਂਜੀ ਬਿਲਕੁਲ ਜੀ ਬਿਲਕੁਲ ਅੱਛਾ ਜੀ ਹੁਣ ਆਪਣੀ ਇੰਡਸਟਰੀ ਬਾਰੇ ਗੱਲਬਾਤ ਕਰੀਏ ਨਵੀਂ ਕਿਹੜੀ ਗੱਲਬਾਤ ਹੈ ਹਾਂਜੀ ਨਵੀਂ ਤਾਂ ਸਭ ਪਹਿਲਾਂ ਦਾ ਜੀ ਇਹ ਇੰਸ਼ੋਰੈਂਸ ਯੰਗ ਜਨਰੇਸ਼ਨ ਨਾਲ ਜੋੜਨ ਦੀਆਂ ਪਰ ਉਹ ਹਾਲੀ ਉਹਨਾਂ ਦਾ ਜੁੜ ਨਹੀਂ ਰਹੇ ਪਰ ਫਿਰ ਵੀ ਪਿਛਲੇ ਸਾਲ ਤੋਂ ਸੇਲਸ ਲਾਈਫ ਇੰਸ਼ੋਰੈਂਸ ਦੇ ਕਾਫੀ ਅਪਗ੍ਰੇਡਿੰਗ ਉਹਦੇ ਨਾਲ ਨਾਲ ਇੱਕ ਆਈ ਹੈ ਰਿਸਰਚ एलियन सी राग उन्होंने यह पता तक दिया कि जिन्ने ही एडवाइजर है कि ने जो इंडिपेंडेंट ने वो हरनो प्रूव वन टेस्ट अप्रूव वन भी वो ज्यादा सर्विस बढ़िया प्रोवाइड कर रहे हैं ज्यादा क्लाइंट्स को ਕੌੜਕ ਹੈਗਾ ਸਨਲਾਈਫ ਦਾ ਇਹਨੇ ਕੋ ਕਾਰਡ ਹੈਗਾ ਤੇ ਉਹਨੇ ਸਨਲਾਈਫ ਦੇ ਪ੍ਰੋਡਕਟ ਵੇਚਣਾ ਪਰ ਜੇ ਆਪਾਂ ਦੇਖਦੇ ਆਂ ਬਿ ਹੋਰ ਜਿਹੜੀਆਂ ਮੈਨੂਲਾਈਜ਼ ਕੰਪਨੀਆਂ ਹੋਰ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਉਹਨਾਂ ਕੋ ਪਹੁੰਚ ਨਹੀਂ ਹੈਗੀ ਉਹਨਾਂ ਦੇ ਪ੍ਰੋਡਕਟ ਨਹੀਂ ਉਹ ਵੇਚ ਸਕਦੇ ਕਿਉਂਕਿ ਉਹ ਚਾਹੁੰਦੇ ਨੇ ਹੀ ਸਮਾਨ ਵੇਚਣ ਉਹਦਾ ਜਿਹੜੀ ਹੁਣ ਇਸੇ ਕਰਕੇ ਜਿਹੜਾ ਹੁਣ ਮੈਨੂ ਲਾਈਫ ਹੈ ਮੈਨੂ ਲਾਈਫ ਵਾਲਾ ਕਹੂਗਾ ਮੈਂ ਸਨ ਲਾਈਫ ਦਾ ਸਮਾਂ ਕਰਕੇ ਸਾਰੀਆਂ ਆਪਸ਼ਨਸ ਕੰਪਨੀ ਦੇ ਜੇ ਉਹਨਾਂ ਕੋਲ ਕੌਂਟਰੈਕਟ ਹੈਗੇ ਨੇ ਨਾਲ ਇਹ ਵੀ ਗੱਲ ਹੈਗੇ ਉਹ ਸਾਰੀਆਂ ਦੇ ਕੌਂਟਰੈਕਟ ਨਹੀਂ ਲੈ ਸਕਦੇ ਉਦਾਂ ਕਹਿੰਦੇ ਨੇ ਸਾਡੇ ਕੋਲ ਸਾਰੇ ਕੌਂਟਰੈਕਟ ਹੈਗੇ ਕਿਉਂ ਲਈ ਚੀਜ਼ ਹੈ ਜਿਹੜੇ ਅਪਾਰਟ ਟਾਈਮ ਐਡਵਾਈਜ਼ਰ ਨੇ ਸਾਰੀਆਂ ਕੰਪਨੀਆਂ ਨਾਲ ਕੌਂਟਰੈਕਟ ਕਰ ਸਕਦੇ ਕਿ ਉਹ ਕਹਿੰਦੇ ਜੇ ਤੁਸੀਂ ਫੁੱਲ ਟਾਈਮ ਕੰਮ ਕਰਦੇ ਹੋ ਤਾਂ ਹੀ ਅਸੀਂ ਤੁਹਾਨੂੰ ਕੌਂਟਰੈਕਟ ਤਾਂ ਹੀ ਤੁਸੀਂ ਸਾਡੇ ਪ੍ਰੋਡਕਟ ਵੇਚ ਹੈ ਵੀ ਨੇ ਉਹ ਆਪਾਂ ਇੱਕ ਨੇ ਜੇ ਆਪਣੇ ਘਰ 'ਚ ਇੱਕ ਥਰਮੋਸਾਈਟ ਹੈ ਤੇ 1 ਮੀਟਰ ਲੱਗਿਆ ਉਹ ਕਹਿੰਦਾ ਵੀ ਜਿਹੜਾ ਐਡਵਾਈਜ਼ਰ ਮੀਟਰ ਵਾਂਗੂ ਕੰਮ ਕਰ ਰਿਹਾ ਜੋ ਪੜ੍ਹ ਕੇ ਹੀ ਦੱਸ ਰਿਹਾ ਜੋ ਸਾਹਮਣੇ ਲਿਖਿਆ ਇਹ ਤੁਸੀ ਥਰਮੋਸਟੈਟ ਵਾਂਗੂ ਕੰਮ ਨਹੀਂ ਕਰ ਰਿਹਾ ਕਿਉਂਕਿ ਉਹ ਚਾਹੀਦਾ ਬਿਕੋਜ਼ ਕਿਉਂਕਿ ਕੰਪਨੀਆਂ ਨੇ ਦਾ ਆਪ ਦਾ ਸਮਾਨ ਵੇਚਣਾ ਉਹਨਾਂ ਨੇ ਤੁਹਾਨੂੰ ਦੱਸਤਾ ਵੀ ਇਹ ਆ ਚੀਜ਼ ਦੇ ਦਿਓ ਤੇ ਦੱਸੇ ਪਰ ਉਹ ਹੋ ਗਿਆ ਜਿੱਦਾਂ ਆਪਾਂ ਪੜ ਕੇ ਮੀਟਰ ਤੋਂ ਦੱਸਤਾ ਹੁਣ ਦਾ ਡਿਗਰੀ ਟੈਂਪਰੇਚਰ ਉਹ ਵੀ ਅੱਗੇ ਅੱਗੇ ਕਲਾਇੰਟ ਡਿਗਰੀ ਹੈ ਪਰ ਇਹ ਨਹੀਂ ਦੇਖਿਆ ਵੀ ਵੀ ਆ ਸਕਦਾ ਪਲੱਸ ਵੀ ਹੋ ਸਕਦਾ ਉਹ ਹੈ ਥਰਮੋਸਟੈਟ ਦਾ ਕੰਮ ਕਰੋ ਇਗਜ਼ੈਂਪਲ ਹੈ ਵੀ ਜਦੋਂ ਅਸੀਂ ਇਹ ਦਿੱਤੀ ਤੁਸੀਂ ਐਜ਼ ਐਡਵਾਈਜ਼ਰ ਤੁਸੀਂ ਇਹ ਵਧੀਆ ਕੰਮ ਕਰਨਾ ਤੇ ਅਜਾ ਥਰਮੋਸਟੈਟ ਦਾ ਕੰਮ ਕਰੋ ਤਾਂ ਕਿ ਉਹਦਾ ਪੜ ਗਿਆ ਰੋਤੇ ਚੀਜ਼ਾਂ ਨਵਾਂ ਚੱਲ ਰਿਹਾ ਜੀ ਹਾਂਜੀ ਅੱਛਾ ਜੀ ਪਿਛਲੇ ਦਿਨੀ ਜਦ 35 ਦਿਨ ਬਰਸਣਾ ਪਿਗਲੀ ਲੋਕ ਬਹੁਤ ਗਿਰਿਆ ਹਸਪਤਾਲ ਭਰੇ ਪਏ ਕਿਸੇ ਦੇ ਗੋਡੇ ਕਿਸੇ ਦੇ ਗਿੱਟੇ ਕਿਸੇ ਦਾ ਚੂਕਣਾ ਟੁੱਟ ਗਿਆ ਬਹੁਤ ਔਖਾ ਹੋ ਗਿਆ ਡਿਸੇਬਿਲਟੀ ਇੰਸ਼ੋਰੈਂਸ ਕਿੰਨੇ ਕਾ ਡਿਸੇਬਿਲਟੀ ਦੇ ਕਲੇਮ ਬਾਇਰਿਕ ਤੇ ਕਾਫੀ ਆਏ ਤੇ ਸਾਰੇ ਨੇ ਬਿਲਕੁਲ ਕੋਈ ਇਸ਼ੂ ਨਹੀਂ ਹੈਗਾ ਡਿਸੇਬਿਲਟੀ ਵਾਕਈ ਡਿਸੇਬਿਲਟੀ ਇਹ ਚੀਜ਼ਾਂ ਉਹਨਾਂ ਕੰਮ ਕਰਦੀਆਂ ਜਦੋਂ ਸਾਨੂੰ ਲੋਡ ਪੈਂਦੀ ਹੈ ਤੇ ਜਿੰਨਾ ਕੋ ਨਏ ਹੈਗੇ ਆ ਉਹਨਾਂ ਦੁਆਲੇ ਦੇਖਦੇ ਆਂ ਕਿ ਉਹ ਘੰਟੇ ਤੁਹਾਡੀ ਪ੍ਰੋਟੈਕਸ਼ਨ ਹੈ 24 ਘੰਟੇ ਡਸਨਟ ਤੁਸੀਂ ਕੰਮ ਤੇ ਹੋ ਕਰ ਹੋ ਸਨੋਰ ਮੂਵ ਕਰ ਰਹੇ ਹੋ ਅਤੇ ਤੁਸੀਂ ਅਕਰੇ ਸਲਿਪ ਕਰਗੇ ਸ਼ਾਪਿੰਗ ਜਿੱਥੇ ਮਰਜ਼ੀ ਸਲਿਪ ਕਰਗੇ ਜਾਂ ਕੋਈ ਟੱਪ ਪਾਉਣ ਕਰ ਸਕਦੇ ਆ ਤੇ ਨਾਲ ਇਹ ਵੀ ਹੈ ਵੀ ਮੈਂ ਪਿਛਲੇ ਦਿਨ ਐਡਮੰਟਨੋਂ ਫੋਨ ਆਇਆ ਸੀ ਉਹ ਕਹਿੰਦੇ ਵੀ ਟਰੱਕ ਲਿਆ ਟਰੱਕ ਦੇ ਕਹਿੰਦੇ ਲੈਣੀ ਪੈਣੀ ਹੈ ਕਹਿੰਦਾ ਹੁਣ ਡਾਲਰ ਪਤਾ ਨਹੀਂ ਪੇ ਕਰਦੇ ਕਹਿੰਦੇ ਅੱਜ ਉਹਨਾਂ ਦਾ ਫੋਨ ਆਇਆ ਵੀ ਸਾਨੂੰ ਹੱਥ ਪੁੱਲਾ ਨਹੀਂ ਫੜਾਉਂਦੇ ਕਿਉਂਕਿ ਉਹ ਕਹਿੰਦੇ ਵੀ ਨਾਲ ਲੈਣੀ ਹੋਣੀ ਹੈ ਪੈਣੀ ਹੈ ਉਹ ਵੀ ਜੋ ਉਹਨਾਂ ਨੇ ਕੰਮ ਉਹ ਕੀਤਾ ਮੀਟਰ ਵਾਲਾ ਕੰਮ ਪੜ੍ਹ ਕੇ ਦੱਸਦਾ ਪਰ ਇਹ ਨਹੀਂ ਉਹਨਾਂ ਦੀ ਜ਼ਰੂਰਤਾਂ ਕੀ ਕੀ ਸੀਗੀਆਂ ਸੀ ਨਹੀਂ ਹੈਗੇ ਸੀ ਉਹ ਕੰਮ ਕਰਤਾ ਸੀ ਉਹ ਕਹਿੰਦੇ ਨਾ ਹੀ ਪੰਜਾਬੀ ਬੰਦੇ ਨੇ ਇਸ ਕਰਕੇ ਜਦੋਂ ਵੀ ਚੀਜ਼ ਤੁਸੀਂ ਲੈਣੀ ਆ ਸੋਚ ਸਮਝ ਕੇ ਉਹ ਚੀਜ਼ ਪਹਿਲਾਂ ਤਰੱਕ ਕੇ ਫਿਰ ਹੈ ਕੰਮ ਆਉਂਦੀ ਆ ਫਿਰ ਸਿੰਪਲ ਤੋਂ ਹੀ 100 ਡ 1200 ਹੋ ਗਿਆ ਸਾਲ ਦਾ ਜੇ ਤੁਸੀਂ 2000 ਦੀ ਜੀ ਡਿਸੇਬਿਲਟੀ ਲਈ ਕੋਈ ਆਪਾਂ ਹੋਰ ਆਲੇ ਦੁਆਲੇ ਪੈਸੇ ਲਾਉਣੇ ਆ ਪਰ ਆਪ ਆਪ ਨੂੰ ਪ੍ਰੋਟेक्ट ਨਹੀਂ ਕਰਦੇ ਉਹ ਚੀਜ਼ਾਂ ਬਹੁਤ ਮਹੱਤਵਪੂਰਨ ਤੋਂ ਬਾਅਦ ਫਿਰ ਗੱਲਬਾਤ ਸਿੰਘ ਥੇਨੋਂ ਚੱਲੇਗੀ अच्छा भाई जी एक आपा ਗੱਲਾਂ ਬਾਤਾਂ ਕਰ ਰਹੇ ਸੀ ਨੌਜਵਾਨ ਬੱਚਿਆਂ ਲਈ ਉਹਨਾਂ ਲਈ ਕੋਈ ਮੈਨੂਅਲ ਲਾਈਫ ਦਾ ਬਹੁਤ ਵਧੀਆ ਪ੍ਰੋਡਕਟ ਆਇਆ ਜਾ ਵਧੀਆ ਪੈਸੇ ਬਣ ਸਕਦੇ ਆ ਉਹ ਕੀ ਹੈ ਹਾਂਜੀ ਉਹ ਚੀਜ਼ ਜਿੱਦਾਂ ਜੀ ਬਾਈ ਸਾਲ ਨਵੇਂ ਸਾਲ ਤੋਂ ਕੰਪਨੀ ਨਵੇਂ ਨਵੀਆਂ ਚੀਜ਼ਾਂ ਕੱਢ ਰਹੀਆਂ ਨੇ ਬੇਸਿਕ ਅਟਰੈਕਟ ਕਰਨਾ ਚਾਹੁੰਦੇ ਨੇ ਜਿਹੜਾ ਯੰਗ ਜਨਰੇਸ਼ਨ ਜਿਹੜੇ ਹੈਲਥੀ ਨੇ ਉਹਨਾਂ ਨੂੰ ਅਟਰੈਕਟ ਕਰ ਰਹੇ ਨੇ ਉਹਨਾਂ ਦਾ ਇਹ ਹੈ ਵੀ ਜਿਹੜਾ ਮੈਨੂ ਵਾਈਫ ਦਾ ਜਿਹੜਾ ਪ੍ਰੋਡਕਟ ਹੈ ਇਸ ਦਾ ਨੰਬਰ 1 ਨਾ ਚੱਲ ਰਿਹਾ ਜੀ ਕਿਉਂਕਿ ਉਹਦਾ ਕਾਰਨ ਕੁਛ ਨਾ ਦਾ ਪ੍ਰੋਡਕਟ ਤੇ ਉਹਨਾਂ ਦੇ ਇਸ ਵੀ ਪਹਿਲਾਂ ਤਾਂ ਉਹ ਪੁਆਇੰਟਸ ਦਿੰਦੇ ਨੇ ਜੀ ਪੁਆਇੰਟਸ ਦੇ ਨਾਲ ਜਾਂ ਤੁਸੀਂ ਆਪ ਸੱਲੇ ਦਿਨ ਤੋਂ ਨਾਲ ਤੁਹਾਨੂੰ ਡਿਸਕਾਊਂਟ ਦੇਣਾ ਬਿਕੋਜ਼ ਤੁਸੀਂ ਹੈਲਥੀ ਹੋ ਜੇ ਤੁਹਾਡੀ ਸਿਹਤ ਵਧੀਆ ਰਹਿੰਦੀ ਹੈ ਹੋਰ ਉਹਦਾ ਵਧੀਆ ਚੱਲੀ ਜਾਂਦਾ ਤਾਂ ਰੇਟ ਹੋਰ ਘਟੀ ਜਾਂਦਾ ਹੁੰਦਾ ਹੈ ਵੀ ਤੁਹਾਨੂੰ ਪੁਆਇੰਟ ਦਿੰਦੇ ਨੇ ਤੁਸੀਂ ਇਹ ਹਰੇਕ ਸਾਲ ਉਹਨਾਂ ਤੁਹਾਡਾ ਫ੍ਰੀ ਮੈਡੀਕਲ ਕਰਾਉਣਾ ਤੁਹਾਨੂੰ ਤੁਸੀਂ ਅਪ ਟੂ ਡੇਟ ਰਹਿਣੇ ਉਹਦੇ ਪੁਆਇੰਟਸ ਨੇ ਜੇ ਤੁਹਾਡਾ ਭਾਰ ਵੱਧ ਗਿਆ ਉਹ ਕਿਉਂਕਿ ਤੁਹਾਨੂੰ ਇੱਕ ਫਿਟਬਿਟ ਘੜੀ ਫ੍ਰੀ ਦੇਣੀ ਆ ਉਹ ਜੀ ਆਲਮੋਸਟ 150 ਡਾਲਰ ਦੀ ਉਹਦੀ ਵੈਲਿਊ ਹੈ ਨਾਲ ਉਹ ਘੜੀ ਫ੍ਰੀ ਦੇਣੀ ਹੈ ਉਹ ਤੁਹਾਨੂੰ ਸਾਰੀ ਦਿਹਾੜੀ ਉਹਨਾਂ ਤੁਹਾਨੂੰ ਦੱਸਦਾ ਰਹਿਣਾ ਵੀ ਤੁਹਾਡੇ ਤੁਸੀਂ ਅੱਜ ਕਿੰਨੇ ਕੈਲਰੀਜ਼ ਬਰਨ ਕੀ ਦੀਆਂ ਕਿੰਨੀ ਐਕਸਰਸ ਵਿਦ ਦੇਣਦਾ ਤੁਹਾਡਾ ਕੀ ਰੂਟੀਨ ਸੀ ਸਾਰਾ ਉਹ ਤੁਹਾਡੇ ਉਹ ਸਿੰਕ ਹੋ ਜਾਣ ਤੁਸੀਂ ਆਪ ਜੀ ਇਹਨਾਂ ਮਾਨੀਟਰ ਕਰ ਸਕਦੇ ਹੋ ਦਾ ਵੀ ਰਿਟਰਨ ਹੈਗੀ ਹੁਣ ਬੱਚੇ ਦੀਆਂ ਜਾਂ ਕਿਸੇ ਨਾਲ ਮਿਲਣ ਨਾਲ ਬੱਚਾ ਨੇ ਹੁਣ ਜੇ ਬੱਚਾ 20 ਸਾਲ ਦਾ 24 ਸਾਲ ਦਾ ਉਹਨਾਂ ਨੇ ਪਤਾ 500 ਲਾਚਨਾਂ ਨੂੰ ਫੈਮਿਲੀ ਲੈ ਜੇ ਰ ਸ਼ੁਰੂ ਕਰਨੀ ਹੈ ਵੀ ਪਹਿਲਾਂ ਹੀ ਤੁਸੀਂ ਇੱਕ ਸਟੈਪ ਕਰਤਾ ਹੁਣ ਜੇ 60 70 ਚਿੰਤਾ ਨਹੀਂ ਇੱਕ ਤਾਂ ਉਹਨਾਂ ਦੇ ਸਿਹਤ ਡਾਊਨ ਦਿ ਰੋਡ ਜੀ ਖੁਦਾ ਨਾ ਖਾਸ ਕਵਰੇਜ ਹੈਗੀ ਹੈ ਨਾਲ ਇਹ ਹਰੇਕ ਸਾਲ ਉਹਨਾਂ ਦਾ ਮੈਡੀਕਲ ਹੋਣਾ ਉਹ ਫ੍ਰੀ ਨਾਲੇ ਉਹਨਾਂ ਨੂੰ ਇੱਕ ਨਾ ਇਨਸਟ੍ਰਕਟਰ ਮਿਲ ਗਿਆ ਜਿੰਮ ਦਾ ਨਾਲ ਕਿਉਂਕਿ ਇਹ ਵਾਲਾ ਉਹਨਾਂ ਆਨਲਾਈਨ ਸਟੱਡੀਜ਼ ਹੈਗੀਆਂ ਜਿਉਂਦਾ ਪਾਰ ਵੱਧ ਰਿਹਾ ਪਰ ਉਹਨਾਂ ਵਾਸਤੇ ਜਿਹੜੇ ਕੰਪਿਊਟਰ ਤੇ ਨਾਲ ਇਹ ਚੀਜ਼ਾਂ ਗੈਜਟਸ ਦੇ ਨਾਲ ਕਰ ਸਕਦੇ ਨਾਲੇ ਜਿਨ੍ਹਾਂ ਦੀ ਸਿਹਤ ਵਧੀਆ ਨਾਲੇ ਚਾਹੁੰਦੇ ਸਿਹਤ ਵਧੀਆ ਜ਼ਰੂਰੀ ਹੈ ਯੰਗ ਜਿਹੜੇ ਹੁਣ ਆਪਾਂ 45 50 60 ਯੰਗ ਨੇ ਬਿਲਕੁਲ ਫਿੱਟ ਨੇ ਦਾ ਹਰ ਹਰ ਅਗਲਾ ਹਰੇਕ ਬੰਦਾ ਆਉਂਦਾ ਉਹਨੂੰ ਚੈਲੰਜ ਕਰ ਰਿਹਾ ਕਿ ਕਿ ਫਿਟ ਰਹਿੰਦੇ ਨੇ ਉਹਨਾਂ ਵਾਸਤੇ ਵੀ ਉਹ ਪ੍ਰੋਡਕਟ ਵਧੀਆ ਨੇ ਕਿਉਂਕਿ ਹਰੇਕ ਸਾਹ ਤੁਹਾਨੂੰ ਇਹ ਆਪਾਂ ਠੀਕ ਆ ਪਰ ਉਹ ਤੁਹਾਨੂੰ ਅਨਟਾਪ ਬਿਮਾਰੀ ਹੁੰਦੀ ਹੈ ਕਰਕੇ ਇਦਾਂ ਇਹ ਯੰਗ ਜਨਰੇਸ਼ਨ ਨੂੰ ਬਹੁਤ ਅਟਰੈਕਟ ਕਰ ਰਹੇ ਨੇ ਤੇ ਜਿਹੜਾ ਉਹ ਪ੍ਰੋਡਕਟ ਬਹੁਤ ਜ਼ਿਆਦਾ ਡਾਲਰ ਸਾਲ ਦਾ ਹਾਂਜੀ ਤੇ ਸਾਲ ਦੇ ਤਾਂ ਪੈਸੇ ਬਹੁਤ ਘੱਟ ਬਣਦੇ ਫਿਰ ਬਿਲਕੁਲ ਸਹੀ ਮਿਲਨ ਨਾਲ ਇਹ ਸਭ ਵਧੀਆ ਚੀਜ਼ ਇਹ ਹੈ ਜੀ ਜੀ 5000 ਡਾਲਰ ਟੋਟਲ ਦੇਣਾ ਬਿਲਕੁਲ ਜੀ ਬਿਲਕੁਲ ਨਾਲੇ ਸਭ ਨਾਲੋਂ ਚੀਜ਼ ਇਹ ਹੈਗੀ ਜੀ ਜਦੋਂ ਵੀ ਉਹ ਚਾਹਣ ਇਹਨੂੰ ਤੁਸੀਂ ਆ ਡਾਲਰ ਦੀ ਕਵਰੇਜ ਹੈਗੀ ਕਿਸਨ ਕਨਵਰਟ ਕਰਨਾ ਪਰਮਨੈਂਟਸ ਕਿਉਂਕਿ ਜੇ ਕੋਈ ਪ੍ਰੋਫੈਸ਼ਨਲ ਡਾਕਟਰ ਬਣ ਗਿਆ ਕੋਈ ਲॉयर ਬਣ ਗਿਆ 40 47 48000 ਟੋਟਲ ਹੋਇਆ ਹਾਂਜੀ ਬਿਲਕੁਲ ਤੁਸੀਂ ਉਸ ਤੋਂ ਬਾਅਦ ਕਰ ਸਕਦੇ ਹੋ ਪਰ ਪਤਾ ਸਿਹਤ ਵਧੀਆ ਨਾਲ ਘਟੀ ਜਾਣਾ ਇਸ ਕਰਕੇ ਇਸ ਕਰਕੇ ਉਹ ਹੈ ਕਿਉਂਕਿ ਰੇਟ ਘੜੀ ਜਾਣਾ ਜੇ ਤੁਹਾਡੀ ਸਿਹਤ ਵਧੀਆ ਜੇ ਨਹੀਂ ਹੋਊਗਾ ਆ ਪੈਂਟਾਂ ਨਹੀਂ ਸਕਦਾ ਉਸ ਸਮੇਂ ਜੇ ਮੰਨ ਲਓ ਮਿਲੀਅਨ ਡਾਲਰ ਦੀ ਜੇ ਐਵਰੇਜ ਟੈਂਟੇਟਿਵਲੀ ਹੁਣ ਬਿਲਕੁਲ ਬਿਲਕੁਲ ਅੱਛਾ ਸਰ ਗੁਰਦਾਵ ਜੀ ਨੇ ਪੁੱਛਿਆ ਫੇਸਬੁੱਕ ਤੇ ਕਿ ਮੇਰਾ ਕੁਐਸਚਨ ਹੈ ਕਿ ਮੇਰੀ 7000 ਗ੍ਰੋਸ ਹੈ ਡਿਸੇਬਿਲਟੀ ਮੈਂ 7000 ਦੀ ਕਲਾ ਸਕਦਾ ਹਾਂਜੀ ਬਿਲਕੁਲ ਉਸ ਸਾਹਿਬ ਨਾਲ ਬਿਲਕੁਲ ਇਨਕਮ ਸ਼ੋ ਕਰਦੇ ਆ ਪੂਰੇ 7000 ਦੀ 7000 ਦੀ 7000 ਨੇ ਉਹਨਾਂ ਦਾ ਜੇ ਮਿਲਣੀ ਹੈ ਉਹ ਤੁਸੀਂ ਆਲਮੋਸਟ 5500 ਤੱਕ ਤੁਹਾਨੂੰ ਕੰਪਿਊਟਰ ਜਨ ਦਸਟਰੀ ਨੇ ਵੀ ਦੇ ਟੈਕਸ ਨਹੀਂ ਦੇਣਾ ਜੇ ਹੁਣ 7000 ਦੀ ਗ੍ਰੋਸ ਹੈਗੀ ਹੈ ਉਸ ਤੋਂ ਬਾਅਦ ਤੁਹਾਡੇ ਇਨਕਮ ਕਿੰਨੀ ਸ਼ੋ ਕਰਦੇ ਕੱਢ ਲੈਂਦੇ ਜੇ ਹੁਣ ਕਿਸੇ ਦੇ ਲੱਖ ਡਾਲਰ ਦੀ ਗ੍ਰੋਸ ਹੈ ਤੋ ਕਰ ਸਕਦਾ ਮੇਰੀ ਲੱਖ ਡਾਲਰ ਦੀ ਇਨਕਮ ਹੈ ਪਰ ਸਕਦੇ ਆ ਕਿ ਆਪਾਂ ਆ ਉਸ ਹਿਸਾਬ ਨਾਲ ਪਰ ਉਸ ਟੈਕਸ ਨਹੀਂ ਦੇਣਾ ਕਿਉਂਕਿ ਉਹ ਲੈ ਕੇ ਆਉਣੇ ਹੋ ਪਰ ਜਿੰਨੇ ਤੁਸੀਂ ਡਿਸੇਬਿਲਟੀ ਕਰਾਈ ਉਸ ਤੁਸੀਂ ਉਸ ਤੇ ਜੇ ਤੁਸੀਂ 4000 ਦੀ ਕਰਾਈ ਤੇ 4000 ਤੁਹਾਨੂੰ ਜੇ ਮੰਥਲੀ ਆ ਤੇ 4000 ਤੇ ਟੈਕਸ ਨਹੀਂ ਦੇਣਾ ਤੁਸੀਂ ਜੇ ਕੱਲਾ ਤੁਹਾਡਾ ਪੇਚ ਹੈ ਦੇ ਨਾਲ ਬਿਜ਼ਨਸ ਦੇ ਖਰਚੇ ਹੈਗੇ ਪਾ ਸਕਦੇ ਹੋ 3000 ਦੇ 7000 ਤੁਸੀਂ ਪੂਰਾ ਕਰਨਾ ਹੈ ਜੇ ਤੁਹਾਡੇ ਓਵਰਹੈਡ ਹੈਗੇ ਬਿਜ਼ਨਸ ਦੇ ਉਸ ਉਸੇ ਪੂਰਾ ਆਪਦਾ 7000 ਵੀ ਕਰਨਾ ਜੇ ਤੁਹਾਡੇ ਕਿਸ਼ਤਾਂ ਹੈਗੀਆਂ ਨੇ ਉਹ ਵੀ ਉਸ 'ਚ ਤੁਹਾਡਾ ਕੋਈ ਸਕਦੇ ਅੱਛਾ ਜੀ ਇੱਕ ਹੋਰ ਸੁਪਰਵਾਈਜ਼ਾ ਦੀ ਜਿਹੜੀ ਹੈ ਅਨਸ਼ੋਰੈਂਸ ਬਾਰੇ ਉਹਦੀ ਗੱਲ ਬੜੀ ਚੱਲੀ ਸੀ ਤੁਸੀਂ ਕਿਹਾ ਵੀ ਕੋਈ ਕੰਪਨੀਆਂ ਜ਼ਰੂਰ ਜਿਹੜੀਆਂ ਕੰਪਨੀਆਂ ਕਈ ਇਕੱਠਿਆਂ ਕਰਕੇ ਵੱਧ ਵੀ ਕਵਰੇਜ ਹੋ ਸਕਦੀ ਹੈ ਉਹ ਇਸ ਤਰ੍ਹਾਂ ਵਰਕਆਊਟ ਹਾਂਜੀ ਬਿਲਕੁਲ ਦੋ ਕੰਪਨੀਆਂ ਤੋਂ ਲੈਣਾ ਪਏ ਲੈ ਕਿਉਂਕਿ ਬੇਸਿਕਲੀ ट्रैवल इंश्योरेंस ਦੋ ਆਪਣੇ ਕੋਲ ਹਾਊਸ ਡੈਂਟਲ ਪਲਾਨ ਵੀ ਹੈ ਵਾਈਫ ਕੋਲੇ ਵੀ ਹੈ ਫਿਰ ਉਹਦੇ ਚ ਵੀ ਉਹਨਾਂ ਦੇ ਪਹਿਲਾਂ ਕਿੰਨੂ ਬਿੱਲ ਕਰਨਾ ਉਹਨਾਂ ਨੇ ਦੇਖਣ ਨਾਲ ਪਹਿਲਾਂ ਕਿਹੜਾ ਜਿਹੜਾ ਬਸ ਰੇਟ ਕਹਿੰਦਾ ਆਉਂਦਾ ਉਸ ਹਿਸਾਬ ਨਾਲ ਆਉਂਦਾ ਵੀ ਕ੍ਰਾਈਟੇਰੀਆ ਹੈਗਾ ਪਹਿਲਾਂ ਕਿੰਨੂ ਬਿੱਲ ਕਰਨਾ ਬਾਕੀ ਜੇ ਕਿਸੇ ਨੇ ਟਰੈਵਲ ਇੰਸ਼ੂਰੈਂਸ ਸੁਪਰਵਾਈਜ਼ਰ ਪਹਿਲਾਂ ਕਲੇਮ ਕਰਦੇ ਆ ਨੇ ਨਾਲ ਪਿੱਛੇ ਕਰ ਦੂਜੀ ਕੰਪਨੀ ਪਤਾ ਵੀ ਇੱਕ ਕੰਪਨੀ ਤੁਸੀਂ ਪ੍ਰੋਡਕਟ ਲਿਆ ਰਹੇ ਦੂਜੀ ਦਾ ਵੀ ਤੁਸੀਂ ਉਹ ਯੂਜ਼ ਕਰ ਸਕਦੇ ਹੋ ਜੀ ਓਕੇ ਅੱਛਾ ਜੀ ਅਗਲਾ ਸਵਾਲ ਹੈ ਜਿਹੜਾ ਕੋਈ ਇਹ ਹੈ ਕਿ ਰੀਵਿਊ ਜਿਹੜਾ ਤੁਸੀਂ ਕਹਿੰਦੇ ਹੋ ਵੀ ਪੁਰਾਣੀਆ ਪਾਲਸੀ ਕਿੰਨਾ ਕੁ ਤਜਰਬਾ ਹੋਇਆ ਵੀ ਇਹ ਗਲਤ ਹੋਈਆਂ ਹੋਈਆਂ ਤੁਸੀਂ ਠੀਕ ਹਾਂਜੀ ਬਿਲਕੁਲ ਉਹ ਚਾਹੀਏ ਵੀ ਠੀਕ ਕਰਨਾ ਮਤਲਬ ਹੈ ਕਈ ਵਾਰੀ ਆਪਾਂ ਚੀਜ਼ ਨੂੰ ਬਿਲਕੁਲ ਇਹ ਹੈ ਵੀ ਸਾਲ ਦੀ ਪਾਲਸੀ ਲਈ ਹੋਈ ਹੈ ਔਰ ਆਦੇ ਵਿੱਚ ਕਾਲੇ ਏਦਾਂ ਦਾ ਟਾਈਮ ਆ ਗਿਆ ਲੇਟ ਕੀਤੀ ਰਿਵਿਊ ਕਰਨ ਦਾ ਮਤਲਬ ਨੇ ਮਾਰਕਟ ਤੇ ਇਹ ਨਹੀਂ ਵੀ ਪਰ ਸਿਚੁਏਸ਼ਨ ਕਈ ਵਾਰ ਡਿਫਰੈਂਟ ਹੁੰਦੀ ਆ ਆਪਾਂ ਉਸ ਚੀਜ਼ ਨੂੰ ਉਦੋਂ ਪਤਾ ਨਹੀਂ ਉਹ ਸਾਡੀ ਸਿਚੁਏਸ਼ਨ ਕੀ ਸੀ ਲੈਣ ਦੇ ਅਪਰਮਾਨਡ ਕ੍ਰੈਡਿਟ ਕਾਰਡ ਲੈ ਲਈ ਸੀ 25000 ਦੀ ਅੱਜ ਤੋਂ 10 ਸਾਲ ਪਹਿਲਾਂ ਉਦੋਂ 25000 ਦੀ ਵੈਲਿਊ ਸ਼ਾਇਰ ਕਹਿੰਦੇ ਹੋਣਗੇ 25000 ਦੀ ਵੈਲਿਊ ਬਹੁਤ ਹੈ ਹੁਣ ਅੱਜ ਸੋਚਦੇ ਨੇ ਵੀ ਅਸੀਂ ਹੁਣ ਦੀ ਕਵਰੇਜ ਹੈ 25000 ਹੀ ਦੇਣਾ ਕੰਪਨੀ ਨੂੰ ਨਾਲੇ ਜਦੋਂ ਉਹਨਾਂ ਤੋਂ ਪੈਸੇ ਲੈਣੇ ਨੇ ਤੇ ਉਹ ਉਹਨਾਂ ਦੀਆਂ ਸ਼ਰਤਾਂ ਹੋਣੀਆਂ ਪੈਸੇ ਸਾਡੇ ਸ਼ਰਤਾਂ ਉਹਨਾਂ ਦੀਆਂ ਇਸ ਕਰਕੇ ਰਿਵਿਊ ਜਦੋਂ ਕਰਦੇ ਹਾਂ ਇਹੋ ਚੀਜ਼ਾਂ ਨਿਕਲ ਨੇ ਵਿੱਚੋਂ ਵੀ ਜਿਹੜੇ ਆਪਾਂ ਨੂੰ ਕਿਉਂਕਿ ਆਪਾਂ ਔਨ ਟਾਪ ਆਫ ਰਹ ਸਾਡੇ ਹਿਸਾਬ ਨਾਲ ਠੁਕਵਾ ਆ ਸਾਡੇ ਹਿਸਾਬ ਨਾਲ ਪੈਸੇ ਮਿਲਣਗੇ ਸਾਡੇ ਹਿਸਾਬ ਨਾਲ ਜਿਹੜੇ ਜ਼ਰੂਰਤ ਪੈਣੀ ਚੀਜ਼ ਦੀ ਲੋੜ ਪਈ ਉਹ ਕੰਮ ਆਊਗੀ ਬੈਨੇਫੀਸ਼ੀਰੀ ਜੇ ਚੇਂਜ ਹੋਇਆ ਪਰਿਵਾਰ ਦਾ ਮੈਂਬਰ ਐਡੀਸ਼ਨ ਆਇਆ ਕੋਈ ਕੋਈ ਐਡ ਹੋਇਆ ਕੋਈ ਜੇ ਬੈਂਕਿੰਗ ਇਨਫੋਰਮੇਸ਼ਨ ਚੇਂਜ ਕਰ ਸਕਦੇ ਹੋ ਐਡ ਆਊਟ ਕਰ ਸਕਦੇ ਹੋ ਬਿਲਕੁਲ ਜੀ ਬਿਲਕੁਲ ਸਾਰੀਆਂ ਚੀਜ਼ਾਂ ਤੇ ਚੀਜ਼ਾਂ ਆਉਂਦੀਆਂ ਨੇ ਹੁੰਦੀਆਂ ਅੱਜ ਮੈਂ ਜਦੋਂ ਆਇਆ ਸੀ ਉਦੋਂ ਸਿੰਗਲ ਸੀਗਾ ਅੱਜ ਮੇਰੇ ਤਿੰਨ ਬੱਚੇ ਨੇ ਚਾਰ ਹੋਂਦਰ ਰਿਵਿਊ ਦੇ ਨਾਲ ਮੈਨੂੰ ਮੈਨੂੰ ਪਤਾ ਜਾਨ ਮੇਰਾ ਡਵਾਈਸ ਦੇ ਮੇਰਾ ਕੰਮ ਕਰਦਾ ਉਹਨੇ ਕਹਿਣਾ ਵੀ ਪੈਸਾ ਬਦੋਂ ਤੁਹਾਨੂੰ 2.5 ਲੱਖੀ ਬਹੁਤ ਸੀਗਾ ਰਾਈ ਦੇ ਟਾਈਮ ਤੇ ਤੁਹਾਨੂੰ ਦੋ ਮਿਲਣ ਦੀ ਕਵਰੇਜ ਚਾਹੀਦੀ ਹੈ ਉਹ ਲੈ ਕੇ ਯਾਰ ਇੰਸ਼ੂਰੈਂਸ अच्छा जी पहला तो ਤੁਸੀਂ ਵਰਕ ਆਊਟ ਤੋਂ ਕਰ ਲਿਆ ਨੇ ਪੁੱਛਿਆ ਸੀ ਉਹਦੀ ਕਵਰੇਜ ਬਾਰੇ ਉਹ ਮਾੜਾ ਜਿਹਾ ਸਮਝਾ ਦੇ ਹਾਂਜੀ ਜੇ ਸਾਲ ਦਾ ਬਣ ਗਿਆ ਉਹਦੇ ਨਾਲ 4600 ਡਾਲਰ ਦੀ ਡਿਸੇਬਿਲਟੀ ਲੈ ਸਕਦੇ ਨੇ ਪਰਸਨਲ ਚੈੱਕ ਨੂੰ ਪ੍ਰੋਟੈਕਟ ਕਰਵਾ ਸਕਦੇ ਉਹਨਾਂ ਨੇ 4600 4000 ਡਾਲਰ ਦੀ ਡਿਸੇਬਿਲਟੀ ਲਈ ਜਦੋਂ ਡਿਸੇਬਿਲਟੀ ਹੋ ਗਈ ਮਨ ਟੈਕਸ ਨਹੀਂ ਦੇਣਾ 4600 ਡਾਲਰ ਉਹਨਾਂ ਨੂੰ ਟੈਕਸ ਫ੍ਰੀ ਇਹ ਮੈਂ ਹੁਣ ਜੇ ਕੰਪਨੀ ਬਲ ਸਕਦੇ ਆ ਨੇ ਜੇ ਓਨਰ ਆਪਰੇਟਰ ਨੇ ਨਾਲ ਕੰਮ ਨਹੀਂ ਪਤਾ ਨਾਲ ਕੀ ਰਹਿੰਦਾ ਹੋ ਸਕਦਾ ਜੇ ਓਨਰ ਆਪਰੇਟਰ ਕੋਈ ਹੋਰ ਉਹਨਾਂ ਦਾ ਕੰਮ ਹੈ ਉਹ ਆਪਣੇ ਓਵਰਹੈੱਡ ਵੀ ਪਾ ਸਕਦੇ ਨੇ 7000 ਪੂਰਾ ਕਰਨ ਵਾਸਤੇ ਕਿਉਂਕਿ ਜਿਹੜੀਆਂ ਕੋਈ ਲੀਜ਼ ਆ ਜਾਂ ਜਾਂ ਕੋਈ ਨਵਾਂ ਐਮਪਲੋਈ ਹੈ ਜਾਂ ਉਸ ਤਰੀਕੇ ਨਾਲ ਉਹ ਚੀਜ਼ਾਂ ਬੈਠ ਕੇ ਹੋ ਰਹਿ ਗਏ ਜੀ ਕਿਸੇ ਨੇ ਆਰਐਸਪੀ ਲੈਣੀ ਹੈ ਟੀਐਫਐਸ ਆਪਾਂ ਚਲੋ ਆਪਾਂ ਨੈਕਸਟ ਵੀ ਕਰ ਆਪਾਂ ਇਹ ਉਹਨਾਂ ਉਹਨਾਂ ਦੇ ਸਮਝ ਗੱਲ ਉਸ ਤੇ ਆਪਾਂ ਸ਼ੁਰੂ ਕਰਾਂਗੇ ਹਾਂ ਕਿਉਂਕਿ ਲੋਕੀ ਆ ਰਹੇ ਸੀ ਲੋੜੀ ਕੌਂਟੈਸਟ ਕੀਤਾ ਸੀਗਾ ਬਹੁਤ ਫੋਨ ਆਏ ਨੇ ਫੋਨ ਬਣਾਉਣੇ ਸੀ ਕਿਉਂਕਿ ਆਪਾਂ ਪਹਿਲਾਂ ਇਹ ਫੋਨ ਆਉਣਗੇ ਕਿਸੇ ਨੂੰ ਪਿੱਛੇ ਫੋਨ ਨਹੀਂ ਕਰਨਾ ਨੂੰ ਬੱਗ ਨਹੀਂ ਕਰਨਾ ਉਹਨਾਂ ਚ ਕਈਆਂ ਦੇ ਵਿੱਚੋਂ ਰਹਿ ਗਏ ਸੀ ਸੋਚਿਆ ਸਿਰਫ ਡਰਾ ਸੀ ਉਹਨਾਂ ਨਾਲ ਕੰਟੈਕਟ ਕਰ ਲਿਆ ਆਪ ਦਾ ਕਾਰਡ ਆ ਕੇ ਲੈ ਗਏ ਸੀ ਪਰ ਉਹਨਾਂ ਚ ਇਹ ਵੀ ਕਈਆਂ ਦੇ ਰਹਿ ਗਏ ਸੀ ਉਹਨਾਂ ਵਾਸਤੇ ਮਾਫੀ ਚਾਹਣਾ ਕਿਉਂਕਿ ਸਾਨੂੰ ਇਹ ਜੀ ਜੋ ਸੀ ਕਿਹਾ ਸੀ ਵੀ ਅਸੀਂ ਨਾ ਹੀ ਕਿਸੇ ਨੂੰ ਪਿੱਛੇ ਫੋਨ ਕਰਦੇ ਆ ਨਾ ਵਾਸਤੇ ਫਿਰ ਤੁਹਾਡੇ ਹੋਰ ਸਾਫ ਨੂੰ ਥੋੜਾ ਈਜ਼ੀ ਹੋ ਬਾਰੇ ਜਾਂ ਆਰਰਐਸਟੀ ਬਾਰੇ ਜਾਂ ਤੁਸੀਂ ਸੁਪਰ ਬਾਰੇ ਹਮੇਸ਼ਾ ਹਾਜ਼ਰ ਬੀਚੀ ਜਿੱਥੇ ਵੀ ਸਾਵੇ ਆਇਲੈਂਡ ਕਿਤੇ ਵੀ ਹੈ ਜਿੱਥੇ ਪੰਜਾਬ ਦੀ ਉੱਥੇ-ਉੱਥੇ ਅਸੀਂ ਹਾਜ਼ਰ ਹਾਂ ਜੀ ਤੇ ਬਿਲਕੁਲ ਕੋਈ ਜੀ ਤੁਹਾਡੇ ਸਾਰੇ ਸਰੋਤਾਂ ਨੇ ਕੋਈ ਸਰਤ ਫੋਨ ਕੀਤੇ ਸੀ ਉਹ ਕਾਰ ਨੇ ਸੀ ਬਰਵਿੰਦਰ ਸਿੰਘ ਹੋਣਾ ਮਾੜੀ ਆਵੇ ਸੈਂਟ ਦਾ ਬਲੋਂ ਉਹ ਦੇ ਕੇ ਬੰਦਿਆਂ ਦੀ ਖਲ ਲਾ ਲੈਣੀ ਤੇ ਇਸ ਲਈ ਉਹ ਵਾਰਸ ਫੋਨ ਨਹੀਂ ਕਰ ਸਕੇ ਜਿਨ੍ਹਾਂ ਨੇ ਬਿਜ਼ਨਸ ਲਈ ਫੋਨ ਕੀਤੇ ਸੀ ਕੋਈ ਪਾਲਿਸੀ ਲੈਣ ਲਈ ਪਲੀਜ਼ ਦੁਬਾਰਾ ਫੇਰ ਉਹਨਾਂ ਦੇ ਵਿੱਚ ਤੇ ਇੱਥੇ ਪ੍ਰਮੇਂਦਰ ਸਿੰਘ ਜੱਦੀ ਸ਼ੁਰੂਆਤ ਕੀਤੀ ਹੈ ਸਿੰਕ ਇੰਸ਼ੋਰੈਂਸ ਦੀ ਬਹੁਤ ਵਧੀਆ ਤਰੀਕੇ ਨਾਲ ਕਮਿਊਨਿਟੀ ਨੂੰ ਸਰਵ ਕਰ ਰਹੇ ਨੇ ਤੇ ਖੂਬ ਤਰੱਕੀਆਂ ਕਰ ਤੇ ਹੁਣ ਨਾਲ ਜਦੋਂ ਫੇਰ ਗੱਲਬਾਤ ਹੋਏਗੀ ਹੁਣ ਖਬਰਾਂ ਦਾ ਸਮਾਂ ਜੀ ਖਬਰਾਂ ਤੋਂ ਬਾਅਦ ਆਕੇ ਖਬਰਾਂ ਸੁਣਾਉਣਾ ਹੈ ਤੇ ਛੋਟੀ ਜਿਹੀ ਇੱਕ ਕਹਾਣੀ ਸੁਣਾਉਣੀ ਹੈ ਤੇ ਗੀਤ ਸੰਗੀਤ ਹੋਏਗਾ ਸ਼ੁਕਰਵਾਰ ਦਾ ਮਾਹੌਲ ਕਰਦੇ ਆ 12:09 ਹੋਇਆ ਜੀ ਪਰਮਿੰਦਰ ਸਿੰਘ ਦੋਣੀ ਨਵੇਂ ਜਿਹੜੇ ਇੰਸ਼ੋਰੈਂਸ アドਵਾਈਜ਼ਰ ਬਣਾ ਰਹੇ ਨੇ ਡੈਡੀਕੇਟਿਡ ਜਿਨ੍ਹਾਂ ਨੇ ਕੰਮ ਕਰਨਾ ਹੈ ਦੀ ਉਹਨਾਂ ਨੂੰ ਪਾੜ ਹੈ 600 400 28 72 13 ਕਲਾਸਾਂ ਲਗਾ ਕੇ ਉਹਨਾਂ ਨੂੰ ਲਾਇਸੈਂਸ ਦਿਵਾਉਣਗੇ ਕੋਲੋਂ ਸਾਰਾ ਖਰਚਾ ਕਰਨਗੇ ਤੇ ਫਿਰ ਵਧੀਆ ਪੈਕੇਜ ਹੋਏਗਾ ਤਨਖਾਹ ਕਮਿਸ਼ਨ ਤੇ ਪਰ ਇਹ ਨਾ ਹੋਵੇ ਵੀ ਲਾਇਸੈਂਸ ਲੈ ਕੇ ਗਾਂਹ ਹੋ ਜਾ ਜਾਂ ਲਾਇਸੈਂਸ ਲੈ ਕੇ ਕੰਮ ਹੋਰ ਕਰਦੇ ਰਹਿ ਕੰਮ ਇੱਕੋ ਹੀ ਹੋਊ ਫਿਰ ਇੱਕੋ ਹੀ ਕੰਮ ਵਧੀਆ ਹੁੰਦਾ ਹੁੰਦਾ ਵੱਧ ਕੰਮ ਨਹੀਂ ਵਧੀਆ ਹੁੰਦੇ ਹੁੰਦੇ ਸਮਾਂ ਬੰਦੇ ਕੋਲ ਰਹਿੰਦਾ ਸਦਾ ਸਮਾਂ ਜਿਹੜਾ ਉਹ ਕੰਮ ਤੋਂ ਬਾਅਦ ਵੀ ਕੰਮ ਲਈ ਸਮਾਂ ਹੋ ਸਕਦਾ ਮਸਲਨ ਸਾਡਾ ਮਹਿਕਮਾ 2-2 3-3 ਘੰਟਿਆਂ ਵਾਲਾ ਜਾਂ ਪੱਤਰ ਪ੍ਰੇਰਕ ਨੇ ਉਹਨਾਂ ਨੂੰ ਸਮਾਂ ਬਹੁਤ ਹੈ ਬਹੁਤ ਕੁਝ ਕਰ ਸਕਦੇ ਆ ਉਹ ਅਕਈ ਤਾਂ ਲੱਗੇ ਹੋਏ ਨੇ ਕਈ ਕੰਮ ਆ ਜੇ ਪਰ ਨਿਦਰਾ ਬੰਦਾ ਹੋਵੇ ਨਾ ਨਿਦਰਾ ਇੱਕ ਕੋਈ ਕੰਮ ਹੋਵੇ ਉਹੀ ਵਧੀਆ ਹੁੰਦਾ ਦੋ ਕੰਮ ਤਿੰਨ ਕੰਮ ਇੱਕ ਕੰਮ ਨਾਲ ਹੀ ਹੋ ਸਕਦੇ ਸਿਰ ਤੁਹਾਨੂੰ ਜਿੱਤਨਾ ਕਿਤੇ ਸੁਲਾ ਕਰਨੀ ਪੈਂਦੀ ਹੈ ਆਪਣੇ ਕਿਸਮ ਲਈ ਤੇ ਉਹ ਉੱਥੇ ਫੇ ਹੈ ਕਿਤੇ ਫਸ ਗਏ ਕਿਤੇ ਕੋਈ ਗੱਲ ਹੋ ਗਈ ਕਿਤੇ ਪੈਸੇ ਢੇਲੇ ਲਈ ਨੀਵੇਂ ਹੋ ਗਏ ਕਦੇ ਕਿ ਪਟਮਾਰਲੀ ਕਿਸੇ ਨੂੰ ਕਿਸੇ ਨੂੰ ਡਰਾ ਲਿਆ ਕਿਸੇ ਨੂੰ ਕੋਕ ਕਰ ਲਿਆ ਜਦ ਕੰਮ ਦੇ ਵਿੱਚ ਤੁਸੀਂ ਇਹ ਮੇਨਾ ਕਿਵੇਂ ਕੁਝ ਨਾ ਕੁਝ ਗਲਤ ਕਰਦੇ ਹੋ ਨਾ ਲੋਕਾਂ ਨੂੰ ਪਤਾ ਲੱਗ ਜਾਂਦਾ ਜਦ ਪਤਾ ਲੱਗ ਜਾਂਦਾ ਫਿਰ ਮਾਨ ਲੋਕਾਂ ਦਾ ਟੁੱਟਦਾ ਹੈ ਫਿਰ ਸਾਰਿਆਂ ਨੂੰ ਉਸ ਨਾਲ ਦੇਖਦੇ ਐਡਸ ਦੀਆਂ ਗੱਲਾਂ ਕਈ ਵਾਰ ਚੱਲ ਪੈਂਦੀਆਂ ਨੇ ਗੱਲਾਂ ਬਾਤਾਂ ਚੱਲਦੇ ਦੇ ਕੇ ਜਿਹੜਾ ਕੁਝ ਮਰਜ਼ੀ ਕੋਈ ਕਰਾ ਲਵੇ ਉਹ ਕਹਿੰਦੇ ਨੇ ਨੂੰ ਮਿਲਦੀਆਂ ਮਾਲਕਾਂ ਤੋਂ ਤਨਖਾਹਾਂ ਲੈਣੇ ਅਸੀਂ ਇਹ 2 ਡਾਲਰ ਜਿਹੜਾ ਭੁਲੇਖਾ ਬਾਹਰ ਬਹੁਤ ਐ ਲੋਕਾਂ ਨੂੰ ਕਮਿਸ਼ਨ ਤੇ ਜਿਹੜੇ ਕਰਦੇ ਹੋਣਗੇ ਉਹ ਕਰਦੇ ਹੋਣਗੇ ਪਰ ਕਮਿਸ਼ਨ ਤੇ ਵੀ ਕੰਮ ਕਰਨਾ ਜਿਹੜਾ ਜੇ ਕੋਈ ਬ੍ਰॉडकास्टर ਹੈ ਉਹ ਕਮਿਸ਼ਨ ਵੱਲ ਚਾਹਦਾ ਐਡਸ ਵੱਲ ਤੁਰਿਆ ਫਿਰਦਾ ਸੜਕਾਂ ਤੇ ਉਹ ਲੋਕਾਂ ਦੇ ਨਾਲ ਇਮਾਨਦਾਰੀ ਤੇ ਲੋਕਾਂ ਦੇ ਮਸਲਿਆਂ ਦੀ ਗੱਲ ਨਹੀਂ ਕਰ ਸਕਦਾ ਕੰਮ ਕਰੋ ਮਿਹਨਤ ਕਰੋ ਮਾਲਕਾਂ ਨੂੰ ਕਮਾ ਕੇ ਦੇਓ ਏਮਪਲਾਇਰ ਨੂੰ ਲਓ ਵਧੀਆ ਤੇ ਮਿਹਣਾ ਹੋਵੇ ਵੀ ਕਿਤੇ ਵੀ ਤੁਸੀਂ ਆਪਣੇ ਕੰਮ ਲਈ ਗੜਬੜ ਨਹੀਂ ਕੀਤੀ प्यार मोहब्बत ਨਾਲ ਚਾਹੇ ਜਾਨ ਇੱਕ ਦੂਜੇ ਦੀ ਲੈ ਲਓ ਤੈਨੂੰ ਦੇ ਰਿਹਾ ਹਾਂ ਕਹਿ ਕੇ ਕੋਈ ਜਦ ਗੱਲ ਕਰਦਾ ਹੈ ਫਿਰ ਉਹਦੇ ਬਾਅਦ ਕਿਉਂਕਿ ਲੁਕਦਾ ਨਹੀਂ ਹੈ ਜਿਨੇ ਕਿਸਦਾ ਫੋਨ ਕਰਕੇ ਕਹਿਣਾ ਤੇਰਾ ਬੰਦਾ ਇੰਨੇ ਲੈ ਗਿਆ ਸਤੋਂ ਅਸੀਂ ਇਹ ਤੋਂ ਆ ਕਰਾ ਰਹਿੰਦੀ ਉਹ ਕੱਖ ਨਹੀਂ ਸੋ ਬੱਚੇ ਇਸ ਗੱਲ ਤੋਂ ਗੁਰੂ ਮਹਾਰਾਜ ਤੋਂ ਹੱਥ ਜੋੜ ਕੇ ਉਸ ਤੋਂ ਮੰਗੇ ਵੀ ਦਤਿਆ ਲੋਕਾਂ ਨੂੰ ਵੀ ਦਿੰਨਾ ਆ ਬੰਦਾ ਮਲਟੀ ਬਿਲਿਨਰ 3.90 ਕੋਲ ਡਾਲਰ ਨੇ ਉਹ ਪ੍ਰੈਜ਼ੀਡੈਂਟ ਬਣ ਗਿਆ ਯਾਰ ਸਾਡਾ ਵੀ ਹੀਲਾ ਕਰ ਕੋਈ ਦੇਖਿਆ ਪੈਸੇ ਦੀ ਇਹਨੂੰ ਦੇ ਕੇਸ ਦੇ ਵਿੱਚ ਇਹ ਗੱਲ ਸਿੱਧ ਹੋ ਗਈ ਦੁਨੀਆ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕਿੰਦੀ ਭਾ ਸੱਜਣਾ ਇੱਥੇ ਆ ਚੀਜ਼ਾਂ ਹੁਣ ਚੱਲ ਪਈਆਂ ਪੈਸੇ ਦੀ ਬਿਨਾ ਤੇ ਲੋਕ ਸਾਰਾ ਕੁਝ ਕਰ ਰਹੇ ਨੇ ਹਜ਼ਾਰਾਂ ਵੈਬਸਾਈਟਸ ਨੇ ਜਿਨ੍ਹਾਂ ਦੇ ਪੈਸੇ ਦੇ ਲਈ ਸਰੀਰ ਵਿਕਦੇ ਆ ਜਿੱਥੇ ਹਜ਼ਾਰਾਂ ਹੀ ਵੈਬਸਾਈਟਾਂ ਨੇ ਜਿੱਥੇ ਪੈਸੇ ਲਈ ਸਵੰਦ ਮਿਲਦੇ ਆਂ ਹਜ਼ਾਰਾਂ ਹੀ ਵੈਬਸਾਈਟਸ ਨੇ ਜਿੱਥੇ ਲੋਕ ਆਪਣੇ ਆਪ ਨੂੰ ਆਫਰ ਕਰ ਰਹੇ ਨੇ ਡਾਲਰਸ ਦੇ ਲਈ ਤੇ ਪੈਸਿਆਂ ਲਈ ਸੋਨੇ ਦੇ ਟੁਕੜਿਆਂ ਦੇ ਯਾਰੀਆਂ ਲੱਗੀਆਂ ਟੁੱਟੀਆਂ ਦੋਸਤੀਆਂ ਨਿਵੀਆਂ ਨਾ ਨਿਵੀਆਂ ਪੈਸੇ ਦੀ ਕਹਾਣੀ ਹੈ ਬੰਦਾ ਕਹਿ ਜਾ ਗੱਡੀ ਕਹਿ ਜੀ ਨਿਕਲਿਆ ਕਿ ਮੈਂ ਕਪੜੇ ਕਹਿ ਜੇ ਨੇ ਥੱਲੇ ਚਾਹੇ ਘਾਹ ਫੂਸ ਦਾ ਟੋਕਰਾ ਹੀ ਹੋਵੇ ਪਰ ਲੱਗਦਾ ਹੋਵੇ ਬੱਲਾ ਬੱਲਾ ਬੱਲਾ ਇੰਨੀ ਮਹਿੰਗੀ ਗੱਡੀ ਕਪੜੇ ਵਧੀਆ ਨੇ ਚੰਗਾ ਬਸਮਾ ਲਾਇਆ ਤਿਆਰੀ ਚ ਡੋਨਲਡ ਟਰੰਪ ਦੇ ਕੇਸ ਨੇ ਇੱਕ ਗੱਲ ਸਿੱਧ ਕਰ ਦਿੱਤੀ ਕਿ ਰਾਜਨੀਤੀ ਪੈੜਾ ਦੋ ਚੀਜ਼ਾਂ ਅਲੱਗ-ਅਲੱਗ ਬਣੀਆਂ ਸਭ ਤੋਂ ਵੱਡਾ ਮਾਣ ਜਦ ਹੋਇਆ ਜਿਹੜਾ ਰੰਗ ਦਾ ਬੰਦਾ ਜਿਹੜੇ ਗੁਲਾਮਾਂ ਦੀ ਕੌਮ ਦੇ ਵਿੱਚੋਂ ਨਿਕਲ ਕੇ ਜਾ ਕੇ ਵਾਈਟ ਹਾਊਸ ਦੇ ਵਿੱਚ ਬੰਦਾ ਬੈਠਾ ਉਸ ਗੱਲਾਂ ਮੁੱਕ ਗਈਆਂ ਸੀ ਠੱਕ ਦਿਨਤੀ ਨਾਲ ਸਬੰਧਤ ਹੋਣ ਕਰਕੇ ਬੜਾ ਮਨ ਨੂੰ ਖੁਸ਼ੀ ਉਦੋਂ ਨੇ ਇਹ 55000 ਸਕੁਅਰ ਫੁੱਟ ਦਾ ਘਰ ਹੈ 18 ਕਿੱਲੇ ਦੀ ਲੋਟ ਹੈ ਪੈਨ ਸਕੋਟ ਪੂਲ ਟੇਬਲ 1792 ਦਾ ਬਣਿਆ ਹੋਇਆ 132 ਬੈੱਡਰੂਮ ਨੇ 32 ਬਾਥਰੂਮ ਨੇ 412 ਦਰਵਾਜੇ ਨੇ ने, ਖਿੜਕੀਆਂ ਨੇ 28 ਫਾਇਰਪਲੇਸਾਂ ने, ਤੇ 7 ਸਟੇਅਰਕੇਸ ਨੇ ਤੇ 3 ਐਲੀਵੇਟਰ ਨੇ ਇਹਦੇ ਘਰ ਦੇ ਵਿੱਚ ਹੁਣ ਰਹੂਗਾ 1792 ਚ ਵਾਈਟ ਹਾਊਸ ਬਣਿਆ ਆਇਰਲੈਂਡ ਦੇ ਇੱਕ ਡਿਜ਼ਾਈਨਰ ਨੇ ਇਸ ਨੂੰ ਆ ਜਮਈ ਉਸ ਦੀ ਅੱਜ ਵੀ ਕੀਮਤ ਮਿਲੀਅਨ ਅਮਰੀਕਨ ਡਾਲਰ ਰੀਅਲਟ ਅਨ ਗਣੀ ਹੈ ਇੱਕ ਵਾਰ ਅੰਗਰੇਜ਼ਾਂ ਨੇ ਬਿਲਕੁਲ ਸਾੜ ਕੇ ਸਵਾ ਕਰ ਦਿੱਤਾ ਸੀ ਸੈਂਡ ਸਟੋਨਸ ਦੇ ਤਰਜ਼ ਦਾ ਬਣਿਆ ਛੇ ਵਜੇ ਸਵੇਰੇ ਬ੍ਰਾਕਵਾ ਮੌਤਦਾ ਰਿਹਾ ਤੇ 11 ਵਜੇ ਸੌਂਦਾ ਰਿਹਾ ਸਭ ਤੋਂ ਪਹਿਲਾਂ ਵਰਕਆਊਟ ਬ੍ਰੈਕਫਾਸਟ ਓਵਰਲੌਕਸ ਦੇ ਵਿੱਚ ਸੈਕਟਰੀ ਨੇ ਮਿਲਣਾ ਉਸ ਦੇ ਵਿੱਚ ਸ਼ਾਂਤੀ ਤੇ ਅਮਰੀਕਾ ਨੂੰ ਸਬੰਧਤ ਖਤਰਿਆਂ ਕਰੇਗਾ ਉਹਦੇ ਬਾਅਦ ਫੇਰ ਅੱਜ ਦੀ ਮਨੀ ਅੱਜ ਦੀ ਇਕਨੋਮੀ ਕਿੱਥੇ ਖੜੀ ਹੈ ਉਹਦੇ ਬਾਅਦ ਸਾਰੇ ਐਡਵਾਈਜ਼ਰ ਆਉਣਗੇ 12 13 ਜੜੇ ਓਵਰਲੌਕਸ ਦੇ ਵਿੱਚ ਘਟੋ ਘੱਟ ਫੋਨ ਕਾਲਸ ਜਿਹੜੀਆਂ ਜਿੱਥੇ ਦੁਨੀਆਂ 'ਚ ਕਰਨੀਆਂ ਨੇ ਉੱਥੇ ਕੀਤੀਆਂ ਜਾਣਗੀਆਂ 35 ਦੇ ਕਰੀਬ ਦਿਹਾੜੀ ਦੇ ਲੈਟਰ ਆਉਂਦੇ ਥਰੂ ਜਾਣਾ ਹੈ ਦੇ ਕਰੀਬ ਚਿੱਠੀਆਂ ਪਰਸਨਲ ਲੋਕਾਂ ਦੀਆਂ ਬਰਾਖ ਬਾਬਾ ਰਹੇ ਤੇ ਵਾਪਸ ਭੇਜਦੇ ਰਹੇ ਸਭ ਤੋਂ ਵੱਡਾ ਮਾਣ ਬਰਾਖ ਬਾਬਾ ਨੇ ਕਿਹਾ ਵੀ ਮੈਨੂੰ ਪਤਾ ਸੀ ਜਦੋਂ ਮੈਂ ਆਪਣੀਆਂ ਛੋਟੀਆਂ ਬੱਚੀਆਂ ਤੇ ਘਰਵਾਲੀ ਨੂੰ ਲੈ ਕੇ ਆਇਆ ਮੈਂ ਇੱਥੇ ਥੋੜਾ ਸਮਾਂ ਰਹਿਣਾ ਚਾਹ ਤਾਲ ਜਾਂ 8 ਸਾਲ ਇਹ ਮੇਰਾ ਘਰ ਨਹੀਂ ਪਰ और ਸਭ ਤੋਂ ਵੱਡਾ ਮਾਨ ਦੁਨੀਆਂ ਦੇ ਸਭ ਤੋਂ अपनी ਬੰਦਾ ਆਪਣੀ ਰੋਟੀ ਦਾ ਖਰਚਾ ਆਪਣੀ ਗਰੋਸਰੀ ਦਾ ਖਰਚਾ ਆਪਣੀ ਤਨਖਾਹ ਚੋਂ ਕਟਾਉਂਦਾ ਹੈ ਇਹ ਆ ਸਵਾਦੇ ਨੂੰ ਕਹਿੰਦੇ ਲੋਕਤੰਤਰ ਸਾਧਾ ਖਰਚਾ ਉਹਦਾ ਆਪਣਾ ਉਹਨੂੰ ਜਿਹੜੀ ਅਕਮੋਡੇਸ਼ਨ ਲੋਕਾਂ 11 ਵਜੇ ਸੌਂਦਾ ਤੇ 11 ਤੋਂ 6 7 ਘੰਟੇ ਚ ਮਿਡਲ ਆਫ ਨਾਈਟ ਵੀ ਉਹਨੂੰ ਉਠਾ ਕੇ ਇੱਕ ਘੰਟੇ ਦੀ ਕੋਈ ਗੱਲਬਾਤ ਕੀਤੀ ਜਾ ਸਕਦੀ ਹੈ ਜੇ ਘੰਟੇ ਦੀ ਐਵਰੇਜ ਨੀਂਦ ਸੌਂਦੇ ਰਹੇ ਅਬ ਰਾਖਵਾਂ ਹੁਣ ਰਿਟਾਇਰ ਹੋਣ ਤੋਂ ਬਾਅਦ ਆਮ ਸਿਵਲ ਦੇ ਤੌਰ ਤੇ ਕਹਿੰਦੇ ਸਭ ਤੋਂ ਪਹਿਲਾਂ ਤਾਂ ਸੌਣਾ ਸਵਾਰਕ ਉਹਨੇ ਤੇ ਨੇ ਕਿਹਾ ਸੀ ਛੁੱਟੀਆਂ ਕੱਟਣੀਆਂ ਤੋਂ ਦੇ ਵਿੱਚ ਫਿਰ ਵਾਈਟ ਹਾਊਸ ਦੇ ਵਿੱਚੇ اپੋਜੀਸ਼ਨ ਦੇ ਲੀਡਰ ਜਾਂ ਹੋਰ ਕੋਈ ਖਾਸ قومی ਸੁਰੱਖਿਆ ਦੀ ਜਾਂ ਦੁਨੀਆ ਦੇ ਵਿੱਚ ਕੋਈ ਵੀ ਗੱਲਬਾਤ ਕਰਨ ਲਈ ਉੱਥੇ ਉਹ ਡਰਾਈਵ ਕਰਦੇ ਆ ਉੱਥੇ ਉਹ ਬੈਠ ਕੇ ਗੱਲਬਾਤਾਂ ਕਰਦੇ ਆ ਸ਼ਾਮ ਦੀ ਚਾਹ ਤੇ ਕੁੱਤੇ ਨੂੰ ਖੜਾਉਣਾ ਤੇ ਇਸ ਦੇ ਵਿੱਚੇ ਮਰੀਨ 1 ਤੇ ਜਿਹੜਾ ਉਹਦਾ ਆਪਣਾ ਹੈਲੀਕਾਪਟਰ ਆ ਉਹ ਤੇ ਉੱਡਣਾ ਅੱਧੇ ਪੌਣੇ ਘੰਟੇ ਦੀ ਫਲਾਈਟ ਦੇ ਵਿੱਚ ਹੀ ਫੇਰ ਖਾਸ ਤੌਰ ਤੇ ਕੋਈ ਇੰਟਰਵਿਊ ਜਿਹੜੀ ਹੋਣੀ ਹੈ ਤੇ ਇੱਕ ਮੀਟਿੰਗ ਹੋਣੀ ਹੈ ਦੁਨੀਆ ਦਾ ਕੋਈ ਲੀਡਰ ਆਇਆ ਉਹ ਵੀ ਵਿੱਚੇ ਬਿਠਾ ਲੈਣਾ ਉਹਨਾਂ ਨਾਲ ਗੱਲਬਾਤ ਹੋਣੀ ਹੈ ਤੇ ਰਾਤ ਨੂੰ 7:30 ਵਜੇ ਡਿਨਰ ਹੋਣਾ ਤੇ ਵਜੇ ਇੱਕ ਘੰਟਾ ਪੜ੍ਹਨ ਤੋਂ ਬਾਅਦ ਬਰਾਕਵਾਮਾ ਸੌਂਦੇ ਰਹੇ ਆ 11 ਤੋਂ 6 ਵਜੇ ਤੱਕ 7 ਘੰਟੇ ਦੇ ਵਿੱਚ ਵੀ ਉੱਠਣਾ ਪੈਂਦਾ ਰਿਹਾ ਏਸੀ ਬਰਾਕਵਾਮਾ ਦੀ ਜ਼ਿੰਦਗੀ ਨਿੱਜੀ ਤੌਰ ਤੇ ਜਦੋਂ ਦਸਤਰ ਛੱਡ ਰਹੇ ਸੀ ਕਿਸੇ ਵੀ ਨੇਤਾ ਨਾਲ ਥੋੜਾ ਪਿਆਰ ਹੁੰਦਾ ਕੰਬਾਲਤ ਨਾਮ ਰਹੀਆਂ ਲੋਕਾਂ ਦੀਆਂ ਜਿਹੜੇ ਬਹੁਤ ক্লোਜ਼ਲੀ ਵਧੀਆ ਬਿਜ਼ਨਸ ਜਿਹੜੇ ਵਪਾਰਕੀ ਵਪਾਰ ਕਰਨ ਵਾਲੇ ਬੰਦੇ ਜਿਹੜੇ ਉਸ ਨੂੰ ক্লোਜ਼ਲੀ ਉਹਦਾ ਹਰ ਇੱਕ ਕਈਆਂ ਨੂੰ ਤੁਸੀਂ ਫੈਨ ਹੋ ਜਾਂਦੇ ਸੁਣਦੇ ਰਹੇ ਬਈਦਰ ਦਾ ਮੈਸੇਜ ਵੈਨ ਆਈ ਸੋ ਹਮ ਗoing ਫਰਮ ਹਿਸ ਆਫਿਸ ਹਾਊਸ ਦੂਸਰਾ ਬਈ ਪਿਆਰ ਹੈ ਆ ਕੇ ਮੇਂ ਇੰਤਜ਼ਾਰ ਲਾਹਿਆ ਬਰਾਕ ਅਵਾਮਾ ਨੇ ਮੂਹਰੇ ਹੋ ਕੇ ਮੈਂ ਖੈ ਕਹਿਦਾ ਦਵੇ ਕਿਉਂ ਦੇਖਿਆ ਇੰਉਂ ਕਰੀਦਾ ਕੰਮ ਕਿਉਂਕਿ ਸਭ ਤੋਂ ਵੱਡਾ ਕਨਫਲਿਕਟ ਹੋਇਆ ਸੀ ਜਬਰਾਕ ਅਵਾਮਾ ਬਣੇ ਤੇ ਉਹਨਾਂ ਦੇ ਨਸਲ ਤੇ ਰੰਗ ਦੇ ਹਿਸਾਬ ਦੇ ਨਾਲ ਸਭ ਤੋਂ ਪਹਿਲੀ ਗੱਲ ਜਿਹੜੀ ਡੋਨਲਡ ਟਰੰਪ ਨੇ ਕੀਤੀ ਕਹਿੰਦਾ ਬੰਦੇ ਦਾ ਪਤਾ ਕਰੋ ਅਮਰੀਕਾ 'ਚ ਜੰਮਿਆ ਹੀ ਬਹੁਤ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੇਚਤੀ ਕਰਨ ਦੇ ਹਵਾਈ ਦੇ ਵਿੱਚ ਜੰਪਲ ਹੋਣ ਦਾ ਉਹਨਾਂ ਨੇ ਸਰਟੀਫਾਈਡ ਦਿੱਤਾ ਫਿਰ ਜਦ ਡਿਨਰ ਤੇ ਸੱਦਿਆ ਤੇ ਫਿਰ 10 ਮਿੰਟ ਬਰਾਖਵਾਮਾਂ ਤੇ ਲੱਗੇ ਹੋ ਸਕਦਾ ਉਦੋਂ ਹੀ ਡੋਲਨ 트ੰਪ ਨੇ ਸੋਚ ਲਿਆ ਹੋਵੇ ਪੈਸੇ ਦੇ ਬਲਬੂਤੇ ਵਾਈਟ ਹਾਊਸ ਜਿੱਤੂ ਔਰ ਜਿੱਤ ਲੈ ਅੱਜ ਵੀ ਇਨੋਗਰੇਸ਼ਨ ਜਿਹੜੀ ਉਹਦੀ ਸਪੀਚ ਸੀ ਉਹਦੇ ਵਿੱਚ ਵੀ ਉਹ ਕੈਂਪੇਨ ਮੋਡ ਦੇ ਵਿੱਚ ਸੀ ਉਸ ਤਰ੍ਹਾਂ ਹੀ ਬੋਲ ਰਿਹਾ ਸੀ ਉਸ ਤਰ੍ਹਾਂ ਗੱਲ ਜ਼ਿੰਦਗੀ ਦੇ ਇਤਿਹਾਸ ਦੇ ਵਿੱਚ ਰਾਸ਼ਟਰਪਤੀਆਂ ਦੇ ਇਤਿਹਾਸ ਦੇ ਵਿੱਚ ਲੋਕਾਂ ਦੇ ਜਿਹੜੇ ਵਿਦਰੋਹ ਨੇ ਉਹ ਹੁੰਦੇ ਰਹੇ ਨੇ 1917 ਦੇ ਵਿੱਚ ਵਾਈਟ ਹਾਊਸ ਦੇ ਵਿੱਚ ਵੁਡਰੋ ਵਿਲਸਨ ਦੀ ਜਾਦ ਅਤਾਜ ਪੋਸ਼ੀ ਹੋ ਰਹੀ ਸੀ ਉਹਦੇ ਵਾਈਟ ਹਾਊਸ ਦੇ ਬਾਹਰ ਇਸਤਰੀਆਂ ਨੇ ਵੋਟ ਪਾਉਣ ਦੇ ਹੱਕ ਦੀ ਗੱਲਬਾਤ ਕੀਤੀ ਇਸ ਤੋਂ ਅੱਗੇ ਨਿਕਸਨ ਇਸ ਤਰ੍ਹਾਂ 20 ਦੇ ਬਾਅਦ স্মੋਕ ਬੰਬ ਸਿੱਧੇ ਲਿਮੂਜ਼ੀਨ ਤੇ ਮਾਰੇ ਪੈਂਸਿਲਵੇਨੀਆ ਐਵਨਿਊ ਤੇ ਇਸ ਤਰ੍ਹਾਂ ਦਾ ਹੀ ਕੰਮ ਜਾਰਜ ਡਬਲਯੂ ਬੁਸ਼ ਦੇ ਤੌਰ ਤੇ ਦੇ ਸਮੇਂ ਵੀ ਹੋਇਆ ਜਦ ਜਾਰਜ ਡਬਲਯੂ ਵਾਸ਼ਿੰਗਟਨ ਟੁੱਕਿਆ ਤੇ ਦੁਨੀਆ ਇਸ ਮਹਿਬੂਬ ਨੇਤਾ ਨੂੰ ਦੁਨੀਆ ਦੇ ਵਿੱਚ ਲੋਕ ਇਹਨੂੰ ਪਿਆਰ ਕਰਦੇ ਰਹੇ ਨੇ ਕਿਉਂਕਿ ਲੈਗਸੀ ਬੜਾ ਆਵਾਮਾਂ ਦੀ ਅੱਜ ਗੱਲਬਾਤ ਗਾਂਜ ਕਰਕੇ ਇਸੇ ਚੱਲਦੇ ਆ ਹੈਪੀ ਰਾਇਕੋਟੀ ਦਾ ਇੱਕ ਗੀਤ ਸੁਣਾ ਦੇ ਆ ਪਿਛਲੇ ਹਾਜ਼ਰੀ ਲੱਗੀ ਹੋਈ ਤੁਹਾਨੂੰ ਯਾਦ ਹੋਣਾ ਮੈਕਸੀਕੋ ਦੇ ਵੇਚ ਡਰਗ ਲਾਰਡ ਜਿਹੜਾ ਐਲਚੈਪੋ ਜਿਹੜਾ ਦੋ ਵਾਰ ਜੇਲ੍ਹ ਚੋਂ ਭੱਜਿਆ ਦੂਸਰੀ ਵਾਰ ਟਨਲ ਤੇ ਮੋਟਰਸਾਈਕਲ ਤੇ ਚੜ ਕੇ ਉਹ ਜਾਵੜਿਆ ਉਸ ਨੂੰ ਸਡਨ ਦੇਸ਼ ਦੇ ਵਿੱਚੋਂ ਮੈਕਸੀਕੋ ਦੇ ਵਿੱਚੋਂ ਅਮਰੀਕਾ ਲੈ ਆਂਦਾ ਤੇ ਅੱਜ ਉਹਦੀ ਰੁਕਲੈਂਡ ਦੇ ਵਿੱਚ ਨਿਊਯਾਰਕ ਦੇ ਵਿੱਚ ਪੇਸ਼ੀ ਹੋਈ 14 ਉਹਦੇ ਤੇ ਕਾਉਂਟ ਨੇ 14 ਚਾਰਜਸ ਨੇ ਤੇ 14 ਹੀ ਸਿੱਧ ਹੋ ਜਾਣੇ ਨੇ 30 ਦੇ ਕਰੀਬ ਜਿਹੜੇ ਨੇ ਗਵਾਹ ਪੁਕਤਣਗੇ ਬਹੁਤ ਡਰਿਆ ਹੋਇਆ ਸੀ ਐਲ ਚੈਪੋ ਕਿਉਂਕਿ ਉਸ ਫੇਰ ਉਹਨੂੰ ਪਤਾ ਸੀ ਪੈਸੇ ਦੇ ਜ਼ੋਰ ਦੇ ਨਾਲ ਉਹਨੇ ਭੱਜ ਜਾਣਾ ਹੁਣ ਇਹ ਦੇਖੋ ਵੀ 14 ਅਰਬ ਡਾਲਰ ਦੀ ਜਾਇਦਾਦ ਹੈ ਇਸ ਬੰਦੇ ਕੋਲ ਹੁਣ ਪੈਸਾ ਕੋਈ ਕੰਮ ਕਰੂਗਾ ਬਿਲਕੁਲ ਨਹੀਂ ਖਤਮ ਹੋ ਗਈ ਕਹਾਣੀ ਹੁਣ ਅਮਰੀਕਾ ਦੀ ਜੇਲ੍ਹ ਦੇ ਸੈੱਲ ਦੇ ਵਿੱਚ ਬਾਹਰ ਟਨਲ ਨਹੀਂ ਹੋਣੀ ਬੰਦ ਕਰਨਗੇ ਜਿੱਥੇ ਸੂਰਜੇ ਦਿਖੇ ਚੁੱਕ ਲਿਆ ਏ ਜਦ ਅਲਚੈਪੋ ਦੀਆਂ ਅੱਖਾਂ ਵੱਲ ਵੇਖਿਆ ਅਮਰੀਕਾ 'ਚ ਉਹਦੀਆਂ ਅੱਖਾਂ ਬਹੁਤ ਕਿਸੇ ਖਤਰੇ ਦਾ ਡਰ ਸੀ ਉਹਨਾਂ ਅੱਖਾਂ 'ਚ ਤੇ ਬਹੁਤ ਉਹਦੇ ਉਹਦੀਆਂ ਅੱਖਾਂ ਦੇ ਵਿੱਚ ਇਸ ਤਰ੍ਹਾਂ ਸੀ ਕੇ ਕਿਵੇਂ ਹੋ ਗਿਆ ਹੈ ਡਰ ਸੀ ਉਸ ਪਤਾ ਸੀ ਕੇ ਹੁਣ ਅਮਰੀਕਨ ਜਸਟਿਸ ਮੈਨੂੰ ਜਿਹੜਾ ਉਹ ਕਰਨਾ ਪੈਣਾ ਉਸ ਬਾਹਰਲੀ ਹਵਾ ਜਿਹੜੀ ਉਹ ਖਤਮ ਹੋ ਗਈ ਹੁਣ 5 ਅਨਾਦ ਸਾਲ ਦੀ ਉਮਰ ਤੋਂ ਲੈ ਕੇ ਮਰਨ ਤੱਕ ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚ ਤੇ ਜਾਂ ਜੇਲ੍ਹ ਦੇ ਵਿੱਚ ਅਲਚੈਪੋ ਨੇ ਸੰਨ ਬਹੁਤ ਵੱਡਾ ਇੱਕ ਡਰਗ ਕਾਰਟਲ ਉਹ ਚਲਾਉਂਦਾ ਜਿਸ ਦਾ ਨਾਮ ਏਰੀਆ ਪਹਾੜੀਆਂ ਦਾ ਉਹਦੇ ਕੋਲ ਹੈ ਤੇ ਜਿੱਥੇ ਸ਼ਰਿਆਂ ਮੋਹ ਸੁੱਖਾ ਰਿਹਾ ਤੇ ਉਹਦਾ ਜਿਹੜਾ ਗਰੁੱਪ ਹੈ ਬਹੁਤ ਜ਼ਾਲਮ ਨੇ ਲੋਕਾਂ ਨੂੰ ਵੱਢਦੇ ਰਹੇ ਨੇ ਦੋਵਰ ਭਜਨ ਤੇ ਮਕਸੀਕਨ ਹਲੇ ਵੀ ਡਰ ਸੀ ਉਹਨਾਂ ਨੂੰ ਵੀ ਪਤਾ ਨਹੀਂ ਕਿਹੜੇ ਨੇ ਲੈ ਕੇ 10 ਲੱਖ ਡਾਲਰ ਦਾ ਕੰਮ ਕਰਨਾ ਬਹੁਤ ਕ੍ਰਪਟ ਦੇਸ਼ ਹੈ ਮੈਕਸੀਕੋ ਤੇ ਛੋਟਾ ਜਿਹਾ ਆ ਕੇ ਨਿਊਯਾਰਕ ਉਤਰ ਗਿਆ ਸੰਧੀ ਹੈ ਸੰਧੀ ਹੈ ਦੋਨੇ ਦੇਸ਼ਾਂ 'ਚ ਲੈ ਜੇ ਦੋਨੇ ਦੇਸ਼ਾਂ ਚ ਆਪਸ ਵਿੱਚ ਗੱਲ ਨਾ ਉਧਰੋਂ ਰਾਸ਼ਟਰਪਤੀ ਦੀ ਸੌ ਚੁੱਕੀ ਜਾ ਰਹੀ ਹੈ ਉਧਰੋਂ ਜਿਹੜਾ ਅਲ ਚੈਪੋ ਗੁਜ਼ਮਾਨ ਜਿਹੜਾ ਉਹਦਾ ਚੈਟੋ ਤਰੇ ਡੋਨਲਡ 트ੰਪ ਦਾ ਭਵਿੱਖ ਇਹੋ ਜਾਂ ਹੋਏਗਾ ਡੋਨਲਡ 트ੰਪ ਕਿੰਨਾ ਕੰਮ ਕਰੇਗਾ ਡੋਨਲਡ 트ੰਪ ਕਿੰਨਾ ਸਮਾਂ ਇਸ ਸ਼ਕਤੀਸ਼ਾਲੀ ਕੁਰਸੀ ਤੇ ਬੈਠੇਗਾ ਵਕਤ ਦੱਸੇਗਾ ਜੇਤੀ ਨਿੱਜੀ ਫਾਈਲਾਂ ਦਾ ਰਸ਼ੀਆ ਤਕ ਪਹੁੰਚਣਾ ਰਸ਼ੀਆ ਵੱਲੋਂ ਲਾਈ ਸਨ ਰਸ਼ੀਆ ਤੋਂ ਬਲੋਂ ਬਲੈਕਮੇਲ ਕਰਨ ਦੀਆ ਗੱਲਾਂ ਬਹੁਤ ਕੁਝ ਆਉਣ ਵਾਲਾ ਲੋਕ ਵਾਈਸ ਪ੍ਰੈਜ਼ੀਡੈਂਟ ਨੂੰ ਵੇਖ ਰਹੇ ਨੇ ਆਉਣ ਵਾਲੇ ਰਾਸ਼ਟਰਪਤੀ ਦੇ ਅਹੁਦੇ ਲਈ ਇਹ ਹੋਏਗਾ ਰੱਬ ਜਾਣਦਾ ਇੱਥੇ ਤੱਕ ਪਹੁੰਚਣ ਲਈ ਜ਼ੋਰ ਜਿਹੜਾ ਦੋਨੇ ਟਰੰਪ ਨੇ ਲਾ ਲਿਆ ਪਰ ਰਾਸ਼ਟਰਪਤੀ ਦੇ ਅਹੁਦੇ ਤੇ ਬੈਠਣ ਤੋਂ ਬਾਅਦ ਉਸ ਨੂੰ ਕੰਟਰੋਲ ਜਿਹੜਾ ਦੋਨੇ ਸੈਨੇਟ ਤੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਉਹਨਾਂ ਲੌਬੀਇਸਟ ਜਿਹੜੇ ਵੱਡੇ ਵੱਡੇ ਨੇ ਉਹ ਇਸ ਜਗ੍ਹਾ ਕੰਟਰੋਲ ਚ ਰੱਖਦੇ ਨੇ ਕੀ ਕਰਨਾ ਕੀ ਕਰ ਸਕਦੇ ਕਿ ਨਹੀਂ ਕਰ ਸਕਦੇ ਵਕਤ ਦੇ ਸੇਗਾ ਕੀ ਗੱਲਾਂ ਹੁਣ ਦਾਹ ਨੂੰ ਕਿਹਜੀਆਂ ਨਿਕਲਦੀਆਂ ਕੀ ਕੀ ਹੋਏਗਾ ਬ੍ਰਾਕਬਾਮਾ ਨੇ ਸ਼ਿਕਾਗੋ ਦੇ ਲਾਇਬ੍ਰੇਰੀ ਬਣਨੀ ਹੈ ਬ੍ਰਾਕਬਾਮਾ ਦੀ ਉਥੋਂ ਕੰਮ ਸ਼ੁਰੂ ਕਰਨਾ ਕਿਹੋ ਜਿਹਾ ਲੋਕਾਂ ਨੂੰ ਪੁੱਛ ਰਿਹਾ ਇਹ ਦੱਸੋ ਇਹ ਲਾਇਬ੍ਰੇਰੀ ਜਿਹੜੀ ਮੇਰੀ ਬਣਨੀ ਹੈ ਤੇ ਨਾਲ ਕੀ ਕੰਮ ਤੋਰਿਆ ਜਾਵੇ ਬਹੁਤ ਵੱਡੀ ਜਗ੍ਹਾ ਹੈ ਦੁਨੀਆ ਤੇ ਬੋਲਣ ਦਾ ਕਿਤੇ ਜਾ ਕੇ ਲੱਖਾਂ ਡਾਲਰ ਨੇ ਪਰ ਅਲੱਗ ਰਤਬਾ ਬਰਾਕਵਾਮਾ ਦਾ ਅਲੱਗ ਤਰੀਕੇ ਦੇ ਨਾਲ ਬਰਾਕਵਾਮਾ ਸੋਚਦੇ ਐ ਬਰਾਕਵਾਮਾ ਦੀ ਜਗ੍ਹਾ ਜਿਹੜੀ ਹੈ ਦੇ ਨਕਸ਼ੇ ਤੇ ਬਹੁਤ ਅਲੱਗ ਹੈ ਬਹੁਤ ਘੱਟ ਕਨਫਲਿਕਟ ਰਿਹਾ ਜਿਹੜੇ ਕੰਮ ਕੀਤੇ ਉਹ ਵਡੇ ਕੀਤੇ ਲਾਦੇ ਨੂ ਚੱਕਣ ਦਾ ਜਿਹੜਾ ਮਾਰ ਕੇ ਲਿਉਣ ਦਾ ਬਹੁਤ ਵੱਡਾ ਫੈਸਲਾ ਵਾਈਟ ਹਾਊਸ ਦੇ ਵਿੱਚ ਬਹਿ ਕੇ ਲਾਈਵ ਵੇਖਿਆ ਜਦ ਬਿਲਕੁਲ ਬਹੁਤ ਐਕਸਪਰਟ ਨੇ ਉਹ ਬਤੇ ਉਹਨਾਂ ਨੇ ਦੋ ਜਹਾਜ਼ ਜਾਂਦੇ ਆ ਇੱਕ ਕ੍ਰੈਸ਼ ਆ ਉਹ ਜਿੱਥੇ ਅੱਜ ਤਾਜ ਪੋਸ਼ੀ ਹੋ ਰਹੀ ਆ ਉੱਥੇ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ਤੇ 스타벅ਸ, ਕੋਸਟੋਬਲ, ਮਕਡੋਨਲਡ, ਬੈਂਕ ਆਫ ਅਮਰੀਕਾ ਦੇ ਸ਼ੀਸ਼ੇ ਲੋਕਾਂ ਨੇ ਭੰਨਤੇ ਵੀਕਐਂਡ ਤੇ ਜਿਹੜੇ ਵੱਡੇ ਪ੍ਰਦਰਸ਼ਨ ਸਾਰੇ ਅਮਰੀਕਾ ਚ 50 ਸਟੇਟਾਂ ਦੇ ਵਿੱਚ ਹੋਣ ਜਾ ਰਹੇ ਨੇ ਲੋਕ ਪਿਆਰ ਨੇ ਬਹੁਤ ਵੱਡੀ ਗਿਣਤੀ ਜਿੱਥੇ ਡੋਨਲਡ ਟਰੰਪ ਦੇ ਸਮਰਥਕ 8-9 ਲੱਖ ਦੀ ਗਿਣਤੀ ਤੇ ਪਹੁੰਚੇ ਉੱਥੇ ਬਧਰੋਹੀ ਵੀ ਪਹੁੰਚੀ ਔਰ ਬਹੁਤ ਕੱਟ ਸਮੇਂਾਂ ਦੇ ਵਿੱਚ ਨਿਕਸਨ ਨਿਕਸਨ ਦੇ ਬਾਅਦ ਜੋਰਜ ਬੁਸ਼ ਦੇ ਸਮੇਂ ਦੇ ਵਿੱਚ ਵੀ ਲਿਮੋਜ਼ੀਨ ਤੇ ਆਂਡੇ ਸਿੱਧੇ ਲੋਕਾਂ ਨੇ ਮਾਰੇ ਤੇ ਬਹੁਤ ਪੁਲਿਸ ਉਸ ਤੋਂ ਬਾਅਦ ਚੋਪਰ ਤੇ 에어ਫੋਰਸ ਵੱਲੋਂ ਏਰੀਏ ਦੀ ਗਸ਼ਤ ਬਹੁਤ ਉਸ਼ਟਾਜ ਪੁਸ਼ੀ ਦੇ ਸਮੇਂ ਚੱਲਦਾ ਰਿਹਾ ਇਹੋ ਜਿਹਾ ਸਮਾਂ ਆਏਗਾ ਕਿਹਜਾ ਡੋਨਲਡ ਟਰੰਪ ਦਾ ਵਕਤ ਹੋਏਗਾ ਉਸ ਦੀਆਂ ਗੱਲਾਂ ਉਸ ਵੱਲੋਂ ਐਕਸ਼ਨ ਹੌਣ ਵਾਲੇ ਜਨਤਕ ਲੋਕਾਂ ਦੇ ਸੰਮਖ ਹੋਣਗੇ 1843 247 1550 ਇਸ ਵਿਸ਼ੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਹੋ ਪ੍ਰੋਗਰਾਮ ਦੇ ਸਪான்ਸਰ ਹਨ 88 ਟਰੱਕ ਬਾਡੀ ਬਾਡੀ ਵਰਕ ਦਾ ਕੰਮ ਹੈ ICICI ਦੇ ਕੇਸ ਲੜਦੇ ਆ ICICI ਦੇ ਸਾਰੇ ਸੌਰੀ ਕਲੇਮ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਖੁਦ ਉਹ ਸਾਰਾ ਕੁਝ ਇਸ ਦਾ ਕੇਅਰ ਆ GT ट्रक बॉडी एंड पेंट 6049401080 ਸਾਖਰ ਬ੍ਰਦਰਸ ਦੀ ਵੱਡੀ ਫੈਸਿਲਿਟੀ ਬਸਾਂ ਲਈ ਟਰੱਕਾਂ ਬੋਡੀ ਵਰਕ ਤੇ ਪੇਂਟ ਦਾ ਕਾ ਗ੍ਰੀਨ ਇੰਡੀਅਨ ਕੁਜ਼ੀਨ 6045033535 ਨੰਬਰ ਹੈ ਵਾਲਮਾਰਟ ਵਾਲਾ ਪਲਾਜ਼ਾ 88126 ਉਹਦੇ ਵਿੱਚ ਨਵਾਂ ਪਲਾਜ਼ਾ ਇੱਕ ਬਣਿਆ ਉੱਥੇ ਇਹ ਰੈਸਟੋਰੈਂਟ ਖੁੱਲਿਆ ਜਿੱਥੇ ਪੀਜ਼ਾ ਮਠਿਆਈ ਤੇ ਭਾਰਤੀ ਖਾਣੇ ਆਰਡਰ ਕਰ ਸਕਦੇ ਯੂਨਿਟ 112 125 65 88 ਐਵਰੀ ਗ੍ਰੀਨ ਇੰਡੀਅਨ ਕੁਜ਼ੀਨ ਮਨਜੀਤ ਸਿੰਘ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਵੱਡੇ ਸਮਾਗਮਾਂ ਕਰ ਸਕਦੇ ਫਾਈਵ ਰਿਵਰ ਐਕਸਕਵੇਟਿੰਗ ਦੇ ਹਰਪੀ ਸਿੰਘ ਕਾਂਗ 646270424 ਹਰਪੀ ਸਿੰਘ ਦਰੇਵਾਲ 7788469942 ਕੋਈ ਪਟਾਉਣੀਆਂ ਨਵੇਂ ਘਰ ਬਣਾਉਣਾ ਬਜਰੀ ਚਾਹੀਦੀ ਹੈ ਰੇਤਾ ਚਾਹੀਦਾ ਹੈ ਦਾ ਕੰਮ ਹੈ ਚਾਹੀਦਾ ਘੱਟ ਹੋਣ ਲਈ ਲੋਟਾਂ ਪਟਾਉਣ ਲਈ ਬੈਂਟਾਈਜ਼ वेटिंग कंपनी 604720424 पंजाब बैंकट हॉल 6045987611 शम्मा गिल ਦੇ ਨਾਮ ਤੋਂ ਤੁਸੀਂ ਗੱਲਬਾਤ ਕਰਕੇ ਪਾਰਟੀ ਕਰ ਸਕਦੇ ਹੋ ਇਸ ਬੈਂਕਟ ਹਾਲ ਚ ਪੂਰੀ ਤਰ੍ਹਾਂ ਰੀਨੋਵੇਸ਼ਨ ਕੀਤਾ ਹੈ ਹਾਲ ਹੈ ਬਹੁਤ ਵਧੀਆ ਬੈਂਕਟ ਹਾਲ ਤੁਹਾਡੀਆਂ ਕੀਮਤਾਂ ਵਾਜਬ ਤੁਹਾਡੀਆਂ ਕੀਮਤਾਂ ਦੇ ਹਿਸਾਬ ਦੇ ਨਾਲ ਤੁਹਾਡਾ ਬਜਟ ਦੇਖ ਕੇ ਪਾਰਟੀ ਕੀਤੀ ਜਾਂਦੀ ਹੈ 6045987611 ਕੈਪਟਨ ਮੀਟ ਪਾਲਵੇਜਨੋ ਸੈਂਟਰ 6045030070 6045030070 ਹਰ ਕਿਸਮ ਦਾ ਮੀਟ ਖਰੀਦ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਦਾ ਮੀਟ ਇਹਨਾਂ ਦੇ ਕੋਲ ਹੈ ਹੋਰ ਮੀਟ ਦੇ ਪਦਾਰਥ ਬਣੇ ਹੋਏ ਸੋਗ ਵਿੱਚ ਸੂਚਨਾਵਾਂ ਜੀ ਹਰ ਬੰਨ ਮੁੰਡਾ ਜਿਹੜਾ ਇਸਲੇ ਦਿਨ ਐਡਮਿੰਟਨ ਦੇ ਵਿੱਚ ਨਵਦੀਪ ਸਿੱਧੂ ਤੇ ਹਰਮਨ ਮੰਗਟ ਦੀ ਮੌਤ ਹੋਈ ਹੈ ਉਸ ਦਾ ਜਿਹੜਾ ਸਸਕਾਰ ਹੈ ਜੀ ਕੱਲ ਨੂੰ 11 ਵਜੇ ਰਿਵਰ ਸਾਈਡ ਸਿਨੋ ਹਾਲ ਦੇ ਵਿੱਚ ਵਜੇ ਦਸ਼ਮੀ ਦੇ ਵਿੱਚ ਅੰਤਿਮ ਅਰਦਾਸ ਹੋਵੇਗੀ ਅ ਦਰਸ਼ਨ ਸਿੰਘ ਮੰਗਟ ਹਰਮਨ ਮੰਗਟ ਦੇ ਪਿਤਾ ਦੀ ਹਨ ਹਰਮਨ ਮੰਗਟ ਦਾ ਸਸਕਾਰ ਕੱਲ ਨੂੰ ਆ ਜੀ 26 ਸਾਲ ਦੀ ਉਮਰ ਸੀ ਮੁੰਡੇ ਦੀ ਜਨਦੀ ਵਿਰੇਸ਼ ਦੇ ਵਿੱਚ ਇਸ ਸੰਸਾਰ ਤੋਂ ਰੁਖਸਤ ਹੋ ਗਿਆ ਬਾਲ ਬੱਚਿਆਂ ਨੂੰ ਸਾਹਮਣੇ ਰੱਖੋ ਜੀ ਕੋਸ਼ਿਸ਼ ਕਰੋ ਬਤ ਤੋਂ ਬਤ ਉਹਨਾਂ ਦੇ ਆਲ ਦਲੇ ਰਹੋ ਪਰ ਹੋਣਾ ਅਟਲ ਉਹੀ ਹੈ ਜੋ ਲਿਖਿਆ ਹੋਇਆ ਹੈ ਜੀ ਪੈਂਦੀਆਂ ਪੈਂਦੀਆਂ ਭੁੱਖੀਆਂ ਹੋ ਜਾਂਦੀਆਂ ਕਿਉਂਕਿ ਭਾਣੇ ਦੇ ਵਿੱਚ ਜਿਹੜੀ ਗੱਲ ਹੈ ਉਹੀ ਸੱਚ ਹੈ ਇਸرائی ਸਰਦਾਰ ਸੁ ਸਿੰਘ ਬੈਂਸ ਜਿਹੜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰਕੇ ਪਿਛਲੇ ਮਹੀਨੇ ਲਹਿਲੀ ਕਲਾਂ ਜ਼ਿਲ੍ਹਾ ਹਿਆਰਪੁਰ ਅੰਤਮ ਸੰਸਕਾਰ ਐਤਵਾਰ 22 ਜਨਵਰੀ ਤੇ 2 ਵਜੇ 5 ਵਜੇ ਜਿਹੜਾ ਅੰਤਮ 2 ਵਜੇ ਸੰਸਕਾਰ ਹੈ ਸਾਢੇ 3 ਵਜੇ ਗੁਰਦੁਆਰਾ ਦਸ਼ਮੀਦ ਦੁਆਸਰੀ ਵਿਖੇ ਅੰਤਮ ਅਰਦਾਸ ਹੈ ਜਗਜੀਤ ਸਿੰਘ ਬਲਵੀਰ ਸਿੰਘ ਤੇ ਸਰਜੀਤ ਸਿੰਘ ਉਹਨਾਂ ਦੇ ਬੇਟੇ 64500 ਸੌਰੀ ਜਗਦੀਸ਼ ਸਿੰਘ ਬਲਵੀਰ ਸਿੰਘ ਤੇ ਸਰਜੀਤ ਸਿੰਘ 6518 0436 ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਪਰਵਾਦ ਨਾਲ ਦੁੱਖ ਸਾਂਝਾ ਕਰ ਸਕਦੇ ਹੋ ਇਸ ਤਰ੍ਹਾਂ ਹੀ ਦਲਵੀਰ ਸਲੱਖਣ ਸਿੰਘ ਸੰਘੇੜਾ 49 ਸਾਲ ਦੀ ਉਮਰ ਤੇ ਜਨਵਰੀ 18 ਨੂੰ ਉਹ ਪੂਰੇ ਹੋ ਗਿਆ ਜੀ ਫਿਊਨਲ ਉਹਨਾਂ ਦਾ ਬੁੱਧਵਾਰ ਅਗਲੇ 25 ਜਨਵਰੀ ਨੂੰ 2017 ਨੂੰ 1 ਵਜੇ ਹੋਣਾ ਰਿਵਰਸਾਈਡ ਫਿਊਨਰਲ ਹਾਲ ਦੇ ਵਿੱਚ ਅੰਤਿਮ ਅਰਦਾਸ ਗੁਰਦੁਆਰਾ ਦੁੱਖ ਨਿਵਾਰਨ ਦੇ ਵਿੱਚ ਹੋਏਗੀ 1424604338789799 ਮਾਈਕ ਸਿੰਘ ਗੇੜਾ 604763 ਨੰਬਰਾਂ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਦਲਵੀਰ ਸਿੰਘ ਸੰਘੇੜਾ ਪਿੱਛੇ ਵਾਈਫ ਤਲਦੀਪ ਕੌਰ ਬੇਟੀ ਕਿਰਤ ਕੌਰ ਬੇਟਾ ਕੁਲਵੀਰ ਸਿੰਘ ਸੰਘੇੜਾ ਤੇ ਵੱਡਾ ਪਿੰਡ ਵੱਡਾ ਪਰਵਾਦ ਦਿਲ ਦਾ ਪਿੰਡ ਸੀ ਪਿਛਲਾ ਉਹਨਾਂ ਦਾ ਫਿਲਮਰ ਜ਼ਿਲ੍ਹੇ ਚ ਚਾਕਲਵੰਤ ਸਿੰਘ ਜੀ ਲਾਈਨ ਨੰਬਰ 2 ਤੁਸੀਂ ਇਰ ਤੇ ਹੋ ਹਾਂਜੀ ਸਤਿ ਸ੍ਰੀ ਜੀ ਸਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਬਾਈ ਜੀ ਉਹਨੇ ਸੋ ਚਾਕਲਿਆ ਸਾਹਿਬ ਨੇ ਮੇਰੇ ਖਿਆਲ ਨਾਲ ਤਾਂ ਵਧੀਆ ਰਹੂਗਾ ਕੰਮ ਕਿ ਜਿਹੜਾ ਵਿਦਰੋਹ ਹੋ ਰਿਹਾ ਜਿਹੜਾ ਬੰਦਾ ਐਕਸ਼ਨ ਲੈਂਦਾ ਉਹਦਾ ਵਿਦਰੋਹ ਹੁੰਦਾ ਹੀ ਹੁੰਦਾ ਜਿਹਦਾ ਬੰਦਾ ਨਿਊਟਰਲ ਹੁੰਦਾ ਉਹਦਾ ਕੋਈ ਵਿਦਰੋਹ ਨਹੀਂ ਹੁੰਦਾ ਠੀਕ ਹੈ ਉਹਨੂੰ ਪਤਾ ਵੀ ਇਹਨੇ ਕੁਝ ਕਰਨ ਵਾਲਾ ਹੈ ਨਹੀਂਗਾ ਉਹਦਾ ਵਿਦਰੋਹ ਕਦੀ ਨਹੀਂ ਹੁੰਦਾ ਵਿਦਰੋਹ ਉਸ ਬੰਦੇ ਦਾ ਹੁੰਦਾ ਜਿਹੜਾ ਬੰਦਾ ਧੜਲੇਦਾਰ ਹੁੰਦਾ ਜਿਹੜਾ ਕੋਈ ਐਕਸ਼ਨ ਲੈਂਦਾ ਸੋ ਇਹ ਬੰਦਾ ਜਿਹੜਾ ਵੀ ਵਾਲਾ ਧੜਲੇਦਾਰ ਆ ਔਰ ਇਹਦਾ ਰਿਜ਼ਲਟ ਮੈਂ ਦੇਖਦਾ ਇਹ ਨਿਕਲਣਾ ਹੈ ਜਿਹੜੀ ਗੈਸ ਦੀ ਪ੍ਰਾਈਸ ਹੈ ਉਹ ਜਾਊਗੀ ਪਰ ਵਿਸ਼ਵ ਦੇ ਅੰਦਰ ਸ਼ਾਂਤੀ ਆ ਜਾਣੀ ਆ ਕਿਉਂਕਿ ਇਹ ਐਂਟੀ ਰਸ਼ੀਅਨ ਨਹੀਂ ਹੈਗਾ ਇਹ ਰਸ਼ੀਅਨ ਨਾਲ ਹੱਥ ਮਲਾ ਕੇ ਚੱਲੇਗਾ ਉਹ ਰਸ਼ੀਅਨ ਦੀ ਸਬ ਤੋਂ ਪਹਿਲੀ ਉਹਨਾਂ ਦੀ ਸ਼ਰਤ ਇਹ ਹੋਣੀ ਆ ਕਿ ਤੇਲ ਦੀ ਪ੍ਰਾਈਸ ਜਿਹੜੀ ਅੱਪ ਕਰੋ ਸੋ ਆਉਣੇ ਦਿਨਾਂ ਦੇ ਅੰਦਰ ਤੇਲ ਜਿਹੜਾ ਹੋਰ ਮਹਿੰਗਾ ਹੋ ਜਾਣਾ ਪਰ ਜਿਹੜੀ ਲੜਾਈ ਝਗੜੇ ਹੋ ਰਿਹਾ ਜਿਹੜੀ ਪ੍ਰੌਕਸੀ ਵਾਰ ਚੱਲਦੀ ਪਈ ਆ ਅਰਬ ਦੇ ਅੰਦਰ ਉਹ ਪ੍ਰੌਕਸੀ ਵਾਰ ਜਿਹੜੀ ਆ ਠੱਲ ਪੈ ਜਾਣੀ ਆ ਔਰ NATO ਦੇ ਜਿਹੜੇ ਚੀਫ ਨੇ ਉਹ ਵੀ ਠੰਡੇ ਪੈ ਜਣੇ ਆ ਸੋ ਇਸ ਕਰਕੇ ਸਾਰਾ ਕੁਝ ਬਿਨ ਨਜ਼ਰ ਆਣਾ ਕਿ ਤੇਲ ਹੀ ਸਿਰਫ ਮਹਿੰਗਾ ਹੋਣਾ ਤੇਲ ਦੇ ਮਹਿੰਗਾਈ ਵਧਣੀ ਹੈ ਇਹ ਜਿਹੜਾ ਕੰਮ ਹੈ ਪੁਆਇੰਟ ਹੈਗਾ ਬਾਕੀ ਵਿਸ਼ਵੰਦਰ ਜਾਣਦੀ ਹੋਏਗੀ ਇਹ ਪਲੱਸ ਹੈਗਾ ਜੀ ਥੈਂਕ ਯੂ ਸ਼ਾਂਤੀ ਬੋਰੀ ਹੈ ਜੀ ਤੇਲ ਪਹਿਲਾਂ ਵੀ ਪੈਸੇ ਦੇ ਰਹੇ ਨੇ ਲੋਕ ਹੋਰ ਦੇ ਦੇਣਗੇ ਸੁੱਖ ਸ਼ਾਂਤੀ ਰਹੇ ਇਹ ਠੀਕ ਹੈ ਨਿਊਟਰਲ ਰਹਿਣਾ ਵੀ ਬਹੁਤ ਵਧੀਆ ਗੋਣਾ ਹੈ ਕਿਸੇ ਮਾੜੇ ਦੀ ਜਾਂ ਤਕੜੇ ਦੇ ਨਾਲ ਨਾ ਖੜਨਾ ਅਕਸਰ ਬਹੁਤ ਤਾਕਤਵਰ ਦੇਸ਼ ਹੈ ਬਹੁਤ ਵੱਡੀ ਹੈ ਉਸ ਵਾਈਟ ਹਾਊਸ ਦੇ ਵਿੱਚ ਓਵਲ ਦੇ ਵਿੱਚ ਜਤਿੰਦਰ ਸਿੰਘ ਪੱਟੀ ਕੁੱਕਾ ਮਲਕੀਤ ਸਿੰਘ ਪੱਟੀ ਤੇ ਸੀ ਤੇ ਦਾ ਅੱਜ ਅੰਤਿਮ ਸੰਸਕਾਰ 1 ਵਜੇ ਜਿਹੜਾ ਰਿਵਰਸਾਈਡ ਜਿਨ ਹਾਲ ਦੇ ਵਿੱਚ ਹੋਣਾ ਹੈ ਸ੍ਰੀ ਅਨੰਸਾ ਗੁਰਦੁਆਰਾ ਸਾਹਿਬ 3 ਵਜੇ ਰਿਚਮੰਚ ਉਹਨਾਂ ਦੇ ਸੰਤਮਰਦਾਸ ਹੁਣੇ ਸੁਵਿੰਦਰ ਸਿੰਘ ਪੱਟੀ 604 279 9904 ਇੱਕਾ ਪੱਟੀ 604 649 2405 ਇਹ ਫੋਨ ਨੰਬਰ ਵੇਖੋ ਇਹ ਗੱਲ ਠੀਕ ਹੈ ਪਰ ਇੱਥੇ ਇੱਕ ਗੱਲ ਜਿਹੜੀ ਇਹ ਹੋਈ ਆ ਕਿ ਪੈਸੇ ਦੇ ਜ਼ੋਰ ਤੇ ਕੋਈ ਵੀ ਕੁਝ ਫਸਦਾ ਪਹਿਲਾਂ ਜਿੰਨੇ ਵੀ ਰਾਸ਼ਟਰਪਤੀ ਬਣੇ ਆ ਉਹ ਹਾਊਸ ਆਫ ਰਿਪ੍ਰেজੈਂਟੇਟਿਵ ਦੇ ਮੈਂਬਰ ਜਾਂ ਸੈਨੇਟਰ ਫਿਰ ਗਵਰਨਰ ਫਿਰ ਪੌੜੀਆਂ ਪੌੜੀਆਂ ਚੜਦੇ ਜ਼ਿੰਦਗੀ ਲੰਘ ਜਾਂਦੀ ਹੈ ਤਾਂ ਇਸ ਦਸਤਜਪਾਉਣ ਦੇ 70 ਸਾਲ ਦੀ ਉਮਰ 'ਚ ਕੋਈ ਪਹਿਲਾਂ ਪਰ ਇੱਧਰ ਤਾਂ ਡਰੈਕਟ ਰੂਟ ਸਟਿਆ ਜੂਨ 2015 ਦੇ ਵਿੱਚ ਲੋਕਾਂ ਨੂੰ ਕਿਹਾ ਕਿ ਮੈਂ ਲੜਨਾ 트럼ਪ ਟਾਵਰ ਦੇ ਵਿੱਚੋਂ ਆ ਕੇ ਤੇ 트럼ਪ ਟਾਵਰ ਦੇ ਵਿੱਚੋਂ ਨਿਕਲ ਕੇ ਜਦ ਤੇ ਵੀ ਪੈਸੇ ਮੈਂ ਖੁਦ ਖਰਚੂ ਤੇ ਤੇ ਅਖੀਰ ਰਾਸ਼ਟਰਪਤੀ ਦੀ ਚੋਣ ਆਪਣੀ ਉਹਨੇ ਜਿੱਤੀ ਹੈ ਜ਼ਿੰਦਗੀ ਦੇ ਵਿੱਚ ਹੀ ਅਮੀਰ ਪਰਿਵਾਰ ਦੇ ਵਿੱਚ ਬਰੁਕਲਨ ਦੇ ਵਿੱਚ ਬਹੁਤ ਅਮੀਰ ਪਰਿਵਾਰ ਦੇ ਜਰਮਨ ਰੂਟਸ ਦੇ ਵਿੱਚੋਂ ਪੈਦਾ ਹੋਇਆ ਡੋਨਲਡ 트럼ਪ ਤੇ ਛੋਟੀ ਉਮਰੇ ਇੰਗਜ਼ੂਰੀ ਕਰਦਾ ਸੀ ਤੇ ਸਕੂਲ ਚ ਫਟਨਾ ਆਇਆ ਮੈਡੀਕ ਆਪਣੇ ਮਿਲਟਰੀ ਸਕੂਲ ਚ ਭੇਜਿਆ ਉਹਦਾ ਪੈਂਸਲਵੇਨੀਆ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕੀਤੀ ਬਹੁਤ ਫੇਮਸ ਰੈਸਟੋਰੈਂਟ ਆਪਣੇ ਯੂਨੀਵਰਸਿਟੀ ਦੇ ਵਿੱਚ ਉਹਦੇ ਬਾਅਦ ਫਾਦਰ ਦੇ ਨਾਲ ਕੰਸਟਰਕਸ਼ਨ ਦਾ ਬਿਜ਼ਨਸ ਨਾਲ ਜੁੜ ਗਿਆ ਤੇ ਟ੍ਰੰਪ ਟਾਵਰ ਉਸਨੇ ਬਣਾਇਆ ਟ੍ਰੰਪ ਟਾਵਰ ਤੋਂ ਬਾਅਦ ਦੁਨੀਆ ਦੇ ਵਿੱਚ ਕੱਲ ਉਸਦੇ ਸਲੋਗਨ ਮੈਂ ਪੜ੍ਹ ਰਿਹਾ ਸੀ ਉਹ ਕਹਿੰਦਾ ਈਗੋ ਤੋਂ ਬਿਨਾ ਕੁਝ ਨਹੀਂ ਤੁਸੀਂ ਕਰ ਸਕਦੇ ਜਿਹੜੇ ਬੰਦੇ 'ਚ ਈਗੋ ਹੈ ਨਹੀਂ ਉਹ ਬੰਦਾ ਫੇਲ ਔਰ ਕਹਦਾ ਮੈਂ ਹਾਰ ਨੂੰ ਕੋਈ ਕੰਮ ਨਹੀਂ ਕਰਦਾ ਮੈਂ ਜਿੱਤਣ ਲਈ ਉਹ ਕੰਮ ਕਰਦਾ ਕੰਫੀਡੈਂਟ ਬਹੁਤ ਇੱਕ ਵਾਰ ਡਾਊਨ ਹੋ ਗਿਆ ਕੀਮਤਾਂ ਡਾਊਨ ਹੋ ਗਈਆਂ ਬਹੁਤ ਦਾ ਇੱਕ ਲਿਆ ਤੇ ਉਹਦੇ ਵਿੱਚ ਚਲ ਗਿਆ ਫਿਰ ਆਪਣਾ ਨਵਾਂ ਬਿਜ਼ਨਸ ਲਗਾ ਡੋਨਲਡ ਟਰੰਪ ਦੇ ਕੱਪੜਿਆਂ ਦੀ ਬਹੁਤ ਵੱਡੀ ਲਾਈਨ ਆ ਤੇ ਵਾਈਨ ਤੇ ਨਵਾਂ ਆਪਣਾ ਪਾ ਲਿਆ ਤੇ ਫਿਰ ਤਰੱਕੀ ਕਰ ਗਿਆ ਤਾਂ ਜਿਹੜਾ ਬਿਜ਼ਨਸ ਆ ਜਿਹੜਾ ਉਹਦਾ Empire ਆ ਬਿਲੀਅਨ ਹੁੰਦੇ ਉਹਦੇ ਹੋਟਲ ਹੀ ਨੇ ਦੁਨੀਆ ਦੇ ਵਿੱਚੋਂ ਬਹੁਤ ਮਹਿੰਗੇ ਹੋ ਗਏ ਬਹੁਤ ਲਗਜ਼ਰੀ ਜ਼ਿੰਦਗੀ ਜਿਉਈਆਂ ਉਸਨੇ ਬਹੁਤ ਤੇਜ਼ ਤਰਾਰ ਬੰਦਾ ਹੈ ਜ਼ਿੰਦਗੀ ਦੇ ਆਪਣੇ ਉਹਦੇ ਆਪਣੇ ਬਿਸਤਰੇ ਦੇ ਜਿਹੜੇ ਸਬੰਧ ਸੀ ਉਹਨਾਂ ਨੂੰ ਵੀ ਦੁਨੀਆ ਦੇ ਵਿੱਚੋਂ ਕਰਦਾ ਰਿਹਾ ਹੈ ਇਹ ਬੇਵਾਕੀ ਹੈ ਉਸ ਬੰਦੇ 'ਚ ਉਹਦੇ ਪਿੱਛੇ ਕਾਰਨ ਕ੍ਰਿਟਿਕ ਨੇ ਸਿਰਫ ਸਿਰਫ ਫੇਮ ਭਾਲਦਾ ਹੋਵੇ ਅਖਬਾਰਾਂ 'ਚ ਮੇਰਾ ਨਾਮ ਹੋਵੇ ਬਸ ਇਦੋਂ ਵੱਧ ਕੁਛ ਨਹੀਂ ਸੰਦੀ ਮੰਗਤਾ ਜੀ ਲਾਈਨ ਨੰਬਰ 2 ਹਲੋ ਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੇਖੋ ਜੀ ਮੈਂ ਠੋੜੀ ਜਿਹੀ ਪੰਜਾਬ ਦੀ ਗੱਲ ਕਰਨੀ ਪੋਲਿਟਿਸ਼ਨ ਅਗਲੇ ਘੰਟੇ 'ਚ ਨਾ ਕਰ ਲਈਏ ਚਲੋ ਫੇ ਅਗਲੇ ਘੰਟੇ 'ਚ ਕਰ ਲੈਨੇ ਫੇ ਕਰ ਲੈਣਾ ਮੈਂ ਹਾਂਜੀ ਥੈਂਕ ਉਸ ਤੋਂ ਬਾਅਦ ਬੈਲਪੁਲ ਜੀ ਲਾਈਨ ਨੰਬਰ 3 ਸੋਰੀ ਸਸੀ ਕਾਲ ਜੀ ਬਾਈ ਜੀ ਮੈਂ ਉੱਪਰ ਸਾਫ ਸਮਝ ਗਿਆ ਅੱਛਾ ਦੇਖੋ ਅਸੀਂ 부ਸ਼ਦੀ ਕੋ ਵੀ ਦੇਖੀ ਹੈ ਦੋਨੇ 부ਸ਼ਾਂ ਦੀ ਉਹਨਾਂ ਨੇ ਸੰਸਾਰ ਨੂੰ ਕੀ ਤੋਂ ਬਿਨਾ ਕੁਝ ਨਹੀਂ ਦਿੱਤਾ ਔਰ ਅਮਰੀਕਾ ਦੀ ਜਿਹੜੀ ਆਰਥਿਕ ਪ੍ਰਣਾਲੀ ਸੀ ਤਹਿਸ ਮਹਿਸੂਗੀ ਸੀ ਔਰ ਭਾਵੇਂ ਉਹ ਇਰਾਕ ਦੀ ਚੰਦੀ ਬੇਲੋੜਾ ਜਾਂ ਅਫਗਾਨਿਸਤਾਨ ਦੀ ਔਰ ਵਾਮਾ ਨੇ ਸਮਲੋ ਉਸਵਾਮਨ ਦਾਦੰਦਾ ਵੀ ਮਸਲਾ ਨਜਿੱਠਿਆ ਹੋਰ ਸੰਸਾਰ ਨੂੰ ਸ਼ਾਂਤੀ ਤੇ ਆਰਥਿਕ ਖੁਸ਼ਹਾਲੀ ਦੇ ਰਾਹ ਤੇ ਖੜਾ ਕੀਤਾ ਹੈ। ਇਹ ਗੱਲਾਂ ਲਗਦੀਆਂ ਨਹੀਂ ਵੀ ਇੱਕ ਉਹ ਜਾਂ ਜਿਵੇਂ ਉਹ ਭਾਸ਼ਣ ਦਿੰਦਾ ਹੈ ਦੇ ਇਹ ਕੁਝ ਲੋਕ ਸਮਝਦੇ ਨੇ ਕਿ ਖਤਮ ਕਰ ਦੂ। ਦੇਖੋ ਖਿਆਲ ਤਾਂ ਨਹੀਂ ਲੱਗਦਾ ਜੰਗ ਖਤਮ ਕਰੂ। ਹਾਂ ਤਕੜਾ ਬਹੁਤ ਹੈ, ਅਮੀਰ ਹੈ। ਔਰ ਕਦੇ ਵੀ ਸੰਸਾਰ ਤਾਕਤ ਨਾਲ ਦੂਜਿਆਂ ਨੂੰ ਇਹ ਸ਼ਕਤੀ ਦਵਾ ਨਹੀਂ ਸਕਦੀ ਹੁੰਦੀ ਹਮੇਸ਼ਾ ਅਮਨ ਹੀ ਠੀਕ ਹੁੰਦਾ ਇਹਨਾਂ ਸ਼ਬਦਾਂ ਦਾ ਥੈਂਕ ਯੂ ਵੈਰੀ ਮਚੀ ਥੈਂਕ ਯੂ ਬਹੁਤ ਇਹ ਗਲਤ ਹੀ ਹੈ ਲਗਾਏ ਚੱਲ ਰਹੀ ਹੈ ਕੇ ਸ਼ਾਂਤੀ ਚਾਹੀਦੀ ਹੈ ਪਰ ਸ਼ਾਂਤੀ ਦੀ ਕੀਮਤ ਕੀ ਹੋਏਗੀ ਦੇਸ਼ ਦੇ ਵਿੱਚ ਪੈਟਰੋਟਿਜ਼ਮ ਇੰਨਾ ਅਮਰੀਕਾ ਦੇ ਵਿੱਚ ਦੇਸ਼ ਭਗਤੀ ਐਨੀ ਆ ਹਰ ਤੀਜੇ ਘਰ ਤੇ ਅਮਰੀਕਾ ਦਾ ਝੰਡਾ ਹੈ ਕਦਰਾਂ ਕੀਮਤਾਂ ਕਰ ਲਿਆ ਜਿਨ੍ਹਾਂ ਨੇ ਹੱਥਾਂ ਨੇ ਚਾਕੇ ਕੁਰਸੀ ਫਿਰ ਡਾਕਟਰ ਦਾ ਨੋਟ ਆ ਮੈਂ ਸਟੈਪ ਡਾਊਨ ਹੋ ਤੁਹਾਡੇ ਸਾਹਮਣੇ ਕੋਈ ਅਜਿਹੀ ਚੀਜ਼ ਹੋ ਸਕਦੀ ਰਸ਼ੀਆ ਨਾਲ ਸਬੰਧਾਂ ਦੀ ਗੱਲ ਇੱਕ ਅਕਸਮ ਦਾ ਜੈ ਸੌਰੀ ਜਿਹੜਾ ਟਰੈਲਰ ਸੰ ਹੈ ਤੇ ਉਹਨੂੰ ਵਿਦੇਸ਼ ਮੰਤਰੀ ਜਿਹੜੀ ਸਾਰੀ ਕੈਬਨਟ ਹੈ ਉਹ ਚ ਇੱਕ ਇਸਤਰੀ ਹੈ ਸਾਰੇ ਮੋਸਟਲੀ ਮਰਦ ਨੇ ਤੇ ਮੋਸਟਲੀ ਸਾਰੇ ਦੇ ਵਿੱਚੋਂ ਆਏ ਹੋਏ ਨੇ ਵਪਾਰਕ ਅਦਾਰਿਆਂ ਦੇ ਬਿਲੀਅਨਸ ਆਫ ਡਾਲਰ ਨੇ ਉਹਨਾਂ ਕੋਲ ਕੋਈ ਵੀ ਘਟ ਨਹੀਂ ਇਹ ਉਹਨਾਂ ਵੱਲ ਲੋਕ ਝਾਕਦੇ ਆ ਵੀ ਇਹ ਦੇਸ਼ ਨੂੰ ਕਿੱਧਰ ਨੂੰ ਲੈ ਹੋ ਸਕਦਾ ਚੰਗਾ ਹੋਵੇ ਇੱਕ ਗੱਲ ਲੋਕਾਂ ਦੇ ਘਰ ਘਰ ਗਈ ਜਿਹੜੀਆਂ ਨੌਕਰੀਆਂ ਨੌਕਰੀਆਂ ਨੌਕਰੀਆਂ ਨੌਕਰੀਆਂ ਦਾ ਰੋਲਾ ਪਾਇਆ ਸਟਰੋਂਗ ਅਗੇਂਸਟ ਸਟਰੋਂਗ ਅਗੇਂਸਟ ਸਟਰੋਂਗ ਅਗੇਂਸਟ ਦਾ ਪਾਇਆ ਘੱਟ ਗੈਂਪੀਆਂ ਲੈਗੇਂਸਟ ਗੱਲਾਂ ਬੋਲਤੀਆਂ ਕਿ ਨੂੰ ਕੱਢ ਦੂੰ ਨਕਸੀਕੋ ਦੀ ਕੰਦ ਕਰ ਦੂੰ ਆ ਕਰ ਦੂੰ ਉਹ ਕਰ ਦੂੰ ਆ ਗੱਲਾਂ ਜਿਹੜੀਆਂ ਕੀਤੀਆਂ ਜਿਹੜਾ ਨਸਲਵਾਦ ਸੀ ਉਹ ਨਸਲਵਾਦ ਤਾਂ ਜੱਟੋਂ ਸੀ ਜਦ ਅਪਾਰਟਮੈਂਟਸ ਦੇ ਵਿੱਚੋਂ ਮਨੋਰਟੀਜ਼ ਜਿਹੜੇ ਨਸਲ ਵਾਲੇ ਲੋਕ ਸੀ ਹੋਰ ਰੰਗਦਾਰ ਲੋਕ ਸੀ ਉਹਨਾਂ ਨੂੰ ਰੱਖਦੇ ਨਹੀਂ ਸੀ ਪਿਓ ਪੁੱਤ ਤੇ ਦੁਨੀਆ ਦੇ ਲੀਡਰਾਂ ਨੂੰ ਐਂਗਲਿਆ ਮਾਰਕਲ ਨੂੰ ਕਹਤਾ ਤਾਂ ਗਲਤੀ ਕੀਤੀ ਐਂਗਲਾ ਮਾਰਕਲ ਨੂੰ ਕਿਹਾ ਤਾਂ ਗਲਤੀ ਕੀਤੀ ਰਫਿਊਜੀ ਲੈ ਆਉਣ ਦੇ ਸੱਤਿਆਨਾਸ਼ ਕਰ ਦੇਗੀ ਇਹ ਕਰ ਦੇਗੀ ਉਹ ਕਰ ਦੇਗੀ ਹਰ ਜਗ੍ਹਾ ਜਿਹੜੀ ਉੰਗਾ ਪੌਣੀ ਉਹ ਸੌਖ ਨਹੀਂ ਹੈ ਪਰ ਹੁਣ ਤੱਕ ਇਹੀ ਹੋ ਰਿਹਾ ਮੋਨ ਸਿੰਘ ਜੀ ਲਾਈਨ ਨੰਬਰ 2 ਹੈਲੋ ਸਤਿ ਸ਼੍ਰੀ ਜੀ ਹਲਸਾ ਸਤਿ ਸ਼੍ਰੀ ਅਕਾਲ ਜੀ ਇਹ ਬੰਦਾ ਬਹੁਤ ਚਲਾ ਆ ਕੇ ਆਈ ਵਾਰ ਆਪਣੇ ਮਾਸਟਰ ਹੁੰਦੇ ਜਾਂ ਠਾਣਦਾਰ ਹੁੰਦੇ ਬਹੁਤ ਮਾਰਦੇ ਆ ਪਰ ਕੋਰਟ ਦੇ ਕਾਟ ਹੁੰਦੇ ਸੀਗੇ ਇਹ ਜਿਹੜਾ ਬੰਦਾ ਇਹਨੇ ਵੀ ਇਹੀ ਕਰਨਾ ਬਹੁਤ ਕੁਛ ਆ ਪਰ ਇਹਨੇ ਕਿਸੇ ਖਿਲਾਫ ਕੁਝ ਨਹੀਂ ਕਰਾ ਤੁਸੀਂ ਜ਼ਰੂਰ ਪੂਰੀਆਂ ਆ ਬਾਕੀ ਦੇਖੋ ਇਹਨੇ ਕਿ ਨਾਵੀਂ ਫੜੀ ਪਬਲਿਕੀ ਨਾਵੀਂ ਫੜ ਕੇ ਉਹ ਨਵੀਂ ਦੇਤੇ ਉਹਨੇ ਕੰਮ ਕੀਤਾ ਲੋਕਾਂ ਦਾ ਦਿਲ ਜਿੱਤ ਲਿਆ ਵੋਟਾਂ ਉਹ ਲੈ ਗਿਆ ਜੇ ਫਰਜ ਕਿਦਾ ਮਿਸਾਲ ਦੇ ਤੌਰ ਤੇ ਮਕਸੀਕੋ ਦੇ ਬਾਰਡਰ ਤੇ ਕੰਦ ਕਰ ਨਹੀਂ ਮਕਸੀਕੋ ਵਾਲੇ ਨੂੰ ਹੋਊਗੀ ਥੋੜੀ ਬੜੀ ਪਰ ਕੰਦ ਤੇ ਹੋਣੀ ਨਹੀਂ ਇੰਨਾ ਲੰਮਾ ਏਰੀਆ ਕੰਦ ਹੋ ਹੀ ਨਹੀਂ ਸਕਦੀ ਜੇ ਕੰਦ ਹੋਈ ਵੀ ਜਦੋਂ ਨਹੀਂ ਨੇ ਥੱਲੇ ਕੰਦ ਦੇ ਪਟ ਰਹੇ ਨਹੀਂ ਚੋ ਅੱਗੇ ਕੀ ਪ੍ਰਧਾਨ ਮੰਤਰੀ ਵੀ ਉਸ ਹਊਗਾ ਲੋਕੀ ਦੇਖਣਗੇ ਵੀ ਦੂਦੋ ਸੀਗਾ ਇਹ ਤਾਂ ਬਹੁਤ ਅਗਲਵਾ ਨਿਕਲਿਆ ਥੈਂਕ ਯੂ ਇਹ ਗੱਲ ਸਰ ਜੇ ਆਪਾਂ ਨੂੰ ਕੁਛ ਨਹੀਂ ਕਹਿੰਦੀ ਫਿਰ ਤਾਂ ਫلسطੀਨਰ ਚੱਲਦੇ ਗੋਲੇ ਵੀ ਸਾਨੂੰ ਕੁਝ ਨਹੀਂ ਕਹਿੰਦੇ ਲਿਬੀਆ ਦੇ ਚੱਲਦੇ ਇਰਾਕ ਸੌਦੀ ਸਰੀਆ ਚ ਅਫਗਾਨਿਸਤਾਨ ਡਿੱਗਦੇ ਗੋਲੇ ਵੀ ਸਾਨੂੰ ਕੁਝ ਨਹੀਂ ਕਹਿੰਦੇ ਦੁਨੀਆ ਦੇ ਵਿੱਚ ਆਪਾਂ ਕੰਧ ਹੋਣੀ ਜਿਹੜਾ ਭਾਈਚਾਰਾ 4-5 ਲੱਖ ਬੈਠਾ ਦੋਨੇ ਦੇਸ਼ਾਂ 'ਚ ਵੱਧ ਹੋਊ ਇਹਦੇ ਚੋਂ ਘੱਟੋ-ਘੱਟ 30% ਉਧਰ ਵੀ ਟੱਪੇ ਆ ਜਿਹੜੇ ਅੱਜ ਟੱਬਰਾਂ 'ਚ ਵਾਸਤੇ ਆ ਬੈਜਾ-ਬੈਜਾ ਪਈ ਹੈ ਸੋ ਕੱਲ ਸੁਣਾਇਆ ਤਾਂ ਸੀ ਵੀ ਜਿਹੜਾ ਦਲੀਜ਼ ਤੇ ਬਲੀਜ਼ ਵਾਲੀ ਗੱਲ ਥੋਨੂੰ ਮੰਡੀ ਬੈਠਾ ਕਰ। ਇਹ ਕਹਿੰਦਾ ਦੇਖੋ ਸੀ ਤੁਸੀਂ ਜਿਹੜਾ ਬਲੀਜ਼ ਤੇ ਉਹ ਕਹਿੰਦਾ ਬਲੀਜ਼ ਕਹਿੰਦਾ ਕਿ ਦਲੀਜ਼ ਕਹਿੰਦਾ ਉਹ ਦਲੀਜ਼ ਦਾ ਕਹਿੰਦਾ ਆ ਪਈਆ ਬਾਹਰਲਾ ਦੇਸ਼ ਐ ਉੱਥੇ ਲਿਜਾਣਾ। ਉੱਥੋਂ ਕਹਿੰਦਾ ਉੱਥੋਂ ਗਾਹ ਅਮਰੀਕਾ ਬੱਸ। ਗੱਲ lovely gall ki hou kede jangla ch firu kithe firu parna mode te tharke kehda chal chada fir mann gaya shero vapar kanish chardeesh singh line number 2 hello sushil ji sushikal ji bhai ji ji singh yes wala akhar ਇੱਕ ਕੋਈ ਸੀ ਜਿਹੜਾ ਸਾਹਿਬ ਜੀ ਉਹ ਜਿੱਥੇ ਇਹ ਇੱਕ ਵਕਤ ਵੰਬਾ ਬਠਾ ਜੀ ਇੱਕ ਵਾਰ ਤੇ 트럼ਪ ਸਾਹਿਬ ਬਠਾਏ ਸੀ ਤੇ ਉਹ ਉੱਥੇ ਕਹਿ ਰਿਹਾ ਦੱਸੇ ਨਹੀਂ ਇਹਨਾਂ ਕੋ ਕਰਨਾ ਪੈਂਦਾ ਇਹ ਨਹੀਂ ਪਤਾ 2 ਸਾਲ ਲਾ ਕੇ ਮੇਰੇ ਤੋਂ ਨਹੀਂ ਜੱਬ ਕਰਨ ਦਾ ਸਮਾਂ ਜੱਟイズਮ ਨੇ ਜੱਟਵਾਦ ਨੇ ਘਾਟਾ ਬਹੁਤ ਦਿੱਤਾ ਆਪਾਂ ਨੂੰ ਪੰਜਾਬ ਚਾਕ ਬਣੇ ਫਿਰਦੇ ਆਂ ਥੋਂ ਥੋਂ। ਜੱਸੀ ਜੀ ਲਾਈਨ ਨੰਬਰ 3। ਸਸੀ ਬਾਈ ਜੀ। ਸਸੀ ਘੱਗਲ ਬਾਈ ਜੀ। ਅਸੀਂ ਪਹਿਲਾਂ ਮੈਂ ਆ ਕੇ ਤੁੰਗਿਆ। ਵਈ ਕਹਿ ਕੇ ਗਏ ਨੇ ਕਿ ਕੰਦ ਕਰ ਦਿਆਂਗੇ। ਬਈ ਰਹਿਣਾ ਲੇਬਰ ਦੀ ਬਹੁਤ ਲੋਡ ਹੁੰਦੀ ਆ ਸਭ ਇੱਕ ਇਹਨਾਂ ਨੇ ਇੱਕ ਨਾ ਵੀ ਜੁੰਮਰੇ ਸੀਗੇ ਜੀ ਇਹਨਾਂ ਕੋਈ ਕੰਮ ਗੁੰਦ ਕਰਨੀ ਨਾ ਬੰਦੇ ਕਰਕੇ ਤੇ ਨਾ ਸੋਰੇ ਕਰਕੇ ਰਾਜੀ ਆ ਸੈਨਿਕ ਬੰਦੇ ਆ ਜਿਹੜੇ ਸਾਰੇ ਖੇਤਾਂ ਤੇ ਮਿਹਨਤ ਕਰਦੇ ਆ ਇਹਨਾਂ ਨੂੰ ਕੁਝ ਨਹੀਂ ਕਰਨ ਆਇਆ ਥੈਂਕ ਯੂ ਬਹੁਤ ਜੀ ਤੁਹਾਡਾ ਮੇਰੇ ਪ੍ਰਕਰਿਤਾ ਬੇਨਤੀ ਆ ਵੀ ਚ ਮੀਂਹ ਬਹੁਤ ਪੈ ਰਿਹਾ ਜੇ ਤੇ ਧਿਆਨ ਨਾਲ ਕਰਨ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜੇ ਠੀਕ ਹੈ ਸਪਾਰ ਦੇ ਵਿੱਚ ਜਦ ਮੀ ਵਰਦਾ ਪਹਿਲੀ ਤਾਂ ਸੁਗੰਧ ਬਹੁਤ ਵਧੀਆ ਆਉਂਦੀ ਹੈ ਭਾਦੋਂ ਦੇ ਜਿਹਾ ਸ਼ਰਾਟੇ ਹੁੰਦੇ ਨਾ ਖੂਨ ਨੂੰ ਜਾਂਦੇ ਤੁੱਦਲ ਹੁੰਦੀ ਤੁਰੇ ਜਾਂਦੇ 'ਚ ਪੈਰ ਵੱਜਦਾ ਤੁੱਦਲ ਉੱਪਰ ਨੂੰ ਉੱਡਦੀ ਫੇਰ ਭਾਦੋਂ ਦਾ ਸ਼ਰਾਕਾ ਇੱਕ ਆਉਂਦਾ ਤੇਈ ਵਾਰ ਉਹ ਬੰਦੇ ਨਾਲ ਬੰਨਾ ਛੱਡ ਦਿੰਦਾ ਪਹੇ ਚ ਮੀਂਹ ਪੈਂਦਾ ਹੁੰਦਾ ਨਾ ਖੱਬੇ ਪੈਂਦਾ ਨਾ ਸੱਜੇ ਐਂਓ ਲੱਗਦਾ ਜਿਵੇਂ ਮੇਰੇ ਸਿਰ ਤੇ ਪੈਂਦਾ ਫੇਰ ਉਹਦੇ ਵਿੱਚੋਂ ਜਿਹੜੀ ਸੁਗੰਧ ਆਉਂਦੀ ਨਾ ਪੁੱਬਲ ਦੇ ਵਿੱਚੋਂ ਧੁੱਦਲ ਪੁੱਬਲ ਧੁੱਦਲ ਸਭ ਕਹਿੰਦੇ ਐ ਧੁੱਦਲ ਕਹਿੰਦੇ ਆ ਪੁੱਬਲ ਆ ਜਿਹੜੀ ਉਹ ਸਵਾਹ ਆ ਜਿਹੜਾ ਕਲਵਨ ਕਲੇਨ ਵਗੈਰਾ ਜੀ ਤੇ ਬਾਹਰ ਦਾ ਸਟਿੱਕਰ ਵੀ ਨਹੀਂ ਕੱਟਦੇ ਵੇਖ ਲੈ ਆ ਮੇਰੇ ਆਲਾ ਬੋਸ ਦਾ ਲਿਆਂਦਾ ਉਹ ਬਾਈ ਜੀ ਕੱਟ ਕੇ ਪਾਇਆ ਕਰੋ ਕੋਟ ਕਿਰਪਾ ਕਰਿਓ ਥੋੜੀ ਜੀ ਤੇ ਉਹ ਉਹਦੀ ਸਗੰਧ ਆਉਂਦੀ ਚਾਹ ਲੇਟ ਹੁੰਦੀ ਚਾਹ ਤੇਜੀ ਨਾਲ ਬੰਦਾ ਚਾਹ ਲੈ ਕੇ ਜਾਂਦਾ ਡੋਲੂ ਭਰਿਆ ਹੈ ਚਾਹ ਦਾ ਗਾਂ ਬੰਦਾ ਓੱਖਾ ਉਹਦਾ ਠੰਡ ਇੰਨੀ ਗਰਮੀ ਦੇ ਵਿੱਚ ਚਾਹ ਠੰਡੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਰ ਹੁਣ ਜੀ ਜਿਹੜਾ ਗੱਲ ਕਰ ਰਿਹਾ ਦੇਖੋ ਆਪਣੇ ਭਾਈਆਂ ਦਾ ਰਵਈਆ ਸਾਡਾ ਕੀ ਜਾਂਦਾ ਸਾਡੇ ਤੇਲ ਦੀ ਕੀਮਤ ਵਧੂ ਮੈਕਸੀਕੋ ਵਾਲਿਆਂ ਰੋਕ ਲਓਗੇ ਸਾਡਾ ਕੀ ਜਦੋਂ ਸਾਨੂੰ ਲੋੜ ਪਈ ਸਿਰ ਲੋਕਾਂ ਨੇ ਵੀ ਇਹ ਤਾ ਸਾਡਾ ਕੀ ਰਵੱਈਆ ਕੋਲ ਕੇ ਹੁੰਦੀ ਆ ਤੇ ਮੈਨੂੰ ਪਰੇਸ਼ਾਨੀ ਹੁੰਦੀ ਆ ਸਿੱਖ ਕੌਮ ਤੋਂ ਅਸੀਂ ਫੋਨ ਕਰ ਰਹੇ ਹਾਂ ਜਿਹੜੇ ਦੇ ਜੱਟ ਮੈਸੇਜੀਆਂ ਗੱਲਾਂ ਕਰਦੇ ਆ ਦੇਖੋ ਜਿਹੜੀ ਗੱਲ ਕੀਤੀ ਜਾਂਦੀ ਆ ਇਸਲਾ ਰੈਕਡ ਦੇ ਕੇ ਅਗਲੇ ਦੇਖਦੇ ਆ ਉਹਦੇ ਆਧਾਰ ਤੇ ਗੱਲ ਕਰਦੇ ਆ ਸੰਤਪਾਉ ਹੋਣੀ ਪਵਾਂ ਜਿਹ ਕਹਿੰਦੇ ਮੈਨੂੰ ਜਿਹੜੀ ਆਤ ਚੱਕ ਫੇਲੀ ਮੈਂ ਕੱਤਰੀ ਹੀ ਕਰਦਾ ਪਰ ਸੰਤਪਾਉ ਦਾ ਇਹ ਰੈਗੜਿਆ ਤੇ ਜਦੋਂ ਵੀ ਇਹਨਾਂ ਲੋਕਾਂ ਦਾ ਜਿਹੜਾ ਪੈਸਾ ਉਹੋ ਖੜਾ ਪਗਿਆ ਅੱਜ ਤਾਈਂ ਬਿਜ਼ਨਸ ਕੀਤਾ ਬਿਜ਼ਨਸ ਤੇ ਜਿਹੜੀਆਂ ਡੀਲਾ ਕੀਤੀਆਂ ਉਹਨਾਂ ਦੀ ਪਰਸਨਲ ਲਾਇਸੈਂਸ ਉਹਦੇ ਵਿੱਚ ਖਬਰਾਂ ਦਾ ਸਮਾਂ ਹੋ ਗਿਆ ਸਿੰਘ ਸਾਹਿਬ ਅਗਲੇ ਹਿੱਸੇ 'ਚ ਗੱਲ ਕਰਦੇ ਪਿੰਡ ਦੀ ਸਫਲਤਾ ਧੰਨਵਾਦ ਰਾਂਚ ਰੂਪਨ ਕੀ ਜੀ ਦੀ ਕਹਾਣੀ ਤੁਹਾਡੇ ਸੰਬੋਧ ਕਰਦਾ ਇੱਕ ਪੰਜਾਬ ਦੇ ਪਿੰਡਾਂ ਦੀਆਂ ਕਹਾਣੀਆਂ ਹੁੰਦੀਆਂ ਉਹਨਾਂ ਦੀਆਂ ਜਿਹੜਾ ਮੰਡੀ ਸੁਖਾਨੰਦ ਪ੍ਰਾਣੀ ਮੰਡੀਆਂ ਰਿਆਸਤਾਂ ਵੇਲੇ ਦੀ ਸੁਖਾਨੰਦ ਨੋਂ ਹੁੰਦਾ ਸੀ ਤੇ ਹੁਣ ਮੰਡੀ ਹੈ ਸੁਖਾਨੰਦ ਮੰਡੀ ਦੇ ਆਦਤੀਏ ਤੇ ਜੱਟਾਂ ਦੀ ਬੜੀ ਸਾਝ ਹੈ ਚਿੱਟਿਆਂ ਸਰਾਣਿਆਂ ਤੇ țeਡੇ ਹੋੜਪੀਏ ਸਾਲ ਦਿਨ ਬਲਾਈਤੀ ਬਲਦੰਗੂ ਖਾ ਕੇ ਜਿਵੇਂ ਸੁੱਤੇ ਰਹਿੰਦੇ ਇਸ ਤਰ੍ਹਾਂ ਖੁਸ਼ ਹੋ ਕੇ ਆਰਤੀ ਇਹ ਕੇ ਜੱਟਾਂ ਨੂੰ ਦੇਵੀ ਮਾਂ ਨੂੰ ਮੱਥਾ ਟੇਕਦੇ ਕਾਗਜ ਨਵੇਂ ਪੁਰਾਣੇ ਹੁੰਦੇ ਪਰ ਜੱਟਾਂ ਦੀ ਆਰਤੀਆਂ ਨਾਲ ਬੰਦੀ ਬਹੁਤ ਸੁਖਾਂਦੰਦ ਵਧੀਆ ਮੰਡੀ ਸੀ ਮੰਡੀ ਦੇ ਦੱਖਣ ਚ ਸੱਤ ਗਲੀਆਂ ਗਲੀਆਂ ਆਜ਼ਾਦੀ ਤੋਂ ਪਹਿਲਾਂ ਤਮਾਮ ਘਰ ਮਹਾਜਨਾ ਦੇ ਆਰਤੀਆਂ ਤੇ ਮੰਡੀ ਤੋਂ ਬਾਹਰਲੇ ਹੋਰ ਦੁਕਾਨਾਂ ਦੇ ਘਰ ਸੱਤਵੀਂ ਗਲੀ ਦੇ ਲੰਬੇ ਚੌੜੇ ਬੇਲੇ ਚ ਹਵੇਲੀ ਚ ਪੋਸੜਾ ਠਾਣਾ ਠਾਣੇ ਚ ਮਿਹਾਲ ਸਿੰਘ ਨੰਬਰ 10 ਅਖਾਲ ਸਰ ਸਵੇਰ ਦਾ ਬੈਠਾ ਪਿੰਡ ਦੇ ਇੱਕ ਬੰਦੇ ਨੂੰ ਤੌੜੇ ਦੇ ਸਮੇਤ ਹਲੇ ਉਹਦੇ ਪਿੱਛੇ ਆਇਆ ਉਹ ਜਨਾਬ ਸਰਦਾਰ ਛੱਡ ਯਾਰ ਮੇਰੀ ਬੋਟ ਆ ਮੇਰਾ ਖਾਸ ਬੰਦਾ ਐ ਇਹ ਇਹ ਤਾਂ ਇੱਕ ਦੋ ਬੋਟਲਾਂ ਤੱਕੀਆਂ ਕਰਦਾ ਐ ਇਹਦੀ ਮਾਂ ਟੱਲੀ ਐ ਸਾਹਬਣ ਵਾਲਾ ਕੋਈ ਨਹੀਂ ਇਹਨੂੰ ਛੱਡੋ ਜਦ ਹਲੇ ਸਰਦਾਰ ਬੋਲਣ ਲੱਗਿਆ ਵਿਚੇ ਹੀ ਥਾਣੇ ਦੀ ਮਾਂ ਕਹਿੰਦੀ ਨੰਬਰਦਾਰਾ ਬਾਲਾ ਤੇਜ ਨਾ ਹੋ ਇੱਕ ਆਖਣ ਕਰਦੇ ਆ ਗੱਲ ਤੇਰੇ ਨਾਲ ਉਹਨੂੰ ਇਹ ਸੀ ਜਿਉਂ ਜਿਉਂ ਸੰਦਾਂ ਦੇ ਪਰਛਾਵੇਂ ਲੰਬੇ ਪੂਸਰ ਦੇ ਲਾਰੇ ਨੰਬਰ ਨਿਹਾਲ ਨੰਬਰ ਦਾ ਨਿਹਾਲ ਸੋ ਓੱਖਾ ਹੋਇਆ ਬੈਠਾ ਜਿਹਨੂੰ ਰੋਲਾ ਪੈਂਦਾ ਕੇਸਰੀ ਪੱਗ ਨਾਲ ਬੰਦੇ ਹੋਰ ਇੱਕ ਅਧਖੜੂ ਨੂੰ ਲੈ ਮੈਲੀ ਕਚੇਲੀ কুরਤੀ ਸਲਵਾਰ ਥਾਂ ਤਾਂ ਤੇ ਵਟ ਪੈਗੰਦੇ ਸੱਬੇ ਕਸੀਆਂ ਪੁਰਾਣੀਆਂ ਚਮੜੀਆਂ ਦੀਆਂ ਚੱਪਲਾਂ ਸਿਰ ਤੇ ਬਾਲ ਉਲਝੇ ਹੋਏ ਗੱਲ ਚ ਲਾਲ ਚੁੰਨੀ ਚੁੰਨੀ ਵੀ ਲਿਬੜੀ ਤੇ ਬੜੀ ਔਰ ਦੀਆਂ ਸੁੰਦਰ ਨੱਕ ਤਿੱਖਾ ਦੰਦ ਚਿੱਟੇ ਜ਼ਰ ਖਾਦੇ ਲੋਹੇ ਜਿਹਾ ਸਰੀਰ ਭਰਿਆ ਪਰ 35 ਤੋਂ ਥੱਲੇ ਏਸ ਵੀ ਪਾਗ ਵਾਲੇ ਨੌਜਵਾਨ ਨੇ ਜਿਹੜਾ ਆਪਣੇ ਆਪ ਨੂੰ ਆਗੂ ਸੰਦਈ ਇਹਨੂੰ ਸੰਭੋ ਜੀ ਆਵਾਰਾ ਹੈ ਇਹਦਾ ਕਰੋ ਕੋਈ ਬੰਦੋਬਸਤ ਨੇ ਕਿਹਾ ਖਾਨਦਾਨਾਂ ਬਿਠਾਤਾ ਨਿੱਤ ਵੇਖੀ ਦੀਆਂ ਇੱਥੇ ਡਰਾਈਵਰਾਂ ਦਾ ਮਾਲ ਹੈ ਅੰਬ ਚੂਪ ਕੇ ਗੁਟਲੀ ਸਿੱਟ ਗਏ ਇਹਨਾਂ ਦਾ ਬੰਦੋਬਸਤ ਸੀ ਕੀ ਕਰਨਾ ਲੈ ਜੋ ਤੁਸੀਂ ਆਏ ਹੋ ਥੋੜੀ ਮੰਨ ਲੈਨੇ ਸੀ ਆਲੀ ਗੱਡੇ ਆਉਣ ਵਾਲੀ ਹੈ ਸਪਾਹੀ ਚੜਾਏ ਆਉਣਗੇ ਮੁਰਜੂ ਆਪਣੇ ਦੇਸ਼ ਨੂੰ ਥਾਣੇਦਾਰ ਦੇ ਇਸ ਪਤਾ ਨਹੀਂ ਕਿਹੜਾ ਕਰ ਰਿਹਾ ਸਨ ਦਾਦੀ ਪਾਸਾ ਸੁਣ ਕੇ ਤੇ ਕੇ ਕਿਸ ਦੀ ਪੱਗਾਂ ਨੌਜਵਾਨ ਗੰਭੀਰ ਹੋ ਗਏ ਇਹਦਾ ਕੋਈ ਇਲਾਜ ਕਰੋ ਸਰਦਾਰ ਜੀ ਫਿਰ ਤੁਸੀਂ ਦੱਸੋ ਕੀ ਕਰੀਏ ਆਵਾਰਾ ਟਿਕਾਣੇ ਦਾ ਫਰਜ਼ ਬਣਦਾ ਹੈ ਪੜਿਆ ਮੁੰਡਾ ਜਿਹੜਾ ਸੋਢੀ ਸਰਦਾਰ ਖੱਟੀ ਪੱਗ ਫਾੜੀਆਂ ਵਾਲੀ ਚੜਮੀ ਮੁੱਛ ਤੇ ਮੁੰਡਾ ਸੁਣਨੀ ਪੈਣੀ ਟਿਕਾਣੇ ਦਾ ਫੇਰ ਪਤਾ ਕਰੋ ਜੇ ਤੈਨੂੰ ਇੰਨਾ ਕਾਨੂੰਨ ਦਾ ਪਤਾ ਹੈ ਨੇ ਆਪਾਂ ਫੇਰ ਪਤਾ ਕਰ ਇਹ ਸਭ ਦਸੋ ਜੀ ਆਪਣਾ ਟਿਕਾਣਾ ਦੂਜਾ ਨੌਜਵਾਨ ਕਹਦਾ ਕਿਉਂ ਬਈ ਕਹਾ ਕੀ ਰਹਿਣੇ ਵਾਲੀ ਹੋ ਤੂੰ ਪਿੱਛੇ ਨੇ ਇੱਕ ਨੇ ਪੱਠੇ ਵੱਢ ਹਿੰਦੀ ਬੋਲੀ ਔਰ ਤੂੰ ਨਾ ਕੋਈ ਸਮਝੀ ਨਾ ਕੋਈ ਬੋਲੀ ਓਏ ਇਹਦੀ ਬੋਲੀ ਨਹੀਂ ਆਪਾਂ ਸਮਝ ਸਕਦੇ ਸਾਡੇ ਕੋਲ ਹੈਗਾ ਬੰਦਾ ਇੱਕ ਬਾਹਰ ਕੱਟ ਦੇ ਵਿੱਚੋਂ ਖੜੇ ਇੱਕ ਬੰਦੇ ਨੂੰ ਜਿਹੜਾ ਨਾਲ ਹੀ ਅੱਡੇ 'ਤੇ ਬੈਠੀ ਕੋਲ ਲੰਘ ਜਾਂਦੇ ਦੂਜੇ ਬੰਦੇ ਤੁਰੇ ਜਾਂਦੇ ਸੀ ਮੁੰਡੇ ਬਸਾਂ 'ਤੇ ਉਤਰੇ ਤੇ ਬੈਠੀ ਇਸਤਰੀ ਨੂੰ ਪੁੱਛਣ ਲੱਗੇ ਗੱਲ ਕੀ ਹੋ ਗਈ ਇਹਨੂੰ ਲੋਕ ਇਕੱਠ ਦੇ ਕੋਲ ਦੀ ਕੀ ਪਤਾ ਲੱਗੇ ਯਾਰ ਪੁੱਛ ਲੈਨੇ ਆਂ ਦੂਜਾ ਔਰਤ ਦੇ ਮੂੰਹ ਕੋਲ ਜਾ ਕੀ ਗੱਲ ਐ ਬਾਈ ਤਾਂ ਉਹ ਕਿਸੇ ਵੀ ਵੀ ਨਹੀਂ ਗੱਲ ਸਮਝ ਚਾਨੂੰ ਇੱਕ ਭਈਆ ਨਿਕਿਆ ਜਾਂਦੇ ਉਹ ਭਈਆ ਇੱਧਰ ਆ ਇਹੋ ਕੁਛ ਭਲਾ ਕੀ ਬੋਲਦੀ ਐ ਇੱਕ ਬਾਹਲਾ ਔਖਾ ਸੀ ਆੜਤੀਏ ਪੈਸੇ ਨਹੀਂ ਦਿੱਤੇ ਚਵਨ ਕੀ ਬੋਲਦੀ ਐ ਸਰਦਾਰ ਜੇ ਓਏ ਮੈਂ ਨਹੀਂ ਕਹਿੰਦਾ ਉਹਨੂੰ ਵੇਖ ਆ ਤੇਰੀ ਮਾਸੀ ਬੈਠੀ ਆ ਮਜਬਾ ਲਈ ਛਪਾਰਦਾ ਉਹਨੂੰ ਪੁੱਛ ਕਿੱਥੇ ਦੀ ਐ ਬਹੁਤ ਔਖਾ ਤੇ ਇਹ ਬਿਹਾਰੀ ਸੀ ਯੂਪੀ ਸੀ ਹਿਮਾਚਲੀ ਸੀ ਬੰਗਾਲੀ ਸੀ ਦੀ ਗੱਲ ਨਾ ਕਰ ਸੁਣੀ ਗੱਲ ਹਿੰਦੀ ਬੋਲਦੇ ਬੋਲਦੇ ਬੰਗਾਲੀ ਨੇ ਕਹਤਾ ਕੈਮਰਾ ਆਚਨ ਜਦੋਂ ਨੇ ਕਿਹਾ ਕੀ ਹਾਲ ਐ ਇਸਦੀ ਨੇ ਉਂਗਲਾ ਜਰੇ ਅੱਖਾਂ ਚੱਕ ਲਈਆਂ ਆਪਣੇ ਕੋਠੇ ਥੇਕੇ ਬਾੜੀ ਕੋਠੇ ਥੇਕੇ ਉਨੇ ਪੁੱਛਿਆ ਘਰ ਕਿੱਥੇ ਆ ਪਿੰਡ ਕਿੱਥੇ ਆ ਫਿਰ ਔਰਤ ਬੋਲੀ ਕਹਿੰਦੀ ਆ ਮੈਂ ਅਮੀ ਕੋਲਕਾਤਾ ਚੀਕੀ ਇੱਕ ਸਰਦਾਰ ਸਮਾਨੁਦਾਰੀ ਚੀਕੀ ਇਕਰੇ ਲੇਗੇ ਚੀਕ ਇੱਕ ਮਾਸ ਅਬੀਰੋ ਮੈਂ ਬਸ ਇਕਨੇ ਕੋਥੇ ਚਲੇ ਗਏ ਚੀ ਨੇ ਬਾਰੇ ਨਾ ਬਾਬਾ ਉਹ ਕਹਿੰਦਾ ਕੀ ਕਹਿੰਦੀ ਐ ਤੂੰ ਵੀ ਪਛਤੋ ਲੱਗਿਆ ਬੋਲਣ ਸਿੱਧਾ ਹੋ ਮੈਂ ਨਾ ਅੰਗਰੇਜੀ ਬੋਲਦਾ ਤੂੰ ਪਿੱਛੇ ਖੜਾ ਕਹਿੜਾ ਹੋ ਕੇ ਗਰ ਉਹ ਸਰਦਾਰ ਜੀ ਸੁਣੋ ਤਾਂ ਸਹੀ ਇਹ ਕਲਕੱਤੇ ਕੀ ਹੈ ਇਸ ਕੋ ਇੱਕ ਸਰਦਾਰ ਟਰੱਕ ਡਰਾਈਵਰ ਛੋੜ ਗਿਆ ਇੱਕ ਮਹੀਨੇ ਰੂਮ ਮੇਂ ਬੰਦ ਰੱਖਿਆ ਹੁ ਤਹਾਂ ਵੀ ਨਹੀਂ ਹੈ ਪਤਾ ਨਹੀਂ ਕਹਾਂ ਗਿਆ ਐ ਫੇਰ ਉਹਨੂੰ ਫੇਰ ਫੜ ਲਿਆ ਫੜ ਕੇ ਲਿਆਏ ਤਾਂ ਉਹਨੇ ਸਰਦਾਰ ਨੂੰ ਦੱਸਿਆ ਥਣਦਾਰ ਨੂੰ ਬਾਹਰ ਖੜਾ ਸੀ ਉਹ ਸਵੇਰ ਦਾ ਦਿਹਾੜੀ ਜਾਣੋ ਔਖਾ ਬੰਦੇ ਉਹਨੂੰ ਧੂਹੀ ਫਿਰਨ ਉਹਦੇ ਆ ਕੇ ਜੇ ਦੱਸਿਆ ਸਰਦਾਰ ਜੀ ਇਹ ਤਾਂ ਕਲਕੱਤੇ ਤੋਂ ਹੈ ਕਲਕੱਤਾ થી ਕਿ ਇਛੇ ਗੇਛੇ ਯਾਦੋ ਗੱਲਾਂ ਕਰ ਕਰੇ ਐਸ਼ੇ ਗੇਸ਼ੇ ਨਾ ਪੂਰੀ ਗੱਲ ਦੱਸ ਫਿਰ ਉਹਨੇ ਤਰਜਮਾ ਕਰਕੇ ਦੱਸਿਆ ਅੱਛਾ ਸਮਝ ਗਿਆ ਸਰਦਾਰ ਵੀ ਕਹਿੰਦਾ ਮੈਂ ਵੀ ਪੜਿਆ ਦੇਖਿਆ ਇਹ ਰੋਟੀ ਚੁੱਕ ਸਰਦਾਰ ਜੀ ਇਹਨੂੰ ਪਿੱਛੋ ਵੜਾ ਸਿੰਘ ਨੰਬਰਦਾਰ ਸੁਣ ਕੇ ਥਣਦਾਰ ਨੇ ਰੋਹਤ ਨੂੰ ਕਿਹਾ ਬੰਗਾਲੀ ਨੂੰ ਪੁੱਛੋ ਇਹਨੂੰ ਰੋਟੀ ਲਾ ਦੂ ਉਹਨੇ ਇਸਤਰੀ ਨੂੰ ਰੋਹਤ ਨੇ ਫਿਰ ਪਿੱਛੇ ਰੋਹਤ ਨੂੰ ਜਾਣਦੇ ਸੀ ਬਈ ਤੂੰ ਖਾਣਾ ਬਣਾ ਲੇਂਗੀ ਉਹ ਕਹਿੰਦਾ ਜੀ ਹਾਂ ਲਾ ਦੂ ਰੋਟੀ ਇਹ ਅੱਛਾ ਖਾਨੇਦਾਰ ਨੇ ਹਾਲਸਿਆਂ ਦੇ ਮੂਹਰੇ ਖਾਨੇਦਾਰ ਦੇ ਮੂਹਰੇ ਨਿਹਾਲ ਸਰ ਨੰਬਰਦਾਰ ਹੋ ਕੇ ਕਹਿੰਦਾ ਮਹਾਰਾਜ ਸਵਾਰ ਮੈਂ ਪਿੰਡ ਨੂੰ ਘੰਟਾ ਦਿਓ ਬੰਦਾ ਕਰਦੇ ਹਾਜ਼ਰ ਇਹਦਾ ਵੀ ਪੁੱਨ ਉਹਦਾ ਤੇ ਬੰਦਾ ਤੁਸੀਂ ਇੱਥੇ ਬਿਠਾਓ ਨੰਬਰਦਾਰ ਜਿੰਮੇਦਾਰੀ ਉਟਣੀ ਪਊ ਇਹੋ ਨਾ ਹੋਵੇ ਤੇਰਾ ਬੰਦਾ ਟਰੱਕ ਡਰਾਈਵਰ ਨੂੰ ਦਿਨਾਂ ਪਿਛੋਂ ਡੱਕਾ ਪਵੇ ਮੈਂ ਤੇਰੇ ਗੱਲ ਚ ਸਾਫਾ ਪਾ ਲੈਣਾ ਨਾ ਨਾ ਨਾ ਨਾ ਫੁੱਲ ਪਾਨਾਂ ਰੱਖੂ ਉਹਨੂੰ ਤੀਵੀਂ ਚਾਹੀਦੀ ਐ چاہے ਕੀ ਜੀ ਹੋਵੇ ਦੋ ਗਲੋਟੀਆਂ ਥੱਪਦੀ ਹੋਵੇ ਆਪੇ ਹੱਥ ਫੂਕਦਾ ਸੱਤ ਜਨਮ ਦਾ ਭੁੱਖ ਐ ਉਹਦੇ ਅੰਦਰ ਤੀਵੀਂ ਦਾ ਘਰ ਸੀ ਨਿਹਾਲ ਸੋ ਨੰਬਰਦਾਰ ਦੇ ਨਾਲ ੱਲੀ ਜਾਨ ਜ਼ਮੀਨ ਕਮਰਾ ਇੱਕੋ ਨਾਲ ਛੋਟੀ ਕੰਧ ਨਲਕੇ ਤੇ ਉੱਪਰ ਨੰਬਰਦਾਰ ਦੇ ਘਰ ਨੂੰ ਝਾਕਦਾ ਹੁਣ ਨੰਬਰਦਾਰ ਦਾ ਇਹ ਸੀ ਵੀ ਗਵਾਂਡ ਵਿਆਹ ਹੋਵੇ ਛੜਾ ਨਾ ਹੋਵੇ ਤਾਂ ਮੈਂ ਕਰਾਂ ਕੰਮ ਕਿ ਕਿਸ ਨਾਲ ਪੈਸੇ ਜੋੜਦਾ ਬਚਣਾ ਐਨ ਪੂਰਾ ਖਤ ਕੱਢ ਕੇ ਲੱਗਦਾ ਕਿ ਸਿੰਘ ਤੀਤੀ ਗੜ ਦੇ ਵਿੱਚ ਪੱਟਾਂ ਦੀਆਂ ਮੋਰਨੀਆ ਥੱਲੇ ਖੁੱਛ ਤੇ ਤਾਰਾ ਇੱਕ ਅੱਖ ਤੇ ਤਾਰਾ 229 ਤੇ ਝੱਗੀ ਬਾਸਕਟ ਤੇ ਥੱਲੇ ਚਾਦਰਾਂ ਬਾਹਰ ਜਾਂਦਾ ਐ ਪੱਛੜ ਲਾ ਕਾਲਾ ਸ਼ਾਹ ਨਾਗਰ ਦੀਆਂ ਗੱਲਾਂ ਬਾਹਰ ਨੂੰ ਦਿਖਦੀ ਬੈਂਕ ਦੀ ਕਾਪੀ ਤੇ ਵੀ ਪੈਸੇ ਸੀ ਨਾਮਾਂ ਸੀ ਬਚਣਾ ਨਿਹਾਲ ਨਿਆਲ ਸੁਦੇ ਸ਼ਰੀਕੇ ਚ ਹੂੰ ਤਰੀਕ ਵਾਸਤਾ ਸਰਦਾ ਚੰਗਾ ਇਹ ਗੱਲਾਂ ਕਰਦਾ ਕਰਦਾ ਨਿਹਾਸੋਂ ਪਿੰਡ ਆ ਬੜਿਆ ਕਾਲ ਕਰ ਬਚਨਾ ਪਿੰਡ ਕੁਦਰਤੀ ਬੈਠਾ ਸੀ ਮੂਹਰੇ ਬੈਠੇ ਕੇ ਚੱਲ ਕੁੰਝਿਆ ਵਕਤ ਮੁੜ ਕੇ ਨਹੀਂ ਹੱਥਾਂ ਨਾਲ ਮੇਰਾ ਵੀਰ ਲੰਗੋਆਲੀ ਚਾਹ ਪੀ ਕੇ ਚਾਦਰਾਂ ਤਾਣੀ ਬੇੜੇ ਸੁੱਤਾ ਪਿਆ ਸੀ ਜਦ ਤੀਮੀ ਦੀ ਗੱਲ ਸੁਣੀ ਸਿੱਧਾ ਹੋ ਕੇ ਬਹਿ ਗਿਆ ਹੈ ਕਿੱਥੇ ਦੀ ਉਹੋ ਉੱਤੀ ਮੀਂਹੀ ਮੀਂਹੀ ਹੁੰਦੀ ਐ ਕਿੱਥੇ ਮਤਲਬ ਉਹ ਪਾਸ਼ਾ ਵੀ ਬੋਲੇ ਕਿਤੇ ਫਾਹਾ ਦਾ ਖੜਾ ਕਰਦੀ ਮੈਂ ਕੁਝ ਕੁਝ ਕਰੇ ਮੈਂ ਤਾਂ ਕੱਲਾ ਹੀ ਬਾਈ ਚੰਗਾ ਕੰਧ ਦਾ ਰੌਲਾ ਉੱਚੀ ਕਰਨਾ ਮੈਂ ਤਾਂ ਆਰਾਮ ਨਾਲ ਤੜਕਾ ਲਾ ਕੇ ਮੁਰਗੇ ਨੂੰ ਖਾਣਾ ਫਾਹਾ ਨਾ ਖੜਾ ਓਏ ਬੋਲਦੀ ਐ ਸਾਰੀ ਗੱਲ ਕਰਦੀ ਐ ਬੋਲਦੀ ਐ 33 ਸਾਲ ਦੀ ਉਮਰ ਆ ਠਾੜੇ ਬੈਠੀ ਐ ਨਾਲੇ ਜ਼ਿੰਮੇਵਾਰੀ ਓੜ ਸਰਦਾਰ ਚਲ ਮੇਰਾ ਵੀਰ ਨਾਲੇ ਮੇਰਾ ਇੱਕ ਹੋਰ ਕੰਮ ਆ ਉਹ ਵੀ ਹੋਜੂ ਅਕਾਲ ਗਰਤੋ ਸੁਖਨੰਦ ਮੰਦਿਰ ਦੇ ਜਿਹੜੇ ਤੇ ਲਿੰਕ ਸੜਕਾਂ ਦੋਨੇ ਸਾਈਕਲਾਂ ਤੇ ਹੋ ਗਏ ਫਿੜਕੇ ਵੰਗੂ ਠਾਣੇ ਜਾ ਬੱਜੇ ਇਸੇ ਦੁਨਾਨ ਰੋਹਤ ਨੇ ਸੁਜਾਤਾ ਦੇ ਨਾਲ ਗੱਲਾਂ ਕਰਕੇ ਹੋਰ ਥਾਣੇਦਾਰਾਂ ਨੂੰ ਦੱਸਦੇ ਇਸਰੀ ਪੰਜਾਬ ਦੇ ਵਿੱਚ ਇਹ ਗੱਲ ਇਹਦੀ ਸਿਰੇ ਪਹੁੰਚਣੀ ਚਾਹੀਦੀ ਛੱਡਣਾ ਥਾਣੇਦਾਰ ਨੂੰ ਅੱਖ ਥਾਣੇਦਾਰ ਵੀ ਕਹਿੰਦੇ ਮੁੰਡੇ ਭੜਿਆ ਘੇਰਣਗੇ ਇੱਕ ਕਾਗਜ਼ ਤੋਂ ਥਾਣੇਦਾਰ ਨੇ ਮੁੰਸ਼ੀ ਤੋਂ ਸੁਜਾਤਾ ਦਾ ਬਿਆਨ ਲਿਖਵਾਤਾ ਜਾਤਨੀ ਅੰਗਰੇਜ਼ੀ ਅੱਖਰ ਜਬ ਨਾਉ ਲਿਖਿਆ ਕੋਲ ਬਚਨਾ ਕਹਿੰਦਾ ਉਹ ਜਾਤ ਅਗਰੇਜ਼ੀ ਦਿਖੀ ਜਾਂਦੀ ਐ ਮੈਂ ਕਹਣਾ ਉਹ ਤਾਂ ਹੀ ਕਿਹਾ ਤੈਨੂੰ ਤੂੰ ਪਿੰਡ ਬੈਠੇ ਭੰਨੀ ਜਾਂਦਾ ਸੀ ਬਾਹਰਲੇ ਦੇਸ਼ ਦੀ ਨਾ ਹੋਵੇ ਕਰਦੀ ਐ ਗਰਵਜਨ ਸਿੰਘ ਨੇ ਵੀ ਬਿਆਨ ਲਿਖਤਾ ਪੰਜਾਬੀ ਵਿੱਚ ਦਸਤਕ ਕਰਤੇ ਦੋਨੇ ਨੌਜਵਾਨ ਨੇ ਦੋਨੇ ਨੌਜਵਾਨਾਂ ਨੇ ਨਿਆਲਸੂ ਦੀ ਗਵਾਹੀ ਪਾ ਲਈ ਤੇ ਮਿੰਦਾ ਮੁੰਡੇ ਮੁੰਡੇ ਜਿਹੜੇ ਦੋ ਸੀ ਕੇਸ ਸੀ ਪਗਾਣਾ ਉਹਨੇ ਪੁੱਛ ਲਿਆ ਗਰਵਜਨ ਸਿੰਘ ਆ ਪਿੰਡ ਅਕਾਲਗੜ੍ਹ ਅਕਾਲਸਰ ਤੇ ਆਹ ਨੰਬਰਦਾਰ ਦੇ ਪਿੰਡੋਂ ਆ ਮੈਂ ਇਉਂ ਨਾ ਬਾਲਾ ਹਾਫ ਮੇਰਾ ਪੁੱਛੋ ਨੌਂ ਹੈ ਪਿੰਡ 'ਚ ਛੜਿਆ ਤਾਂ ਫੇਰ ਵੀ ਕੀ ਹੈ ਤੁਰਨ ਲੱਗੇ ਹੋਰ ਖੁਸ਼ ਹੋ ਜਾਂਦਾ ਇਹਨੂੰ ਇਹਨੂੰ ਨਿਆਣਾ ਨਿਕਾ ਹੋਣ ਵਾਲਾ ਫੇਰ ਨਾ کہیں ਬਈ ਹਾਂਜੀ ਬਚਨੇ ਨੇ ਸਾਈਕਲ ਤੋਂ ਲੱਤ ਲਾ ਲਈ ਜਾਂ ਸਾਈਕਲ ਤੋਂ ਲੱਤ ਰਾਦੀ ਸਜਾਤਾ ਦੇਖਣ ਲੱਗੀ ਉਹਦੇ ਵੱਲ ਰੋਹਤ ਤੇ ਨੰਬਰਦਾਰ ਵੀ ਗਿਆ ਵੀ ਆ ਤਾਂ ਕੀ ਤੇ ਲੱਗੇ ਖੁਸ਼ੀ ਦੀ ਬਾਤ ਹੋਈ ਭਾਈ ਆ ਮੈਂ ਬਗਾਲ ਥੇਕੇ ਇੱਕ ਤਾਂ ਬੱਚਾ ਆਪ ਨਾਲ ਬਾੜੀ ਏਸ਼ਕੇ ਜੀ ਲੈ ਹੁਣ ਆ ਬੋਲਦਾ ਤੂੰ ਰਹਿਣ ਦੇ ਗੱਲ ਸੁਣ ਅਨੰਦਾਰ ਜੀ ਬਿਠਾਓ ਪਿੱਛੇ ਸਾਡੇ ਸਪਾਹੀਆਂ ਦੇ ਲੱड्डੂ ਨੰਬਰਦਾਰ ਉਹ ਲੱड्डੂ ਵੀ لےਉਣਾ ਹੁਣੇ ਹੀ ਦੇ ਸਾਰਾ ਕੁਛ ਨੰਬਰਦਾਰ ਦਾ ਇੰਤਜ਼ਾਮ ਕਰਕੇ ਪੈਸੇ ਗਿਣ ਕੇ ਮੁਰਸ਼ੀ ਨੂੰ ਦੇ ਸਾਈਕਲ ਮਗਰ ਸਜਾਤਾ ਨੰਬਰਦਾਰ ਬੰਦਾ ਸਖਾ ਮੰਡੀ ਚੰਗ ਸਿਆਲ ਬਣ ਉੱਠੀ ਸੀ ਬਚਨੇ ਦੇ ਆ ਸਾਈਕਲ ਡਾਕ ਬਣਿਆ ਜਾਂਦਾ ਸੀ ਤੇ ਮਨ ਚ ਬਚਨੇ ਦੀ ਕਹਾਣੀ ਇੱਕੇ ਸੀ ਸ਼ੁਕਰ ਆ ਜੜਾਂ ਹੈ ਬਈ ਇਹੋਂ ਗੱਲਾਂ ਕਰਦਾ ਜਾਂਦਾ ਸੀ ਮਹਮਦ ਸਲੀਕ ਦਾ ਇੱਕ ਗੀ ਅਣਖੀ ਜੀ ਦੀ ਕਹਾਣੀ ਤੁਹਾਡੇ ਸਾਹਮਣੇ ਕੀਤੀ ਹੈ ਇਹ ਜਿਹੜਾ ਅਸਰ ਪਿੰਡਾਂ ਦੇ ਵਿੱਚ ਇਹ ਪਿੰਡਾਂ ਦੇ ਅੜਦੜੀ ਤੁਰਦੀ ਫਿਰਦੀ ਗੱਲ ਅਣਖੀ ਜੀ ਨੇ ਬਹੁਤ ਲਿਖੀ ਹੈ ਤੇ ਬੜੀ ਬੇਬਾਕੀ ਨਾਲ ਬੰਗਾਲੀ ਮੈਂ ਫਿੱਟ ਕਰਤੀ ਵਿੱਚ ਰੌਸ਼ਕ ਬਣਾਤੀ ਹੋਰ ਪਿੰਡ ਦੀ ਸੱਤ ਦੇ ਵਿੱਚ ਕਿਸੇ ਵੀ ਵਿਸ਼ੇ ਤੇ ਡਾਂਡੀ ਬੰਕਾ ਜੀ ਕਰੋ ਫੋਨ ਹੁਣ ਤੇ ਸਰਪ੍ਰੋਪ ਜੋਪਾਲ ਸਿੰਘ ਜੀ ਤੁਹਾਡੀ ਗੱਲ ਵਿੱਚ ਵੀ ਫੋਨ ਪਿੰਡ ਦੀ ਸੱਤ ਮੇਰਾ ਖੇਤ ਦੀਆਂ ਗੱਲਾਂ ਬਹੁਤ ਪੰਜਾਬ ਦਾ ਮੈਂ ਰੰਗ ਛੋਹਿਆ ਛੋਹਿਆ ਇਹ ਹੁਣ ਉਸੂੰ ਮੈਂ ਫੇਰ ਸ਼ੁਰੂ ਕਰਾਂਗਾ ਮੈਂ ਚਾਹੁੰਦਾ ਕਿ ਆ ਸੈਗਮੈਂਟ ਮਹੀਨਾ ਖੰਡ ਤੁਸੀਂ ਕਰੋ ਕਿਸੇ ਵਿਸ਼ੇ ਤੇ ਵੀ ਗੱਲ ਕਰੋ ਕੁਝ ਵੀ ਤੁਹਾਡਾ ਵਿਸ਼ਾ ਹੋਵੇ ਪੰਜਾਬ ਨਾਲ ਸੰਬੰਧਤ ਪੰਜਾਬ ਦਾ ਸੱਭਿਆਚਾਰ ਪੰਜਾਬ ਦੇ ਪਿੰਡ ਪੰਜਾਬ ਦੀਆਂ ਸੱਤਾਂ ਪੰਜਾਬ ਦੀ ਰਾਜਨੀਤੀ ਪੰਜਾਬ ਦੇ ਗਾਉਣ ਵਾਲੇ ਪੰਜਾਬ ਦੇ ਲੋਕ ਪੰਜਾਬਣ ਸਰਦਾਰਾਂ ਸਰਦਾਰਾਂ ਨਾਲ ਦਾ ਦੀ ਗੱਲ ਚਾਚੇ ਤਾਏ ਛੜਿਆਂ ਦੀ ਗੱਲ ਬਲਦਾਂ ਘੋੜੀਆਂ ਦੀ ਗੱਲ ਤੇ ਰਫਲਾਂ ਦੀ ਗੱਲ ਸਈ ਨਰਫਈ 12 ਬੋਰ 32 ਬੋਰ ਦੇ ਮੌਜਰਾ ਦੀ ਗੱਲ 455 ਬੋਰ ਦੀ ਕੋਈ ਵੀ ਗੱਲ ਤੁਸੀਂ ਕੁਝ ਵੀ ਕੁਝ ਕਹਿਣਾ ਚਾਹ ਹੋ ਕਰੋ ਚਾਦਰਾਂ ਦੀ ਓਥਿਆਂ ਦੀ ਗੱਲ ਦਸਤਾਰ ਦੀ ਜੀਰਿਆਂ ਦੀ ਸਮੋਸੇ ਪਰਨੇ ਗਮਸ਼ਿਆਂ ਦੀ ਗੱਲ ਬਾਸਕਟਾਂ ਦੀ ਗੱਲ ਕਲੀਆਂ ਵਾਲੇ ਕੁਰਤੇਆਂ ਦੀਆਂ ਗੱਲ ਤੇ ਮੋਰ ਕੁਗਲੀਆਂ ਦੀ ਗੱਲ ਮੋਤੀਏ ਦੀ ਗੱਲ ਤੇ ਮੋਤੀਆ ਰੰਗੀ ਦਸਤਾਰ ਦੀ ਗੱਲ ਜਿਹੜੀ ਗੱਲ ਤੁਹਾਨੂੰ ਪੰਜਾਬ ਦੀ ਵਧੀਆ ਲੱਗਦੀ ਮੇਲਿਆਂ ਦੀ ਗੱਲ ਬੜਦਾਂ ਦੀ ਗੱਲ ਗੱਡੀਆਂ ਦੀ ਗੱਲ ਠੋਕਾਂ ਦੀ ਗੱਲ ਹਲਟਾਂ ਦੀ ਗੱਲ ਨੱਚਦੀਆਂ ਘੋੜੀਆਂ ਦੀ ਗੱਲ ਪੰਜਾਬ ਦੇ ਗੁਰਤਾ ਮਾਂ ਦੀ ਗੁਰਾਂ ਦੀ ਧਰਤੀ ਦੀ ਗੱਲ ਕੁਝ ਵੀ ਗੱਲ ਜਿਹੜੀ ਪੰਜਾਬ ਦੀ ਵਧੀਆ ਲੱਗੇ ਕਰੋ ਖਬਰਾਂ ਕਵਰ ਕਰਤਾ ਪਰ ਅੱਜ ਸੋਚਦੇ ਸੀ ਜਦੋਂ ਡੋਨਲਡ ਟਰੰਪ ਪਹੁੰਚ ਆਕਦਾ ਪਹਿਲਾਂ ਤੋਂ ਕਰਦੇ ਸੀ ਬੰਦੇ ਨੂੰ ਤਾਂ ਵੀ ਜਿਵੇਂ ਚੱਲ ਹੈਗਾ ਉਵੇਂ ਬੋਲਦਾ ਅੱਜ ਹੈਲਰੀ ਦਾ ਸੋਚਦੇ ਸੀ ਦੇਖ ਕੇ ਵੀ ਕਿਤੇ ਦੱਸ ਕਿਵੇਂ ਬੈਠੀ ਕਿਵੇਂ ਸੋਚਦੀ ਉਹ ਵੀ ਲਾਸਟ ਵਕਤ ਸੀ ਮੇਰਾ ਵੀ ਸ਼ਾਇਦ ਬਾਣੀ ਜਾਂਦੀ ਮੈਂ ਵੀ ਹੁਣ ਤਾਂ ਗਿਆ ਕੰਮ ਉਹ ਬਹੁਤ ਤਕਤੀ ਸੀ ਉਦੋਂ ਬਣਨ ਵੀ ਅੱਜ ਬਹੁਤ ਨਹੀਂ ਸਕਦੀ ਜ਼ਿੰਦਗੀ 'ਚ ਲਾਸਟ ਤੱਕ ਤੇ ਇੱਕ ਉਹਨੂੰ ਵੀਕ ਬਹੁਤ ਕਰ ਦੇਣਾ ਉਹ 'ਚ ਮਾਰਕ ਤੇ ਉਹ ਹਾਸਾ ਹੁਣ ਦੇਖਣ ਵਾਲਾ ਸੀ ਜਿਹੜਾ ਉਦੋਂ ਕੱਚਾ ਹਾਸਾ ਹੱਸਦੀ ਸੀ ਤੇ ਐਵੇਂ ਹੁਣ ਪੰਜਾਬ ਤੇ ਨਜ਼ਰਾਂ ਵੀ ਮਹਾਰਾਜ ਕਿਰਪਾ ਕਰਦੇ ਤੇ ਥੈਂਕ ਯੂ ਗੱਲ ਸਾਹਿਬ ਇੰਨੇ ਕਹਿਣਾ ਦਾ ਸੀ ਹਾਂਜੀ ਪਪੂਲਰ ਬੋਰਡ ਹੈਲਰੀ ਨੂੰ ਵੱਧ ਪਈ ਡੋਨਲਡ ਟਰੰਪ ਤੋਂ ਪਰ ਇਲੈਕਟਰੋਲੋਟ ਜਿਹੜੇ ਇਲੈਕਟਰਲ ਕਾਲਜ ਸੀ ਉਹਦੇ ਵਿੱਚ ਹਾਰ ਗਏ ਜਿਹੜੇ ਬੰਦੇ ਚੁਣ ਕੇ ਭੇਜਣੇ ਜਿਹੜੇ ਪੈਂਚ ਭੇਜੇ ਐ ਉਹ ਪੈਂਚ ਜਿਹੜੇ ਹਾਰ ਗਏ ਉਹਦੇ ਕੱਚਾ ਹਾਸਾ ਰਾਜਵੀਰ ਸਿੰਘ ਨੇ ਕਿਹਾ ਕੱਚੇ ਹੱਡ ਕਹਿੰਦੇ ਚੜਦੀ ਬਰੇਖ ਸੋ 16 17 ਸਾਲ ਦੇ ਮੁੰਡੇ ਜੇ 6 ਫੁੱਟ ਦੇ ਹੋ ਜਾਂਦੇ ਉਹਨਾਂ ਨੂੰ ਦਰਵਾਜ਼ੇ ਬੈਠੇ ਬੰਦੇ ਕਹਿੰਦੇ ਕੱਚੇ ਹੱਟ ਐਵੇਂ ਪਿਆ ਜਾਨ ਨਹੀਂ ਪਈ ਹਲੇ ਮੜ ਜੀ ਬਾੰਕ ਖਿੱਚ ਦੇਗਾ ਹੱਡੀ ਟੁੱਟ ਜੂ ਓਏ ਆ ਮੱਲਾ ਕਿਨਾਂ ਤੂੰ ਫਿਰ ਉਹਨੂੰ ਸੱਦ ਕੇ ਪੁੱਛ ਫਲਾਣੇ ਦਾ ਜੀ ਛਿੰਗਾਰੇ ਕੇ ਬਾਪੂ ਨੂੰ ਮੈਂ ਕਿਹਾ ਦੁੱਧ ਵਧਾਉਣ ਤੇਰਾ ਐਵੇਂ ਨਾ ਉੱਥੇ ਦੋਦੀ ਦੇ ਪਾਈ ਜਾਣ ਦੁੱਧ ਕੱਚਾ ਹਲੇ ਹੱਡਾਂ ਦਾ ਵੱਢ ਕੇ ਲੰਮਾ ਹੋ ਗਿਆ ਸਰੀਰ ਭਾਰਾ ਆਪਣਾ ਫਿਰ ਸੋਹਣੇ ਜੇ ਸਰੀਰ ਭਾਰੀ ਹੋਵੇ ਪ੍ਰਭ ਜੀ ਪਾਲ ਸਿੰਘ ਜੀ ਲਾਈਨ ਨੰਬਰ 3 ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਪਹਿਲਾਂ ਤਾਂ ਸਾਹਿਬ ਵਾਲੀ ਗੱਲ ਕਰਦੇ ਸੀ ਦੇਖੋ ਆਪਾਂ ਜਿੱਦਾ ਦੇਖਦੇ ਆ ਉਹਨੇ ਆਪਣਾ ਬਿਜ਼ਨਸ ਰਨ ਕੀਤਾ ਉਹ ਪ੍ਰਾਈਵੇਟ ਬਿਜ਼ਨਸ ਰਨ ਕਰਦੇ ਸੀ ਉਹਦੇ ਵਿੱਚ ਜੋ ਡਿਸੀਜਨ ਲੈਂਦੇ ਸੀ ਉਹਦਾ ਜੋ ਵੀ ਨੈਗੇਟਿਵ ਪੋਜ਼ੀਟਿਵ ਇਫੈਕਟ ਹੈ ਕਿੱਦਾ ਉਹਨਾਂ ਲੋਕ ਉਹਨਾਂ ਨਾਲ ਡੀਲ ਕਰਦੇ ਸੀ ਉਹਨਾਂ ਤੇ ਪੈਂਦਾ ਸੀ ਹੁਣ ਉਹ ਪਬਲਿਕ ਜਿਹੜਾ ਹੈਗੇ ਆ ਲੀਡਰ ਹੈਗੇ ਆ ਪਬਲਿਕ ਦੇ ਲੀਡਰ ਹੈ ਹੁਣ ਜੋ ਵੀ ਉਹਨੇ ਕਰਨਾ ਹੈਗਾ तकरीबन ਸਾਰਿਆਂ ਤੋਂ ਸਟਰੋਂਗ ਇੱਕ ਦੇਸ਼ ਹੈਗਾ ਆ ਅਮਰੀਕਾ ਦੇ ਉਹਦੀ ਉਹੋ ਦੇ ਜਾ ਕੇ ਨਾ ਲੀਡਰਸ਼ਿਪ ਕਰ ਰਹਾ ਜੇ ਨੇ ਹਰ ਇੱਕ ਥਾਂ ਜਾ ਕੇ ਲਾਟਾ ਡਾਉਣੀ ਆ ਤੇ ਜਿਹੜੇ ਜਿਸ ਤਰ੍ਹਾਂ ਨਾ ਇਹੋ ਕਹਿ ਰਹੇ ਉਸੇ ਤਰ੍ਹਾਂ ਕੀਤਾ ਬਹੁਤ ਗਲਤ ਗੱਲ ਹੋ ਏਦਾਂ ਤੁਸੀਂ ਲੋਕਾਂ ਨਾਲ ਜਿਹੜੇ ਦੁਨੀਆ 'ਚ ਸ਼ਾਂਤੀ ਬਣਾਉਣੀ ਆ ਲੋਕਾਂ ਨਾਲ ਸਮਝੌਤੇ ਕਰਨੇ ਨਾ ਕਿ ਆਪਣੇ ਫੈਸਲੇ ਲੋਕਾਂ ਦੇ ਸੋਚ ਤੋਂ ਚਣਿਆ ਇਹਨਾਂ ਦਾ ਰਵਈਆ ਹਰ ਇੱਕ ਸਦਾ ਹੋ ਰਿਹਾ ਕਿ ਜਿョਕੈਨਾਂ ਲੋਕਾਂ ਦੇ ਪੈਸੇ ਤੋਂ ਸੋਚਿਆ ਹਮਨ ਤੋਂ ਹੀ ਗੱਲ ਦੱਸੀ ਸੀ ਇਹਨਾਂ ਨੇ ਸੇ ਕਦੀ ਰੰਗਦਾਰ ਬੰਦੇ ਨੂੰ ਆਪਣੀਆਂ ਬਿਲਡਿੰਗਾਂ 'ਚ ਰਹਿਣ ਵੀ ਨਹੀਂ ਦਿੱਤਾ ਸੀ ਤੇ ਅਸੀਂ ਕਹਿੰਦੇ ਹਾਂ ਜੀ ਬਹੁਤ ਹੋ ਗਿਆ ਸਾਨੂੰ ਪੈਸੇ ਬਹੁਤ ਮਿਲੋਗੇ ਤੇਲ ਦਾ ਭਾਅ ਵਧੂਗਾ ਆਪਣੀ ਜੇਬ ਦਾ ਸੋਚਦੇ ਸੋਚਦੇ ਕੀ ਗੱਲ ਆ ਅਸੀਂ ਜਿョਕੈਨਾਂ ਉਹ ਕਹਿੰਦੇ ਪੈਸੇ ਤਾਂ ਕੰਜਰਾਂ ਕੋ ਵੀ ਬਹੁਤ ਹੁੰਦੇ ਆ ਸਾਧਿਆ ਲਈ ਨਹੀਂ ਆਤੀ ਦੁਜਾਤਨਾ ਇੱਕ ਆਜ਼ਾਦ ਜ਼ਿੰਦਗੀ ਜੀਣਾ ਚਾਹੁੰਦੇ ਆ ਅਸੀਂ ਤੇ ਕਿਸੇ ਸਿਧਾਂਤਾਂ ਵਾਲੇ ਆ ਤੁਹਾਨੂੰ ਪਰਵਾਹ ਕਿਸੇ ਦੀ ਨਹੀਂ ਹਰਾਨੀ ਹੁੰਦੀ ਹੈ ਜਦੋਂ ਇਹੋ ਜਿਹੀਆਂ ਗੱਲਾਂ ਸੁਣਦੇ ਹੁਣ ਵੀ ਪੰਜਾਬ ਦੇ ਹਲੈਕਸ਼ਨ ਹੋ ਰਿਹਾ ਅਸੀਂ ਸਿਰਫ ਦੇਖ ਰਹੇ ਆ ਕਿ ਅਸੀਂ ਔਖੇ ਹੋ ਜਵਾਂਗੇ ਸਾਡੇ ਗੁਲਾਮੀ ਰਹਿੰਦੀ ਚਾਹੇ ਨਹੀਂ ਰਹਿੰਦੀ ਕਦੇ ਵੀ ਅਸੀਂ ਆਪਣੇ ਦੁਜਾਤਨਾ ਸਾਡੇ ਮਨਾਂ 'ਚ ਇੰਨੀ ਗੁਲਾਮੀ ਬਸ ਗਈ ਆ ਕਿ ਤੁਹਾਨੂੰ ਆਜ਼ਾਦੀ ਦਾ ਅਹਿਸਾਸ ਇੰਨੇ ਆਜ਼ਾਦੀ ਤੇ ਕੀ ਹੁੰਦਾ ਇੱਥੇ ਆਏ ਆ ਇਹ ਤੇ ਹਾਰੇ ਵਾਲੇ ਜੇ ਆਪ ਨਹੀਂ ਤਾਂ ਦੇਖ ਲਓ ਅਸੀਂ ਸਾਡੀ ਮਜਬੂਰੀ ਆ ਜਿਹੜੀ ਪਹਿਲੀ ਜਨਰੇਸ਼ਨ ਹੁੰਨੇ ਆ ਅਸੀਂ ਦੁਜਾ ਕੇ ਨਾਲ ਲਗਾਤਾਰ ਕੰਮ ਘੱਟ ਜੇ ਜ਼ਿਆਦਾ ਨਹੀਂ ਮਹੀਨੇ ਉਹ ਛੁੱਟੀਆਂ ਕਰਦੇ ਆ ਇੰਜੋਏ ਕਰਦੇ ਆ ਜਦੋਂ ਕਿ ਸੋਹਣਾ ਦਿਨ ਲੱਗਦਾ ਤੁਮਾਂ ਦੀ ਬੀਕ ਦਾ ਦੁਜਾ ਕੇ ਨਾਲ ਨਾ ਹੋਵੇ ਕਿਸ਼ਤੀ ਹੁੰਦੀ ਤੁਮਾਂ ਦੀ ਹੋਵੇ ਉਹ ਆਪਣੇ ਲੇਖ ਨੂ ਤੱਲੇ ਹੁੰਦੇ ਆ ਸਾਡੀ ਸੋਚ ਕਿੱਧਰ ਅਸੀਂ ਆਜ਼ਾਦ ਤੇ ਆ ਦੇ ਬੈਠੇ ਆ ਥੋੜਾ ਜਿਹਾ ਆਜ਼ਾਦ ਸੋਚ ਦੇ ਮਾਲਕ ਹੋਈਏ ਵਾਈਗੋਦੀ ਤਾਲ ਤਾਂ ਵਾਈਗੋਦੀ ਭੱਲੇ ਜੀ ਬਿਲਕੁਲ ਜੀ ਇਹਦਾ ਠੀਕ ਹੈ ਕਿ ਸਾਡਾ ਉਹ ਜਿਹਾ ਹੀ ਚਾਹੀਦਾ ਜਿਹੜਾ ਸਾਡਾ ਆਪਣੇ ਲਈ ਹੋਵੇ ਤੇ ਉਹੀ ਬਾਹਰ ਲਈ ਸੰਬਿਧਾਰ ਗੈਂਡ ਕੰਪਨੀ ਵਕੀਲਾਂ ਦੀ ਵੱਡੀ ਕੰਪਨੀ 600 464 61 31 ਸਦੀ ਤੇ ਅਬਸਕੋਰ ਚ ਦੋ ਦਫਤਰਾ ICBC ਦੇ ਕੇਸ ਜਿੱਤਦੇ ਆ ਤੇ ਆ ਨਾਲ ਸ਼ੁਰੂ ਕੀਤੀ ਸੀ ਮਨੀਕ ਨਾਰਿੰਗ ਤੇ ਰਾਜਤਾ ਮੀਨੇ ਕੰਪਨੀ 6 ਹੋਰ ਗਹਿ ਗੱਡਵੇਂ ਵਕੀਲਾਂ ਨਾਲ ਤੇ ਨਾਲ ਹੋਰ ਅਮਲਾ ਫੈਲਾ 6048646131 ਹੈਰ ਮੋਟਰਸ 64506 1555 ਹੈਰ ਮੋਟਰਸ ਤੇ ਅਜੀਤ ਸਿੰਘ ਹੈਰ 35 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ 22 ਵੱਧੇ ਗਏ 30 ਸਾਲ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਜਦੋਂ ਫਿਰ ਤਾਂ 7 ਸਾਲ ਹੋ ਗਏ 37 ਸਾਲੇ ਹੋ ਗਏ ਗੱਡੀਆਂ ਹੀ ਗੱਡੀਆਂ ਵੇਚਤੀਆਂ ਘਰ ਘਰ ਗੱਡੀਆਂ ਵੇਚੀਆਂ ਹੋਇਆਂ ਖੜੀਆਂ ਹੈਰ ਮੋਟਰਸ ਦੀਆਂ ਸਟਿੱਕਰ ਵਾਲੀਆਂ ਗੱਡੀਆਂ ਜਿਹੜੀਆਂ ਤੁਸੀਂ ਹਰ ਦੂਜੀ ਗੱਡੀ ਵੇਖਦੇ ਹੋ ਵਰਜੀਤ ਸਿੰਘ ਹੈਰ ਇਨ ਹਾਊਸ ਫਾਈਨਾਂਸਿੰਗ ਕਿਤੋਂ ਵੀ ਕਾਰਨਾ ਮਿਲੇ ਤਾਂ ਅਜੀਤ ਸਿੰਘ ਸਿੰਘ ਦੀ ਲਾਈਨ ਨੰਬਰ 2 ਅੰਜੀਤ ਅਹਿਰਜੀਤ ਸਿੰਘ ਜੀ ਸਤਿਕਾਰ ਸਭ ਆਪ ਜੀ ਨੂੰ ਤੇ ਆਪ ਜੀ ਦੇ ਸਟੋਰੀਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਸਭਾ ਦੇਣਾ ਜੀ ਦੇਖੋ ਕਿ ਆਪ ਜੀ ਜਨੈਟ ਸਟੇਟ ਦੀ ਤੌਰ ਪੱਖ ਦੀ ਗੱਲ ਕਰ ਰਹਾ ਪੰਜਾਬ ਦੀ ਖਾਸ ਕਰਕੇ ਇਲੈਕਸ਼ਨ ਹੋ ਰਹੀਆਂ ਵਾ ਕਿ ਮੈਂ ਕਾਫੀ YouTube ਦੇ ਉੱਤੇ ਵੀਡੀਓਜ਼ ਪਾਈਆਂ ਹੋਈਆਂ ਵਾ ਜਿਹੜੇ ਮੈਂਬਰ ਸਹਿਬਾਨ ਵਾ ਜਾਂ ਸਟਾਰ ਕੈਂਡੀਡੇਟ ਖੜੇ ਆ ਸਾਰੇ ਦੇ ਸਾਰੇ ਇੱਕੋ ਹੀ ਗੱਲ ਕਹਿ ਰਹੇ ਆ ਤੰਨ ਦੇਾਂਗੇ ਚੱਕ ਦੇਾਂਗੇ ਅੰਦਰ ਬੰਦ ਕਰ ਦੇਾਂਗੇ ਪਹਿਲਾ ਨੰਬਰ ਉਹਦਾ ਦੂਜਾ ਨੰਬਰ ਉਹਦਾ ਤੀਜਾ ਨੰਬਰ ਉਹਦਾ ਇਹਦੇ ਨਾਲ ਕਿਤੇ ਨੂੰ ਕੀ ਭਾਪਾੜਾ ਮੰਗਵਦਾ ਉਹਨੂੰ ਚਾਹ ਡੋਕੇ ਮਿਲਣੇ ਜੇਕਰ ਉਹ ਅੰਦਰ ਵੀ ਕਰਦਾ ਪੰਜਾਬ ਦੀ ਜਿਹੜੀ ਜਨਤਾ ਦਾ ਉਹਨੂੰ ਸੁਖ ਹੁਸੁਦਾ ਕੀ ਮਿਲਣੀਏ ਕਿਸੇ ਦੇ ਅੰਦਰ ਹੋਣ ਦੇ ਨਾਲ ਕੁਝ ਵੀ ਨਾ ਮਿਲੂਗਾ ਇਸ ਕਰਕੇ ਜਿਹੜੀ ਉੱਥੇ ਸਿਆਸਤੋ ਜਾਂ ਸਟਾਰ ਕੈਂਡੀਡੇਟ ਆ ਜਾਂ ਪਾਰਟੀ ਦੇ ਪ੍ਰਧਾਨਵਾ ਜਾਂ ਮੁਖੀਏ ਆ ਉਹਨਾਂ ਨੂੰ ਮੈਂਡੇਟ ਦੇਣੇ ਚਾਹੀਦੇ ਆ ਜਿਹੜੇ ਆ ਪੰਜਾਬ ਦੇ ਵੋਟਰ ਸਹਿਬਾਨਾ ਵੇ ਤੁਹਾਨੂੰ ਸਹੂਲਤਾਂ ਸੀ ਕਿਹੜੀਆਂ ਦੇਣੀਆਂ ਸਹੂਲਤਾਂ ਤੋਂ ਤੋਂ ਉਹ ਭਾਈ ਆਪ ਸਖੜੇ ਰੱਖ ਰਹੇ ਇਹਨਾਂ ਲੋਕਾਂ ਨੂੰ ਹਰਜੀਤ ਸਿੰਘ ਜੀ ਕੋਈ ਮੈਂਡੇਟ ਕੋਈ ਚੋਣ ਮੈਨੀਫੈਸਟੋ ਜਿਹੜਾ ਉਹਨੂੰ ਕੋਈ ਪੁੱਛ ਨਹੀਂ ਰਿਹਾ ਤੇ ਪਿਛਲੀ ਅਕਾਲੀ ਸਰਕਾਰ ਨੇ 50 ਸਾਲ ਆਲਾ ਚੋਣ ਮੈਨੀਫੈਸਟੋ ਲਾਗੂ ਕੀਤਾ ਤੁਹਾਡੇ ਦੇ ਤੁਹਾਨੂੰ ਕਿਹੜੀਆਂ ਸੁੱਖ ਸਹੂਲਤਾਂ ਮੇਰੀਆਂ ਕੋਈ ਨਹੀਂ ਨਾ ਰਹਿ ਰਿਆ ਸਿਰਫ ਤੇ ਸਿਰਫ ਆਪੋਤਾ ਪਈ ਹੋਈ ਆ ਉਹੀ ਕਿਸੇ ਕੰਮ ਦੀ ਗੱਲ ਨਹੀਂ ਟੁੱਟ ਕੇ ਹਾਸੇ ਮਖੌਲ ਐ ਚੱਲ ਰਿਹਾ ਦੂਜੇ ਪਾਰਟੀ ਵਾਲੇ ਇੱਕੋ ਮੈਂ ਹਾਸੇ ਵਾਲੀ ਗੱਲ ਕਰਦਾ ਉਹ ਤੇ ਮੇਰੇ ਮਨ ਚ ਆਈ ਸੀ ਕਿ ਜਿਦਾ ਆਪਾਂ ਅੱਗੇ ਨਾ ਆਪਣੇ ਕੇ ਗਾਮ ਮਹਿ ਦਾ ਕੋ ਕੱਟੂ ਬਸ਼ੜੂ ਜੰਮ ਦਾ ਚੜਾਈ ਚੱਲ ਜਾਵੇ ਸੰਸਾਰ ਤੋਂ ਤੇ ਮੁੜ ਕੇ ਮਿਲਦੀ ਨਹੀਂ ਹੁੰਦੀ ਸੀਗੇ ਤੇ ਅਸੀਂ ਉਹਦਾ ਖਲ ਲਾ ਕੇ ਜੋ ਤੂੜੀ ਭਰ ਕੇ ਉਹ ਖੜਾ ਕਰ ਦਿੰਦੇ ਹੁੰਦੇ ਸੀ ਵੀ ਉਹਨੂੰ ਦੇਖ ਕੇ ਹੀ ਤੇ ਦੁੱਧ ਲਾ ਦਿੰਦੀ ਸੀ ਤੇ ਲੋਕੀ ਚਾਹ ਪਾਣੀ ਬਣਾ ਲੈਂਦੇ ਸੀਗੇ ਇਹ ਹਾਲ ਹੋਇਆ ਲੀਟਰਾਂ ਨੂੰ ਜਿਹੜੇ ਨਕੰਮੇ ਲੀਟਰ ਆ ਜਿਹਨਾਂ ਨੂੰ ਕੱਖ ਨਹੀਂ ਆਤ ਜਾ ਐਸਾ ਸੰਸਾਰ ਤੋਂ ਜੱਤ ਮਜ਼ਾ ਰਹਾ ਆ ਉਹਨਾਂ ਦਾ ਨਾਲ ਆ ਲੋਕਾਂ ਨੂੰ ਗੋਠਾ ਮੰਗਦੇ ਆ ਵੀ ਲੋਕਾਂ ਕੋਲੋਂ ਮੇਰੇ ਖਿਆਲ ਅਨੁਸਾਰ ਤਾਂ ਜਿਹੜੇ ਉੱਥੇ ਦੇ ਵੋਟਰ ਸਾਹਿਬਾਨ ਉਹਨਾਂ ਨੂੰ ਪੁੱਛਣਾ ਚਾਹੀਦਾ ਲੋਕਾਂ ਨੂੰ ਤੇ ਸਾਡੇ ਵਾਸਤੇ ਸਕੂਲ এডੂਕੇਸ਼ਨ ਹੈਲਥ ਕੇਅਰ ਜਾਂ ਜਿਹੜੇ ਹੋਰ ਆ ਐਮੇ ਐਕਸੀਡੈਂਟ ਹੁੰਦੇ ਆ ਸ਼ਰਾਬੀ ਡਰਾਈਵਰਾਂ ਨੂੰ ਕਿੱਦਾਂ ਨਾਤ ਪਾਈ ਜਾਵੇ ਕਿਉਂਕਿ ਸਟੇਟ ਦੇ ਮੁੱਦੇ ਆ ਔਰ ਰੋੜਾ ਦੇ ਗੱਡੀਆਂ ਵਿੱਚ ਖੜ ਜਾਂਦੀਆਂ ਬਗੈਰ ਲਾਈਟਾ ਤੋਂ ਪਿੱਛੇ ਛਾਪੇ ਪਏ ਹੁੰਦੇ ਉਹਨਾਂ ਦਾ ਠੀਕ ਕਰੋਗੇ ਮਤਲਬ ਕਿ ਇੱਥੇ ਵੱਡੇ ਵੱਡੇ ਐਕਸੀਡੈਂਟ ਹੋ ਰਿਹਾ ਆ ਸੜਕਾਂ ਜ਼ਰੂਰ ਬਣ ਗਈਆਂ ਉਹ ਸੜਕਾਂ ਦੀ ਜਿਹੜੀ ਜੇ ਤਦਾਦੇ ਚ ਮੈਂ ਸਪੀਡ ਲਿਮਟ ਮੈਂ ਦੇ ਕਾਉਸ ਹੱਟ ਤੋਂ ਉੱਤੇ ਚੱਲਣ ਵਾਲੀਆਂ ਕਿਉਂ ਕਿ ਉਹਦੇ ਤੇ ਕੋਈ ਸੇਫਟੀ ਬੈਰੀਅਰ ਨਹੀਂ ਕੋਈ ਬਹੁਤ ਉਮਰੇ ਗੱਦਾ ਆ ਗਿਆ ਕੁਝ ਬੰਦਾ ਆ ਗਿਆ ਕੋਈ ਰੌਕ ਕਰਨ ਵਾਲਾ ਆ ਇਹਨਾਂ ਚੀਜ਼ਾਂ ਵਾਸਤੇ ਕੋਈ ਨਹੀਂ ਪੁੱਛ ਰਿਹਾ ਕਿ ਸਾਡੀ ਜਿਹੜੀ ਹੈ ਟ੍ਰੈਪ ਗਰੂਲਿੰਗ ਜਾਂ ਡਰਾਈਵਿੰਗ ਲਾਇਸੈਂਸ ਜਾਂ ਸਾਡੇ ਜਿਹੜੇ ਸ਼ਰਾਬੀ ਡਰਾਈਵਰ ਆ ਜਾਂ ਜਿਹੜੇ ਆ ਹੋਰ ਥਾਲੇ ਵਿਕਦੇ ਆ ਤਸੀਲਾ ਵਿਕਦੀਆਂ ਇਹਨਾਂ ਦਾ ਕੀ ਕਰੋਗੇ ਦੈਲ ਕਲੋਨੀ ਕਰ ਰਿਹਾ ਬਸ ਇੱਕੋ ਹੀ ਫੜ ਕੇ ਜੇਲ੍ਹ ਚ ਬੱਚੇ ਦੇ ਜਿੱਦਾਂ ਜੰਮੀ ਪਾਈ ਹੁੰਦੀ ਆ ਉਹ ਚੋਂ ਨਿਕਲਦਾ ਕੱਤ ਨਹੀਂ ਬੱਚਾ ਚੁੱਮੀ ਜਾਂਦਾ ਧੰਨਵਾਦ ਜੀ ਧੰਨਵਾਦ ਜੀ ਸ਼ਕਲ ਸਿੰਘ ਲਾਈਨ ਨੰਬਰ ਸ਼੍ਰੀ ਅਕਾਲ ਜੀ ਹਰੀ ਸਿੰਘ ਸਤਿ ਸ਼੍ਰੀ ਅਕਾਲ ਜੀ ਆਪਣਾ ਮੈਨੂੰ ਖੁੱਲ ਕੇ ਗੱਲ ਕਰ ਲਿਓ ਮੈਂ ਅਗਲੀ ਵਾਰੀ ਚਾਰ ਵਾਰੀ ਦਿੱਲੀ ਨੂੰ ਲੰਘਿਆ ਮੰਡੀ ਗੁਵਿੰਦਗੜ੍ਹ ਸੀ ਜਿਹੜੀ ਵੀ ਸੀ ਉੱਥੇ ਕੋਈ ਧੂਆਂ ਸੀ ਨਾ ਟਰੱਕ ਨਾ ਬੰਦਾ ਮੈਂ ਸਕ੍ਰੈਪ ਦੇਤੀ 2400 ਨੂੰ ਵਿਕੀ ਤੇ ਉੱਥੇ ਮੰਡੀ ਦੇ ਵਿੱਚ 2600 ਨੂੰ ਵਿਕਦੀ ਸੀ ਤੇ ਪਿਛਲੇ ਸਾਲ ਉਸ ਪੁਰਾਣੇ ਲੜਕੇ ਪਾਣੀ ਦੇਣੋਂ ਹਟ ਕੇ ਮੈਂ ਖਾ ਚੱਲ ਪੱਟ ਕੇ ਉੱਥੇ ਦੇਚੇ ਦਾ ਰੁਪਏ ਨੂੰ ਵਿਕੇ ਉਹ ਕਹਿੰਦੇ ਸਾਡੀ ਜਾਂਦੀ ਮੈਂ ਕਿਹਾ ਵੀ ਇਹ ਕੀ ਹੋ ਗਿਆ ਇੰਨੀ ਕਿਉਂ ਢੱਗ ਪੀ ਕੀ ਨਾ ਪਹਾੜਾ ਡਿੱਗਿਆ ਨਹੀਂ ਦਾ ਹਲੇ ਉਨਾ ਹੀ ਆ ਉਹ ਕਹਿੰਦੇ ਜੀ ਵੀ ਮੰਡੀ ਗਵਿੰਦਗੜ੍ਹ ਦਾ ਸਾਰੀ ਇੰਡਸਟਰੀ ਬੰਦਾ ਵਗੈਰਾ ਬੰਦੇ ਆ ਜਾਂ ਸੰਪ ਵਗੈਰਾ ਕੋਈ ਵੀ ਬਹੁਤ ਸਾਰਾ ਸਮਾਨ ਇੰਡੀਆ ਤੋਂ ਆਉਂਦਾ ਉਥੋਂ ਈਵਨ ਤੁਹਾਨੂੰ ਪਤਾ ਹੋਣਾ ਜਿਹੜਾ ਬ੍ਰੈੱਡ ਸੀਗਾ ਗੋਲਡਿੰਗ ਜੇ ਦਾ ਆ ਇਹਦਾ ਸਮਾਨ ਵੀ ਸਾਰਾ ਇੰਡੀਆ ਤੋਂ ਆਇਆ ਸੀ ਪਰ ਇਹਨੇ ਰਿਜੈਕਟ ਤੇ ਆ ਜਿਹੜੀ ਕੀ ਹੋਰ ਬਹੁਤ ਸਾਰੀ ਡੈਟ ਪਈ ਆ ਲੈਂਡ ਦੇ ਭਾਅ ਥੱਲੇ ਆ ਗਏ ਮੈਂ ਬਹੁਤ ਵਾਰੀ ਜਿਗਰ ਕੀਤਾ ਵੀ ਜਿਹੜੀਆਂ ਡਿਮੋਸਟਿਕ ਫਲਾਈਟਾਂ ਉਹਨਾਂ ਨੂੰ ਡਿਵੈਲਪ ਕਰਨਾ ਚਾਹੀਦਾ ਉਹਦੇ ਨਾਲ ਸਾਡੀ ਡਿਵੈਲਪਮੈਂਟ ਐਗਰੀਕਲਚਰ ਡੇਰੀ ਪੋਲਟਰੀ ਮੀਟ ਲੋਕਾਂ ਨੂੰ ਹਜ਼ਾਰਾਂ ਚੌਪਾਂ ਮਿਲਣਗੀਆਂ ਟਰਾਂਸਪੋਰਟ ਦੀਆਂ ਚੌਪਾਂ ਮਿਲਣਗੀਆਂ ਸਾਡੀ ਖੱਜਲਖਵਰੀ ਦਿੱਲੀ ਨੂੰ ਬਚ ਪੰਜਾਬ ਦੀ ਗਵਰਨਮੈਂਟ ਨੂੰ ਜਹਾਜਾਂ ਤੇ ਜਿਹੜਾ ਗੈਸ ਜਾਊਗਾ ਉਹਦਾ ਟੈਕਸ ਵੀ ਮਿਲੂਗਾ ਤੇ ਪੋਲੂਸ਼ਨ ਘਟੂਗਾ ਤੇ ਇਹ ਹੈਗਾ ਵੀ ਜਿਹੜਾ ਅਨੈਸੀਸਰੀ ਟ੍ਰੈਵਲ ਹਟੂਗੀ ਕਿਸੇ ਗੱਲ ਜਿਹੜੀ ਹੈਗੀ ਆ ਮੈਂ ਉਹ ਚੌਰਾ ਵੀ ਕੁਦਰਤੀ ਗੱਲ ਕਰਦੇ ਆ ਕਿ ਜਟਾ ਨੂੰ ਲਾਮਬੰਦ ਹੋਣਾ ਚਾਹੀਦਾ ਜਿਹੜੇ ਕੱਸੀ ਦੇ ਖਾਲਿਆ ਉਹ ਪ੍ਰੋਪਰ ਟੇਲਾਂ ਤੱਕ ਜਿਹੜੇ ਡੈੱਡ ਪਏ ਆ ਜਾਂ 10% ਚਲਦੇ ਆ ਜਾਂ ਬਾਕੀ ਦੇ ਪਏ ਆ ਸਰਕਾਰ ਸਬਸਿਡੀ ਦਿੰਦੀ ਆ ਪੂਰੀ ਨੱਪ ਕੇ ਕੱਸੀ ਦੇ ਖਾਲ ਆਪਦੇ ਹਰੇਕ ਖੇਤ ਤੱਕ ਪਹੁੰਚਦਾ ਕਰੋ ਪਾਣੀ ਹਰੇਕ ਖੇਤ ਨੂੰ ਪਾਣੀ ਲੱਗਾ ਹੋਇਆ ਅਸੀਂ ਸਰਕਾਰ ਦਊਗੀ ਪਾਣੀ ਤੇ ਉਹ ਬਾਕੀ ਹੈਗਾ ਜਿੰਨਾ ਰੇਨ ਵਾਟਰ ਆ ਸਾਡੇ ਕੋਲੇ 2 ਸਾਲ ਮੈਂ ਦੀਪ ਡਿੱਗ ਕਰਾ ਕੇ ਦੇਖਿਆ ਜੀ ਫੁੱਟ ਤੱਕ ਝੋੜ ਦੇ ਪਾਏ ਤੋਂ ਗਈ ਉਸ ਤੋਂ ਬਾਅਦ ਸਾਡੇ ਕੋਲੇ ਰਸਤਾ ਨਹੀਂ ਆਇਆ 430 ਤੋਂ ਲੈ ਕੇ 6 ਫੁੱਟ ਤੱਕ ਰੇਤਾ ਸੀਗਾ 30 ਫੁੱਟ ਦੀ ਡੱਗੀ ਆ ਜਿਹੜੀ ਉਹ ਅਗਲੇ 2 ਸਾਲਾਂ ਚ ਖਤਮ ਹੋ ਜਾਣੀਆਂ। ਉਸ ਤੋਂ ਬਾਅਦ ਪਾਣੀ ਹੈ ਫੁੱਟ ਤੇ ਜਨੇਰਪਿੰਡ ਦੇ ਵਿੱਚ ਜਨੇਸਕੋ ਨੇ ਬੋਰ ਕਰਾਇਆ ਸੀਗਾ। ਉਸ ਮੋਟਰ ਚਾਹੀਈ ਆ। ਨਾ ਕਿਸੇ ਕੋਲੇ ਪਾਵਰ ਆ, ਨਾ ਮੋਟਰ ਆ। ਕੇ ਪਾਣੀ ਕੱਢ ਸਕਦਾ ਜੇ ਤੁਸੀਂ ਕੱਢਣਾ ਖਾਲਿਆ। ਤੇ ਨਾ ਇਨੀ ਬਿਜਲੀ ਹੋਣੀ ਕੱਢਣ ਨੂੰ। ਇੰਪੋਸੀਬਲ ਲੋਕ ਡਰਾਉਟ ਮਰ ਜਾਣਗੇ। ਪਰ ਲੋਕਾਂ ਨੂੰ ਪਹਿਲਾਂ ਸੋਚਣਾ ਚਾਹੀਦਾ ਸਾਡੇ ਰਿਖੀ ਮੂਲੀ, ਸਾਡੇ ਬਜ਼ੁਰਗ, ਸਾਡੇ ਬਾਪੇ, ਸਾਡੇ ਗੁਰੂ ਸਾਹਿਬ ਤਲਾਬ ਕਿਉਂ ਖਰਵਾਉਂਦੇ ਸੀਗੇ? ਉਹ ਤਲਾਬ ਪੀਣ ਵਾਲੇ ਪਾਣੀ ਵਾਸਤੇ ਵਰਤੇ ਜਾਂਦੇ ਨੇ ਰੇਨ ਵਾਟਰ ਨੂੰ ਸਟੋਰ ਕਰਕੇ ਉਦੋਂ ਕੋ ਟਮਾਟਾ ਲਾ ਬੈਲ ਹੁੰਦਾ ਸੀ ਗੁਰੂ ਸਾਹਿਬ ਨੇ ਛੇਟਾ ਖੂਲਾਇਆ ਉਹ ਲੁਆਏ ਉਹ ਖੂਹ ਪੀਣ ਵਾਲੇ ਪਾਣੀ ਵਾਸਤੇ ਇਰੀਗੇਸ਼ਨ ਖੂਹ ਨਹੀਂ ਸੀ ਵਰਤੇ ਜਾਂਦੇ ਜੇ ਅਸੀਂ ਇਰੀਗੇਸ਼ਨ ਵਾਸਤੇ ਵਰਤਨੇ ਆ ਇਹ ਟਿਊਬਾਂ ਨੂੰ ਬੰਦ ਕਰਨਾ ਚਾਹੀਦਾ ਪੀਣ ਵਾਲੇ ਪਾਣੀ ਦੀ ਕਮੀ ਆ ਜਣੀ ਆ ਜਿੰਨਾ ਪਾਣੀ ਤੁਹਾਡੇ ਗਟਰਾ ਦਾ ਘਰੇ ਆਉਂਦਾ ਆ ਘਰੇ ਟੋਏ ਪਾਟੋ 20 20 ਫੁੱਟ ਡੂੰਘੇ ਪੱਕੇ ਕਰ ਲੋ ਸਾਰਾ ਰੇਨ ਵਾਟਰ ਡਿਸਟਿਲ ਵਾਟਰ ਨੂੰ ਸੇਵ ਕਰੋ ਇਹਨੂੰ ਇਰੀਗੇਸ਼ਨ ਵਾਸਤੇ ਵਰਤੋ ਉਹਨੂੰ ਪੀਣ ਵਾਸਤੇ ਵਰਤੋ ਸੈਨੀਟੇਸ਼ਨ ਵਾਸਤੇ ਵਰਤ ਜਿੰਨਾ ਘਰ ਤੋਂ ਸੈਨੀਟੇਸ਼ਨ ਦਾ ਪਾਣੀ ਆ ਤੁਹਾਡੇ ਛੱਪੜਾਂ ਤੇ ਜਾਂਦਾ ਉਹਨੂੰ ਰੀਸਾਈਕਲ ਕਰਕੇ ਫਾਰਮ ਵਾਲੇ ਵਿੱਚ ਪ੍ਰੋਪਰ ਪਾਈਪ ਲਗਾ ਕਰੋ ਇਹ ਲੋਕਾਂ ਨੇ ਬਚਣਾ ਮਹਾਰਾਸ਼ਟਰ ਦੇ ਵਿੱਚ ਜੇ ਏਕੜ ਦਾ ਖੇਤ ਆ ਆਪਣਾ 40 ਕਰਮਾ ਲੰਮਾ ਉਹਦੇ ਵਿੱਚੋਂ ਪਾਣੀ ਸਟੋਰ ਕਰਦੇ ਆ ਪੌਦਿਆਂ ਨੂੰ ਡ੍ਰਿਪਿੰਗ ਸਿਸਟਮ ਜਾਂ ਬਾਲਟਾਂ ਨਾਲ ਪਾਣੀ ਪਾ ਕੇ ਕ੍ਰੌਪ ਕਰਦੇ ਆ ਕਿਉਂਕਿ ਪਾਣੀ ਹੈ ਹੀ ਨਹੀਂ ਪੀਣ ਨੂੰ ਪਾਣੀ ਹੈ ਨਹੀਂ ਬੰਦੇ ਮਰਨਦੇ ਆ ਰੇਨਾਂ ਜਾਂਦੀਆਂ ਪਾਣੀ ਹੈ ਰਾਜਸਥਾਨ ਤੋਂ ਆਪਾਂ ਪੰਜਾਬ ਚ ਇਹੀ ਹਾਲ ਹੋ ਜਾਣਾ ਜੇ ਅਸੀਂ ਪਾਣੀ ਨੂੰ ਨਾ ਸੇਵ ਕੀਤਾ। ਸੀ ਸਰਦਾਰ ਦਫਤਰ ਚ ਹੋ ਰਹੀ ਆ ਉਹ ਕੋਟ ਪਾ ਕੇ ਬਹਿ ਜਾਂਦੇ ਆ ਤੇ ਮੂੰਹ ਗੱਡਰੀ ਭੇਡ ਵਰਗਾ ਕਰਕੇ ਸੈੱਲਰ ਫੋਨ ਬੰਦ ਕਰੋ ਜੀ ਸੈੱਲਰ ਫੋਨ ਬੰਦ ਕਰੋ ਆਫ ਕਰੋ। ਹੋਰ ਕੋਈ ਗੱਲ ਨਹੀਂ ਨਾ ਹੈਲੋ ਨਾ ਹਾਏ ਸੈੱਲਰ ਫੋਨ ਕਿਉਂ ਬੰਦ ਕਰਾਉਂਦੇ ਆ ਤੁਸੀਂ ਉਹਦੀ ਵੀਡੀਓ ਨਾ ਪੜਾ ਜੋ ਟ੍ਰੀਟ ਕਰਦੇ ਆ ਉਹਦੀ ਕੋ ਵੀਡੀਓ ਨਹੀਂ ਬਣਾ ਸਕਦਾ ਲੋਕ ਉੱਥੇ ਇੰਨੇ ਫ੍ਰਸਟ੍ਰੇਟ ਆ ਇਹਨਾਂ ਬਹੁਤ ਆ ਫਿਰ ਦੇ ਇਹਨੂੰ ਕਹ ਵੀ ਉਹ ਕਾਊਂਟਰ ਵਧਾ ਦੇਣ ਜੇ ਘੱਟੋ ਘਾਟ ਅੱਡੇ ਘੰਟੇ ਤੋਂ ਵੱਧ ਬੀਟਿੰਗ ਨਹੀਂ ਹੋਣੀ ਚਾਹੀਦੀ ਵੀਆ ਲੈ ਫਾਈਜੀ ਜਿਹੜਾ 트럼ਪ ਹੈ ਨਾ 트럼ਪ ਦੀ ਪਾਲਿਸੀ ਵੀ ਜਿਵੇਂ ਥੋੜੀ ਜਿਹੀ ਜ਼ਿੰਮੇਵਾਰੀ ਜ਼ਿਆਦਾ ਕਰਦਾ ਹੈ ਮੋਦੀ ਨੂੰ ਵੀ ਲਾ ਰਿਹਾ ਕੀਤਾ ਤੇ ਨੇ ਵੀ ਮੰਦਰ ਚ ਵੀ ਉਹਦਾ ਤਿਲਕ ਤਿਲਕ ਦੁਬਾਰਾ ਕੀਤਾ ਉਹਦਾ ਜਿਹੜਾ ਇੱਥੇ ਵੀ ਸੋਸਾਇਟੀ ਹੈ ਜਿਹੜੀ ਚਲੋ ਠੀਕ ਹੈ ਇੰਡੀਅਨ ਮੈਨੂੰ ਲੱਗਦਾ ਇੰਡੀਅਨ ਨਾਲ ਬਿਜ਼ਨਸ ਦੇ ਵਾਸਤੇ ਵੀ ਸ਼ਾਇਦ ਅੱਗੇ ਕੁਝ ਕਰੂਗਾ ਉਹਦੇ ਨਾਲ ਵਪਾਰ ਵਪੂਰ ਵੀ ਵਧਾਉਣ ਦੇ ਉਹਦੇ ਵਾਸਤੇ ਹੈਗਾ ਪਰ ਉਹ ਚਲੋ 트াম্প ਨੇ ਵੀ ਕਈ ਵਾਰ ਰੱਖੇ ਜਾਂਦੇ ਨੇ ਮੈਨੂੰ ਨਹੀਂ ਲੱਗਦਾ ਕਿ ਇੱਤੇ بڑے ਸਟੈਪ ਲੈ ਕੇ ਉਹ ਦੇਸ਼ ਨੂੰ ਡਾਵਾ ਕਰੂ ਹਲੇ ਦੇਖਾਂ ਕਿ ਇਹ ਨਹੀਂ ਪਤਾ ਕਿ ਜਮੇ ਹੀ ਸਾਲ ਕੁਝ ਨਾ ਕਰੇ ਇਹ ਤੇ ਕਿਉਂਕਿ ਅਮਰੀਕਾ ਦੀ ਇਕਨੋਮੀ ਵੈਸੀ ਸਟਰੋਂਗ ਕਾਫੀ ਚੱਲ ਰਹੀ ਹੈ ਤੇ ਜੇ ਇਹ ਨੂੰ ਸਾਂਭ ਗਿਆ ਉਹੀ ਬਹੁਤ ਹੈ ਕਿ ਕੁਝ ਵੀ ਨਾ ਕਰੇ ਐਵੇਂ ਵੀ ਰੱਖ ਲਵੇ ਨਲਾਵਾ ਇਹਦਾ ਬਚਤ ਰਹਿ ਜੂਗੀ ਬਾਕੀ ਜਿਹੜੀ ਬਾਈ ਜੀ ਗੱਲ ਆਪਾਂ ਕਰਦੇ ਹਈ ਨਾ ਆਪਣੇ ਦੇਖੋ ਲੋਕ ਕਿੰਨਾ ਇੱਥੇ ਆਪਾਂ ਟੈਨਸ਼ਨ ਕਰਦੇ ਪਾਣੀ ਦੀ ਸਾਰਾ ਕੁਝ ਪਰ ਮੈਂ ਗੱਲ ਕੀਤੀ ਜਾਨ ਬਚ ਜੇ ਤੇ ਅਸੀਂ ਜਿਹੜਾ ਹੋਰ ਮੁੱਦੇ ਨੇ ਨਸ਼ੇ ਦਾ ਹੋਰ ਜੇ ਸਾਡੀ ਨਸਲ ਖਤਮ ਹੋ ਗਈ ਪਾਣੀ ਕਰਾਂਗੇ ਪਰ ਇੱਕ ਨਾ ਮੈਂ ਡਾਕੂਮੈਂਟਰੀ ਦੇਖੀ ਉਹਦੇ 'ਚ ਆਪਣੇ ਕਿਸਾਨ ਵੀਰ ਸੀਗੇ ਇੰਦਰੋ ਬਜ਼ੁਰਗ ਬੰਦਿਆਂ ਨੇ ਜਾ ਕੇ ਤਾਮਿਲਨਾਡੂ 'ਚ ਬਾਗ ਲਾ ਕੇ ਨਾ ਜੀ ਕਾਮਯਾਬ ਕਰਦੇ ਦੇਸਾ ਆਪਣੇ ਜੀ ਜੀ ਆਪਣੇ ਨੂੰ ਮਤਲਬ ਰੇਗਿਸਤਾਨ ਚ ਵੀ ਜਾ ਕੇ ਸਾਡੇ ਸੋਨਾ ਪੈਦਾ ਕਰ ਸਕਦੇ ਨੇ ਪਰ ਪੰਜਾਬ ਚ ਬਾਈ ਦੀ ਪਿੱਛੇ ਕਵਰ ਸੋਹਣੀਆਂ ਗੱਲਾਂ ਕੀਤੀਆਂ ਪਾਣੀ ਨੂੰ ਹੁਣ ਤੋਂ ਸੇਵ ਕਰਨਾ ਪਊਗਾ ਜੀ ਤਾਂ ਅੱਗੇ ਸਾਡਾ ਸਰਵਾਈਵਲ ਹੈ ਧੰਨਵਾਦ ਵੀਰ ਜੀ ਇਹਨੂੰ ਮਾਨ ਤੋਂ ਗੱਲ ਕਰ ਰਹੇ ਨੇ ਲਾਈਨ ਨੰਬਰ 2 ਜਸਾ ਸਸੀ ਕਾਸਰ ਜੀ ਧੰਨਵਾਦ ਤੁਸੀਂ ਵੀ ਅੱਧੀ ਰਾਤ ਦਾ ਸਮਾਂ ਫੋਨ ਕਰ ਰਹੇ ਹੋ ਸਵੇਰੇ ਹੋ ਗਈ ਹੁਣ ਤਾਂ ਹਾਂਜੀ ਹਾਂਜੀ ਧੰਨਵਾਹ ਸੱਚੀ ਪੰਡੈਤੀ ਜੀ ਨਾਲ ਵੀ ਥੈਂਕ ਯੂ ਤੇ ਬੜਾ ਚੰਗਾ ਲੱਗਿਆ ਗੱਲਾਂ ਚੱਲਦੀ ਗੱਲਾਂ ਮੋਟਾਂ ਸਿਹਤ ਨਾਲ ਸੰਬੰਧਿਤ ਭਲਾਈ ਫ੍ਰੀ ਕੈਂਪ ਲੱਗਿਆ ਸੀਗਾ ਤੇ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਹੈ ਪੂਰੇ ਜੋਰਾ ਸ਼ੋਰਾ ਨਾਲ ਇਹ ਲੋਕਾਂ ਨੂੰ ਬੜਾ ਚੰਗਾ ਲੱਗਿਆ ਵੀ ਲੋਕ ਸੱਤ ਸਵੇਰ 9:00 ਤੇ ਇੱਕ ਡੇਢ ਘੰਟੇ ਸ਼੍ਰੀ ਗੱਲ ਸਾਹਿਬ ਦਾ ਵਾਚ ਚੱਲਦਾ। ਬਹੁਤ ਵਧੀਆ ਲੱਗਿਆ। ਥੈਂਕ ਯੂ। ਸਪ ਦਾ ਟੈਨ ਦਾ ਦੁਬਾਰਾ ਫੇਰ ਓਕੇ ਥਿਊ ਥੈਰ ਹੋ ਵਾਜੀ ਥਿਊ ਥੈਰ ਥੈਂਕ ਯੂ। ਥੈਂਕ ਯੂ ਥੈਂਕ ਯੂ। ਥੈਂਕ ਯੂ। ਹੁਣ ਤਾਂ ਪਾਠੀ ਵਾਲਾ ਚਾਹ ਬਣਾ ਡਾਂਗਰ ਗਈ। ਸਾਮਾਨ ਮੇ ਪਰੇਜ ਰਹਿੰਦੇ ਆ। ਐ ਵਾਜੀ ਐਤੀ ਆਣਾ ਪਿੰਡ ਆ ਸਦਾਰ ਦੇ ਨੇੜੇ ਸਾਬ ਮੋਹਨ ਸਿੰਘ ਲਾਈਨ ਨੰਬਰ 5 ਵਪਾਰਕ ਸੰਦੇਸ਼ ਬਹੁਤ ਜ਼ਿਆਦਾ ਵਧੀਆ ਕਈ ਵਾਰ ਗੱਲ ਤੁਸੀਂ ਭੇਜ ਦਿਓ ਲਿਖ ਕੇ ਦੇ ਇਸੰਬਰਾਉਂ ਨੇ ਕਹਿੰਦੇ ਗੋਰੇ ਨੂੰ ਕੋਈ ਪੰਜਾਬੀ ਬੰਦਾ ਪੰਜਾਬ ਲੈ ਗਿਆ ਹੁਣ ਤੰਦਾ ਠਰ ਗਈਆਂ 3 ਡਿਗਰੀ ਟੈਂਪਰੇਚਰ ਉੱਪਰ ਚਵਾਰੇ ਚ ਪਾ ਦਿਆ ਆਪਣੇ ਵੱਲੋਂ ਤਾਂ ਵਧੀਆ ਕੀਤਾ ਬਹੁਤ ਠੰਡ ਆ ਯਾਰ ਹੀਟ ਆਉਣ ਕਹਿੰਦਾ ਉਹ ਕਹਿੰਦਾ ਹੈ ਉਹ ਥੱਲੇ ਉਤਰ ਗਏ ਆ ਬਾਪੂ ਗੋਰਾ ਤਾਂ ਗੈਰੀ ਤਾਂ ਕੰਬੀ ਜਾਂਦਾ ਇਹਦਾ ਹੀਲਾ ਕੀ ਕਰੀਏ ਉਹ ਕਹਿੰਦਾ ਮੱਲਾ ਫਿਰ ਐਉਂ ਫਿਰ ਹੋਰ ਤਾਂ ਨਿਕ ਕਿਤੇ ਹੈ ਨਹੀਂ ਡੰਗਰਾ ਦੋ ਮੰਜੇ ਢਾਹ ਜਦ ਅੰਦਰ ਗੈਰੀ ਪਾਇਆ ਅੰਦਰੋਂ ਗਰਮੀ ਵਧ ਗਈ ਉਹਨੂੰ ਕਾਂਬਾ ਲੱਗ ਗਿਆ ਕੰਮਦਾਰ ਲੱਗਦਾ ਹੁਣ ਉਹ ਅਸੀਨਾ ਹੋਣ ਕਹਿੰਦਾ ਹੀਟ ਬਹੁਤ ਹੈ ਜੋ ਆ ਫੇਰ ਮੁੰਡਾ ਆਇਆ ਬਾਪੂ ਕੋਲ ਬਾਪੂ ਹੁਣ ਉਹਨੂੰ ਗਰਮੀ ਲੱਗਦੀ ਹੈ ਉਗਾ ਕੋਈ ਗੱਲ ਨਹੀਂ ਠੀਕ ਕਰ ਲੋ ਬੌਲ ਦੇ ਬਾਹਰ ਕੱਢ ਲੋ ਕਟਾ ਅੰਦਰ ਕਰ ਲੋ ਬੈਲੈਂਸ ਹੋ ਜੂਗੀ ਘਰ ਸਾਥ ਸਦਵਾ ਤੁਸੀਂ ਬਹੁਤ ਵਧੀਆ ਚੀਜ਼ਾਂ ਭੇਜਦੇ ਹੋ ਬਹੁਤ ਬਹੁਤ ਥੈਂਕ ਯੂ ਜਾਰੀ ਗਗਨ ਸਿੰਘ 64931313604 3491313 ਪੰਜਾਬ ਫੋਰੈਕਸ ਡਾਲਰਾਂ ਦੇ ਰੁਪਈਏ ਤੇ ਰੁਪਈਆਂ ਦੇ ਡਾਲਰ ਬਣਾ ਕੇ ਤੁਹਾਨੂੰ ਪੰਜਾਬ ਭੇਜਦੇ ਆ ਦਵਿੰਦਰ ਸਿੰਘ ਮਾਨ ਜੀ ਧੰਨਵਾਦ ਤੁਹਾਡਾ ਬਾਈ ਜੀ ਬਹੁਤ ਬਹੁਤ 3 ਵਜੇ ਸਵੇਰ ਦੇ ਤੁਸੀਂ ਪ੍ਰੋਗਰਾਮ ਸ਼ਿੱਧਤ ਨਾਲ ਸੁਣਦੇ ਹੋ ਦੇ ਰੁਪਈਏ ਤੇ ਰੁਪਈਆਂ ਦੇ ਡਾਲਰ ਬਣਾ ਕੇ ਗਗਨ ਸਿੰਘ ਕੋਲ ਬਹਾਰਤ ਹੈ ਜਿਹੜੇ ਰਕਮ ਪਹੁੰਚਦੀ ਹੋਊ ਰਗਮ ਦਾ ਕੰਮ ਹੈ ਅੰਬਰਲੇ ਕੀ ਸਿੱਧ ਪਾਲਾ ਰਕਮ ਫਿਰ 100 100 ਦੇ 10 ਜਾਂ 50 ਵੱਧ ਤੋਂ ਵੱਧ 5000 ਹੁੰਦਾ ਜਦ ਨਾਲ ਬਲਦ ਵੇਚ ਕੇ ਪੈਸੇ ਗਿਰਦੇ ਜਾਂ ਮੱਝ ਵੇਚ ਕੇ ਪੈਸੇ ਗਿਰਦੇ ਜਦ ਬਹੁਤ ਕ੍ਰਿਸਮੈਟਿਕ ਕੰਮ ਆ ਨੰਗੇ ਪੈਰੀ ਬਹਿਣਾ ਸਿਰ ਤੇ ਪਰਨਾ ਲੈਣਾ ਫਿਰ ਇੱਕ ਇੱਕ ਨੋਟ ਗਿਣਨਾ ਫਿਰ ਛੋੜ ਹੋਣੀ ਉਹਦੂ ਕਦੇ ਖਿੱਚਾਂਗੇ ਪੂਰਾ ਬਣਾਵਾਂਗੇ ਜਿਗਾਰ ਉਹਦਾ 64349 1313 6043491313 ਦਰਨ ਸਿੰਘ ਗ੍ਰੈਂਡ ਪਾਸ ਫਰੀਦਾ ਤਾਜ ਇਕਲਤਾਰ ਸਿੰਘ ਠੇੜਾ ਹਰਪਾਲ ਸਿੰਘ ਸੂਜ ਤੇ ਸੁੱਚਾ ਸਿੰਘ ਵੱਡਾ 604 617 8484 655 92 43 42 ਵੱਡੀ ਛੋਟੀ ਤੇ ਤੇ ਚੜਦੇ ਵਾਲੇ ਪਾਸੇ ਬਾਹਰਲੇ ਮੰਨੇ ਪੰਜਾਬੀ ਚ ਲਿਖਿਆ ਪੌੜੀਆਂ ਚੜ ਕੇ ਦਫ਼ਤਰ ਵਾਲਾ ਕਮਰਾ ਵੀ ਉੱਥੇ ਹੀ ਹੈ ਹੁਣ ਪੰਜਾਬ ਦੇ ਵਿੱਚ ਫੁਫੜਾ ਦੀ ਤਿਆਰੀ ਆ ਪੂਰੀ ਭਤੀਜਾ ਕੋਈ ਨਾ ਕੋਈ ਕਿਸੇ ਪਾਰਟੀ ਵਾਲਾ ਹੈਗਾ ਹੀ ਆ ਕਹਿੰਦਾ ਆਮ ਆਦਮੀ ਪਾਰਟੀ ਵਾਲੇ ਪਾਸੇ ਹੀ ਸੁੱਕ ਹੈ ਬਾਕੀ ਤਾਂ ਸਭ ਤਰੋਟ ਹੈ ਇਹ ਨਹੀਂ ਦਿੰਦੇ ਕੁਛ 604 6778484 6045924342 ਇਹਦਾ ਜਿੱਦਣ ਆਉਂਦਿਆ ਜਿਹੜਾ ਦਿਨ ਸਾਡੇ ਕੀਸਿਆਂ ਚ ਕਹਿੰਦਾ ਲੈ ਕੇ ਜਾਂਦੇ ਰਵਿੰਦਰ ਸਿੰਘ ਦਾ 604827213 thank youinsurance.ca OSwindows 604597 50336045975033 oswindows.com ਅਵਾਰਡ winning windows ਨੇ ਛੋਟੇ ਕਾਰ ਟਾਊਨ ਹਾਊਸ ਕਾਂਡੋ ਮਲਟੀ ਫੈਮਿਲੀ ਪ੍ਰੋਜੈਕਟ 6045975033 ਅਵਾਰਡ ਵਿਨਿੰਗ ਵਿੰਡੋਜ਼ ਕਾਰ ਕੋਈ ਵੀ ਹੋਵੇ ਜੀ ਬੋਟਾ ਉਹ ਪਹਿ ਫੋਰਚਨਰ ਦੇ ਉੱਪਰ ਚੜਿਆ ਫਿਰਦਾ ਵਰਜੋ ਜਿਹੜੇ ਉਸ ਨੂੰ ਨੇੜੇ ਜਾਣਣ ਵਾਲਿਆ ਜਲਾਲਾਬਾਦ ਦਾ ਏਰੀਆ ਬਾਹਰ ਨਾ ਫੇਰੇ لوکاں چوں نہ اتر کے جا چھت تے نہ بیٹھ بریک نہ لگ جے پیچھےوں گڈی نہ لگ جے ڈگنا پویں چار رکھو تھوڑا جا آپ خود رے نہ ہویو خیال نال چلو باقی لوکاں دی مرضی ہے پر اکٹھ بہت بڑے ہو رہے نے اے گل ٹھیک ہے کوئی خبر نہیں کتے دکھائی جا رہی سوشل میڈیا دے راہی اکٹھ ہو رہے نے بہت بڑے اکٹھ ہو رہے نے ٹھیک ہے سارا کوس چنگا نہیں تینے پارٹی وچ کوئی نہ کوئی کمی ہے پر لوکاں دا من ہن دسو ਜੋ ਜਬਾ ਪਾਰਕ ਸੰਦੇ ਸ਼ੋਰ ਲੈ ਲੀਏ ਫਿਰ ਪਰਵਾਲਿਆ ਦਦਾਰ ਪਿਆਰ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿੱਥੇ ਵੀ ਤੁਸੀਂ ਵਿੱਚ ਪ੍ਰੋਗਰਾਮ ਸੁਣ ਰਹੇ ਹੋ ਅਖੀਰ ਦੇ ਵਿੱਚ ਇੱਕ ਗੀਤ ਤੁਹਾਡੇ ਸਾਹਮਣੇ ਤੇ 100 ਬਾਰ ਨੂੰ 11 ਵਜੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਸੋਮਵਾਰ ਨੂੰ 12 ਵਜੇ ਪੰਜਾਬ ਦੇ ਪਾਣੀਆਂ ਦੀ ਗੱਲਬਾਤ ਹੋਏਗੀ ਤੇ ਮੰਗਲਵਾਰ 1 ਵਜੇ ਪ੍ਰਭਜੋਤ कौर ਕੈਂਥ ਜਿਹੜੀ ਪੰਜਾਬ ਦੇ ਪਾਣੀਆਂ ਤੇ ਇੱਕ ਲੜਕੀ ਕੰਮ ਕਰ ਰਹੀ ਹੈ ਇੱਕ ਵੱਡਾ ਕੈਂਪ ਜਿਹੜਾ ਪਟਿਆਲੇ ਜ਼ਿਲ੍ਹੇ ਚ ਲਾਉਣ ਜਾ ਰਹੀ ਹੈ ਯੂਨੀਵਰਸਿਟੀ ਆਫ ਵਾਟਰਲੂ ਦਾ ਸਟਾਫ ਉਸਦੇ ਨਾਲ ਕੰਮ ਕਰ ਰਿਹਾ ਤੇ ਬਹੁਤ ਜ਼ਿਆਦਾ ਛੋਟੀ ਉਮਰ ਵੱਡੀਆਂ ਆਪ ਲੱਭਦੀਆਂ ਐ ਉਸ ਲੜਕੀਆਂ ਉਸ ਦੀ ਗੱਲਬਾਤ ਹੋਏਗੀ ਸੰਬਾਲਕ ਅੰਕ ਸੰਗ੍ਰਹਿ ਸਦਾ ਚੜ੍ਹਦੀ ਕਲਾ ਦੇ ਵਿੱਚ ਬਲਰਾਜ ਸਿੰਘ ਨੂੰ ਜਿੰਨਿਆਂ ਨੇ ਵੀ ਤੁਸੀਂ ਅਸ਼ੀਰਵਾਦ ਦਿੱਤਾ ਸਾਰਿਆਂ ਦਾ ਧੰਨਵਾਦ ਰੱਬ ਰਾਖਾ ਜੀ ਉਹਦੇ ਵਾਸਤੇ